ਮ੍ਰਿਤਮਥੇ ਸੁਰਦਾਰ ਗੁਰਬੰਦਰ ਜਿਹੜੇ ਸੁਰ ਨਾਰਾਇਆ ਮੂਰੀ ਲੋਕ ਨੇ ਉਹ ਤੇਰੀ ਬੰਦਨਾ ਕਰਦੇ ਨੇ ਤੈਨੂੰ ਨਮਸਕਾਰ ਕਰਦੇ ਨੇ ਦੁਸ਼ਟ ਨਿਕੰਧਨ ਦੁਸ਼ਟਾ ਦੀ ਤੂੰ ਜੜ ਪੁੱਟਣ ਵਾਲੀ ਹੈ ਕਰਕੇ ਕਿਉਂਕਿ ਸਨਾਰਵਰ ਜਾਨ ਨੇ ਦੁਸ਼ਟਾ ਨੂੰ ਚੰਗਾ ਨਹੀਂ ਸਮਝਦੇ ਦੁਸ਼ਟਾਂ ਨੂੰ ਨਾਸ ਕਰਨ ਬਾਣੀ ਇਸ ਕਰਕੇ ਤੈਨੂੰ ਬਦਨਾ ਕਰਦੇ ਨੇ ਤੈਨੂੰ ਪੂਝਦੇ ਰਹੋ ਪ੍ਰਿਸ਼ਟ વિનાਸ਼ ਨੂੰ ਮ੍ਰਿਤ ਮਥੇ ਕਰਦੀ ਹੈ ਪ੍ਰਿਸ਼ਟ ਬੁੱਧੀ ਨੂੰ ਨਾਸ ਵੀ ਕਰਦੀ ਅਸਲ 'ਚ ਬੁੱਧੀ ਦੀ ਖੋਟ ਨੂੰ ਨਾਸ ਕਰਦੀ ਹੈ ਸਭਾ ਬੁੱਧੀ ਜਾਲੀਆਂ ਨੇ ਕਰਹਿ ਬੁੱਧੀ ਜਾਲੀ ਹੈ ਬੁੱਧੀ ਜਾਲ ਕੇ ਬੁੱਧੀ ਸ਼ੁੱਧ ਹੋ ਜਾਂਦੀ ਹੈ ਜਿਵੇਂ ਲੋਹੇ ਨੂੰ ਜਾਲ ਹੈ ਘਟ ਜੀ ਜਲਦਾ ਪਰ ਸ਼ੁੱਧ ਹੋ ਜਾਂਦਾ ਜੰਗ ਲਹਿ ਜਾਂਦੀ ਹੈ ਉਹਦੇ ਚ ਕੋਈ ਜਲ ਜਾਂਦਾ ਸ਼ੁੱਧ ਹੋ ਜਾਂਦਾ ਇਸ ਕਰਕੇ ਸ਼ੁੱਧ ਕਰਨ ਵਾਸਤੇ ਬੁੱਧੀ ਨੂੰ ਪ੍ਰਚੰਡ ਗਿਆਨ ਦੇ ਵਿੱਚ ਪੱਠੀ ਚ ਪ੍ਰਚੰਡ ਗਿਆਨ ਦੀ ਪੱਠੀ ਚ ਪਾਉਣ ਦੀ ਲੋੜ ਹੈ ਹਿਰਦੇ ਚ ਜਦ ਪ੍ਰਚੰਡ ਗਿਆਨ ਹੁੰਦਾ ਹੈ ਤਬ ਰੂਪੀ ਲੋਹਾ ਜਿਹੜਾ ਸ਼ੁੱਧ ਹੋ ਜਾਂਦਾ ਪ੍ਰਚੰਡ ਗਿਆਨ ਦਾ ਮਤਲਬ ਇਹ ਹੀ ਹੈ ਜਿਹੜਾ ਤਤ ਗਿਆਨ ਪਰਚੰਡ ਗਿਆਨ ਉੱਤੇ ਜਾਂ ਪਰਚੰਡ ਗਿਆਨ ਉੱਤੇ ਬਨ ਸੁੱਧ ਹੋ ਜਾਂਦਾ ਪਰ ਮਨ ਉੱਤੇ ਟਿਕੇ ਤਾਂ ਸੁੱਧ ਹੁੰਦਾ ਕੇ ਬਨ ਹਿਰਦੈ ਟਿਕੇ ਸੁੱਧ ਹੋ ਜਾਂਦਾ ਅਤਯੰਤਰਾਤਮਾ ਦੀ ਵਾਹਿ ਚਾਹੇ ਆਗਾ ਥੋੜੀ ਹੈ ਉਤਰਾਤੁਲੀ ਵਾਹਿ ਉਹਦੇ ਨਾਲ ਵੀ ਮਨ ਖਰਾਬ ਨਹੀਂ ਹੁੰਦਾ ਜੇ ਸੁੱਧ ਨਹੀਂ ਹੁੰਦਾ ਤੇ ਜ਼ਿਆਦਾ ਵਿਗੜਦਾ ਵੀ ਨਹੀਂ ਜਿਹੜੇ ਲੋਕ ਚੰਗੇ ਆਦਮੀ ਕਹਿਣੇ ਰਹੇ ਜਿਹਨਾਂ ਨੂੰ ਉਹ ਅਤਰਾਪੂਰੀ ਆਵਾਜ਼ ਅਨੁਸਾਰ ਚੱਲਦੇ ਥੋੜੇ ਬਹੁਤ ਹੈ ਲੈ ਕੇ ਚੰਗੇ ਆਦਮੀਆਂ ਕੋਲ ਬਹਿ ਕੇ ਸੁਣ ਕੇ ਚੰਗੇ ਤਾਂ ਹੋ ਸਕਦਾ ਨੇ ਬੁਰੇ ਨਹੀਂ ਹੋ ਸਕਦੇ। ਕਾਬਰੂ ਕੁਮਾਰੇ ਆਦਮ ਉਹਦਾ ਹਰੇ ਨਰਕਨਵਾਰੇ ਆਦ ਕਥੇ ਦੇਖੋ ਆਦਮ ਉਹਦਾ ਹਰੇ ਕਹੀ ਉਦੇ ਵਿੱਚ ਆਊਗਾ ਤਕਰੀਬਨ ਅਧਮੋ ਧਾਰੇ ਦਾ ਮਤਲਬ ਹੈ ਅਧ ਵਿਚਾਲੇ ਫਸੇ ਸਾਰੇ ਲੋਕ ਇਹ ਕਿਤੇ ਨਾ ਕਿਤੇ ਜਾ ਰਹੇ ਸੀ ਪਰ ਬੱਲੂ ਰੁਗ ਗਏ ਸਾਰੀਆਂ ਵਤਾਂ ਕਿਤੇ ਨਾ ਕਿਤੇ ਰੁਕੀਆਂ ਹੋਈਆਂ ਨੇ ਸਾਰੀਆਂ ਵਤਾਂ ਕਿਤੇ ਨਾ ਕਿਤੇ ਅਟਕੀਆਂ ਹੋਈਆਂ ਨੇ ਅੱਧੇ ਚ ਖੜ ਗਈਆਂ ਅੱਧ ਦਾ ਮਤਲਬ ਬਿਲਕੁਲ ਅੱਧੇ ਚ ਹੀ ਹੁੰਦਾ ਰਾਹ ਖੜ ਗਈ ਕਹਿਣ ਦਾ ਮਤਲਬ ਕਿਤੇ ਨਾ ਕਿਤੇ ਰਸਤਾ ਉਹਨਾਂ ਦਾ ਬੰਦ ਹੋ ਗਿਆ ਜਦੋਂ ਗਿਆਨ ਦਾ ਰਸਤਾ ਬੰਦ ਹੋ ਜਵੇ ਗਿਆਨ ਗਤੀਸ਼ੀਲ ਨਾ ਹੋਵੇ ਰੁਕ ਜਬੇ ਫਿਰ ਇਹ ਹੋ ਜਾਂਦਾ ਵੀ ਤੁਰਤਾ ਪਹੁੰਚੇ ਨਹੀਂ ਰਸਤਾ ਬੰਦ ਹੋ ਗਿਆ ਕੀ ਕਰੀਏ ਹੁਣ ਜੇ ਤਾਂ ਇੱਛਾ ਹੋਵੇ ਜਿਹਦੇ ਵਿੱਚ ਜਾਣ ਦੀ ਤਾਂ ਹੋ ਜਾਂਦਾ ਬਿਆਕੁਲ ਜੋ ਕਵੀਰ ਤਾਂ ਹੋ ਗਿਆ ਬਿਆਕੁਲ ਤੁਰ ਜਾਣ ਦੀ ਇੱਛਾ ਸੀ ਉਹਦੇ ਜਿਆਦਾ ਲੋਕ ਉੱਥੇ ਕਹਿਣੇ ਮੈਂ ਠੀਕ ਆ ਹੁਣ ਕੀ ਕਰੀਏ ਹੁਣ ਕਹਾ ਜਦ ਪਰਵੇਸ਼ ਕਰੂ ਹੋਊ ਜੂ ਕੁਝ ਲੋਕ ਇਹ ਜਾਂਦੇ ਕੋਸ਼ਿਸ਼ ਛੱਡ ਦਿੰਦੇ ਨੇ ਉਹ ਸਿੱਖ ਕੋਸ਼ਿਸ਼ ਨਹੀਂ ਕਰ ਰਿਹਾ ਸਿੱਖਾਂ ਨੇ ਕੋਸ਼ਿਸ਼ ਛੱਡੀ ਹੋਈ ਹੈ ਗਿਆਨ ਖੜਾ ਹੈ ਨਾ ਕਿਤਾਬਾਂ ਦੇ ਲੈ ਆ ਕੇ ਗਿਆਨ ਤਾਂ ਪਿੱਛੇ ਬੋਰਡ ਖੜਾ ਕੀ ਹੈ ਚੱਲ ਜਿੱਥੇ ਵੀ ਬੋਰਡ ਤਾਂ ਖੜਾ ਹੈ ਜਿੱਥੇ ਤੱਕ ਲਿਖੇ ਕੇ ਗਿਆਨ ਖੜਾ ਸਿੱਖਾਂ ਦਾ ਆਰਾਮ ਨਾਲ ਸੰਤ ਦੁੱਧ ਪੀਦੇ ਨੇ ਤੇ ਕਹਿੰਦੇ ਕੋਈ ਰਣ ਹੋਏ ਨਹੀਂ ਹੈਗਾ ਵੀ ਗਾਂ ਤੋੜੀਏ ਕਿ ਮੈਨੂੰ ਲੈ ਰੂਗਾ ਲੂ प्राप्ति ਤਾਂ ਕੁਛ ਹੋਈ ਨਹੀਂ। ਉਹ ਗੱਲ ਕਬੀਰ ਵਾਲੀ ਚੱਲੇ ਤੇ ਹਰਮਨ ਕੋ ਵਿਚੇ ਅੜ ਕੇ ਜੀਤ। ਹਰਮਲਾਬ ਹੋਇਆ ਜੀ ਤੁਹਾਡਾ ਤੁਹਾਡੇ ਜੀ ਕੇ ਵੀ ਲੱਗਦਾ। ਤੁਲ ਚੈਨ ਕੇ ਮੈ ਆਈ ਹੋਇ ਜ। ਇਹਨਾਂ ਨੂੰ ਧਾਰਮਿਕ ਬੰਦੇ ਨਹੀਂ ਤਰੂ ਛੱਡ ਦਤਾ ਇਹ। ਇਹ ਖਿਆਲ ਏ ਛੱਡਤਾ। ਵੀ ਇੱਜ਼ਤ ਵਧੀਆ। ਖੋਪੀਓ, ਕੋਲ ਕਰੋ। ਆਪ ਲੋਕਾਂ ਨੂੰ ਚੰਗੇ ਸੋਖੇ। ਵਿਆਗਲਤਾ ਨਹੀਂ ਹੈ ਵਿਆਗਲਤਾ ਗੁਰੂ ਪਰਦਾ ਦੇ ਬੇਸੀ ਕਬੀਰ ਜੀ ਚ ਜੀ ਚ ਵਿਆਗਲਤਾ ਉਹਨੂੰ ਮਿਲ ਜਾਂਦਾ ਹੈ ਉਹ ਪਹੁੰਚ ਜਾਂਦਾ ਵਿਆਗਲਤਾ ਹੈ ਠੀਕ ਹੈ ਜੀ ਜਿਹੜਾ ਵਿਆਗਲਤਾ ਉਹ ਕੋਈ ਰੱਬ ਲੈਣ ਜਿਹੜੇ ਖੋਜੀ ਲੱਗੇ ਨੇ ਕੋਈ ਨਾ ਕੋਈ ਖੋਜ ਲੈਂਦੇ ਨੇ ਜਿਹੜੇ ਨਹੀਂ ਖੋਜਿਆ ਉਹਨੂੰ ਕੋਈ ਨਹੀਂ ਮਿਲਦਾ ਖੋਜੀ ਦੱਸਦੇ ਨੇ ਫਿਰ ਦੁਨੀਆ ਨੂੰ ਦੁਨੀਆ ਨੂੰ ਖੋਜੀ ਉਹ ਦੱਸ ਦਿੰਦੇ ਨੇ ਕੁਝ ਖੋਜੀ ਦੇ ਅੰਦਰ ਇੱਛਾ ਹੁੰਦੀ ਹੈ ਕੁਝ ਗਾਹੂ ਬਦਲਣ ਦੀ ਥੋੜਾ-ਬੋੜਾ ਖੋਜੇ ਕੁਛ ਨਾ ਕੁਛ ਖੋਜੂ ਕੁਛ ਨਾ ਕੁਛ ਦੱਸੂਏ ਯਾਨੀ ਉਹ ਖੜੇ ਗਿਆ ਨੁਕਾਲ ਦਰੂ ਓਕੇ ਖੋਜੀ ਤੋਲਦਾ ਇਸ ਕਰਕੇ ਖੋਜੀ ਉੱਪ ਜਾ ਬਤੀ ਬਦਸੈਂ ਅਜੇ ਬਾਦ-ਬਵਾਚ ਲੱਗਿਆ ਇਹਨੇ ਨਾ ਕਲਟਰ ਐ ਨਹੀਂ ਚਾਹੀਦਾ ਆ ਚਾਹੀਦਾ ਇਹ 10 ਗ੍ਰਾਮ ਦਾ ਉਹ ਨਹੀਂ ਜੀ ਆ ਫਲਾਣੇ ਦਾ ਜੀ ਇਹ ਦਾ ਨਾਮ ਰਾਮ ਔਰ ਕ੍ਰਿਸ਼ਨ ਦਾ ਨਾਮ ਪਤਾ ਖੈ ਨਹੀਂ ਵੀ ਰਾਮ ਕ੍ਰਿਸ਼ਨ ਉੱਦਾ ਕੀ ਹੈ ਕਹਿੰਦਾ ਕਿੰਦੂ ਕਿਦਿਸ ਸ਼ਾਮ ਦਾ ਨਾਮ ਹੈ ਰਾਮ ਦਾ ਨਾਮ ਹੈ ਕਬੀਰ ਨੇ ਫਲਾਣੇ ਨੇ ਉਹਨੂੰ ਪੜ੍ਹ ਕੇ ਤਾਂ ਦੇਖੋ ਵੀ ਕੀ ਲਿਖਿਆ ਹੋਇਆ ਕੀ ਹੈ ਰਾਮ ਨਰਾਉ ਦਾ ਪੜ੍ਹ ਲਿਆ ਹੀ ਨਹੀਂ ਦੇ ਲਿਖਿਆ ਹੋਇਆ ਕੀ ਹੈ ਇਹ ਬਾਦੀ ਨੂੰ ਸਾਰੇ ਲੋਕ ਇਹਨਾਂ ਦੀ ਬੁੱਧੀ ਜਿਹੜੀ ਹੁੰਦੀ ਹੈ ਜੇ ਹੁੱਦੀ ਵੀ ਹੈ ਬਲਤ ਹੁੰਦੀ ਹੋਵੇ ਇਹ ਜੀ ਇਹਨਾਂ ਦੀ ਉਹ ਜੀ ਹੁੰਦੀ ਆ ਪਰ ਜਿੱਦੀ ਹੁੰਦੀ ਉਹਦਾ ਵੀ ਨਾਸ ਹੋ ਜਾਂਦਾ ਬਦਦੀ ਨਹੀਂ ਹੁੰਦੀ ਬੁੱਧੀ ਇਹਨਾਂ ਦੀ ਇਹ ਕੁਰਬਾਨੀ ਦਾ ਬਾਖ ਹੈ ਇਹਨੂੰ ਕੋਲ ਨਹੀਂ ਬੰਦੂਗਾ ਖੋਜੀ ਉਪਜਾ ਖੋਜ ਕਰੇ ਤਬ ਉਹਦੀ ਵੰਦੀ ਹੈ ਖੋਜ ਕਰਦੇ ਸਾਨੂੰ ਕੋਈ ਦੱਸ ਦੇ ਇਹ ਖੋਜ ਨਹੀਂ ਇਹ ਤਾਂ ਸੁਣਿਆ ਸੁਣਿਆ ਪ੍ਰਾਣੀਆਂ ਦਨ ਲਾਦੇ ਨੇ ਇਹਨਾਂ ਦੀਆਂ ਜਿਵੇਂ ਲੋਕ ਕਹਿੰਦੇ ਨੇ ਪਰਮੇਸ਼ਰ ਇੱਕ ਹੈ ਪਤਾ ਕਿਦਾਂ ਨੂੰ ਦੇਖਿਆ ਕਿਦਾਂ ਨੇ ਇੱਕ ਹੈ ਕੀ ਸਬੂਤ ਹੈ ਇੱਕ ਹੈ ਕੋਈ ਸੂਤ ਨਹੀਂ ਸੋਲੇ ਸੁਣਾਈ ਹੀ ਗੱਲ ਹੈ ਸਬੂਤ ਕੀ ਹੈ ਇੱਕ ਹੈ ਤੁਹਾਡੇ ਕੋਲ ਅੱਖਰ ਨੂੰ ਦਿਨਾਂ ਨਹੀਂ ਉਭੀ ਸੋੜੀ ਹੋਈ ਗੱਲ ਹੈ ਜੇ ਦੀਦਾ ਹੀ ਨਹੀਂ ਤਾਂ ਫਿਰ ਦੱਸਿਆ ਕਿਨੇ ਤੁਹਾਨੂੰ ਵੀ ਹੈਗਾ ਸਬੂਤ ਕੀਆ ਉਹਦਾ ਵੀ ਹੈਗਾ ਦੱਸ ਜੇ ਗੈਰੀ ਪਰ ਜੇ ਗੱਲ ਅਦਰੋਂ ਤਾਂ ਪਰਿਆ ਫਿਰ ਸਬੂਤ ਕੀ ਰਹਿ ਗਿਆ ਇਹ ਸਵਾਲ ਕਰਦੇ ਲੈ ਤਰਕਸ਼ੀਲ ਨੇ ਜਿਹੜੇ ਉਹਦਾ ਸਬੂਤ ਕੀ ਹੈ ਉਸ ਗੱਲ ਦਾ ਜਿਹੜੀ ਗੱਲ ਅਦਰੋਂ ਤਾਂ ਪਰਿਆ ਉਹਦਾ ਸਬੂਤ ਕੀ ਹੈ ਕੋਈ ਸਬੂਤ ਨਹੀਂ ਸਬੂਤ ਹੈ ਕਿ ਕਹਿੰਦਾ ਹੈ ਤਾਂ ਸਹੀ ਲੱਗੇ ਜੇ ਕੋਈ ਦੇਖਿਆ ਨਹੀਂ ਜਾ ਸਕਦਾ ਲਖਿਆ ਜਾ ਸਕਦਾ ਲਖਿਆ ਉਹਦਾ ਲਖਣ ਨਾਲ ਦਦਲਾ ਨਾਲ ਲਖਣ ਦਾ ਮਤਲਬ ਦੇਖਣਾ ਨਹੀਂ ਹੁੰਦਾ ਲਖਣ ਦਾ ਮਤਲਬ ਬੁੱਝਣਾ ਹੁੰਦਾ ਆਪਾਂ ਕਹਿੰਦੇ ਲਖਣ ਨਾਲ ਲਖੜੀ ਹੁੰਦਾ ਲਖਣਾ ਦਾ ਅਰਥ ਕਹਿੰਦੇ ਕੁਝ ਸਮਝ ਲੈਣਾ ਕੁਝ ਅੰਦਾਜ਼ਾ ਲਾ ਲੈਣਾ ਸਮਝ ਲੈਣਾ ਕੁਝ ਅੰਦਾਜ਼ਾ ਲਾ ਲੈਣਾ ਉਹ ਫਿਰ ਬੁੱਝ ਲੈਣਾ ਕਹਿੰਦੇ ਨੇ ਉਹੀ বুঝਣਾ ਰਾਜੇ ਨਾਲੇ ਬਾਤ বুঝੋਦੀ ਹੈ ਜੋ ਕੋ ਦੱਸਿਆ ਹੋਇਆ ਹੈ ਉਹਦਾ ਚਾਰ ਪਾਸੇ ਦੇਖ ਕੇ ਅੰਦਾਜ਼ਾ ਲਾ ਕੇ বুঝੋਦੀ ਹੈ বুঝਾਰਤਾ ਹੈ বুঝਣ ਜੇ ਵੇਸ਼ਾ ਲਖਣ ਆਉਣਾ ਪਊ ਤੁਹਾਨੂੰ ਦੱਸਾ ਲਾਉਣਾ ਪਊਗਾ ਇਹ ਜਿਹੜੇ ਖੋਜੀ ਹੁੰਦੇ ਨੇ ਇਹ বুঝ ਲੈਂਦੇ ਨੇ ਵਾਦੀ ਨਾਲ ਜਿਹੜੇ ਉਹ ਤਾਂ ਬਸਵਾਦ ਬਾਦ ਫਸਲੇ ਜੇ ਬੰਨ ਜੇ ਪਤਾ ਵੀ ਲੱਗ ਜਵੇ ਵੀ ਅਸੀਂ ਹਾਰ ਕੇ ਤਾਂ ਨਹੀਂ ਬੰਦੇ ਹੁੰਦੇ ਬਹਿਣਾ ਮੰਨੂ ਤੇ ਆ ਜਾਂਦੇ ਨੇ ਇਸ ਕਰਕੇ ਨਾ ਮੂਰਖਾ ਨਾਲ ਕਹਿੰਦੇ ਮੂਰਖੇ ਨਾਲ ਲਲੋ ਜੀ ਪਰ ਅਖਰ ਇਹ ਹੋ ਚਰਚਾ ਵੀ ਉਹਦੇ ਨਾਲ ਕਰੀਏ ਜਿਹਨੇ ਕੁਝ ਲੈਣਾ ਹੋਵੇ ਜਿਹਨੂੰ ਲੈਣ ਦੀ ਇੱਛਾ ਹੋਵੇ ਜਿਹਨੇ ਬੈਤਰੇ ਬਦਲਨੇ ਹੋਣ ਐ ਬੈਤਰੇ ਤੋਂ ਹਰਗੇ ਦੂਏ ਤੇ ਜਾਖੜੇ ਦੂਏ ਤੋਂ ਹਰਗੇ ਦੂਏ ਤੇ ਜਾਖੜੇ ਉਦੇ ਨਾਲ ਚਰਚਾ ਦੀ ਲੋੜ ਨਹੀਂ ਗੱਲ ਚਰਚਾ ਦੀ ਲੋੜ ਨਹੀਂ ਇਹ ਹਰਾਉਣ ਦਾ ਵਿਸ਼ਾ ਨਹੀਂ ਕਿਸੇ ਨੂੰ ਜਿੱਤ ਹਾਰ ਦਾ ਵਿਸ਼ਾ ਨਹੀਂ ਇਹ ਪ੍ਰਾਪਤੀ ਦਾ ਵਿਸ਼ਾ ਗੱਲ ਪ੍ਰਾਪਤ ਕਰ ਲੋ ਕੁਝ ਵਿਚਾਰ ਗੱਲ ਵਿਚਾਰ ਚੋਂ ਕੁਝ ਕੱਢਣ ਜਿੱਤੇ ਨਿਕਲਣਾ ਹੀ ਕੁਝ ਨਹੀਂ ਉਹ ਤਾਂ ਚਰਚਾ ਦੀ ਲੋੜ ਨਹੀਂ ਹੋਈ ਕੁਮਾਰੇ ਅਧਮੋ ਅਧਾਰੇ ਕੁਮਾਰੇ ਅਸਲ ਚ ਕੁਮਾਰੇ ਲਫਜ਼ ਨਹੀਂ ਕਾਬਰੂਕ ਲੱਭਣ ਲੋ ਚਾਹੀਦਾ ਕਾ ਕੌਦਰ ਚਾਹੀਦਾ ਕੱਕੇ ਨੂੰ ਕੜ ਕਾਬਰੂਕ ਮਾਰੇ ਕਾਬਰੂਕ ਮਾਰੇ ਮਾਰੇ ਅਟ ਜਿਹੜੇ ਮਹਿਸ ਕਪਤਾ ਹੀ ਆ ਕੇ ਕਪਤਾ ਤੇ ਹੀ ਆ ਕੇ ਅਟਕ ਗਏ ਤਤ ਜਨ ਤਖਨੀ ਪਹੁੰਚੇ ਕੋਈ ਮਾਰੇ ਕਰੇ ਚਾਹੇ ਚਾਹੇ ਉਹ ਗੋਸੋਬੀ ਤુલਸੀ ਦਾਸ ਸੀ ਸਾਰੇ ਦੁਨੀਆ ਉਲੀ ਪੜਦੀ ਹੈ ਅਰਮਾਨ ਤਤ ਕਹਾਲੀ ਹੈ ਵਾਪਾਰ ਤਤ ਗਿਆ ਨਹੀਂ ਹੈ ਸਿਮਰਤੀਆਂ ਨੇ ਸਾਰੀਆਂ ਸ਼ਾਸਤਰ ਦੇ ਤਤ ਗਿਆ ਮਾਰੇ ਗਏ ਕਵੀ ਸੀ ਸਾਰੇ ਸਾਰੇ ਕਵੀ ਸੀ ਸ਼ੈਕਸਪੀਅਰ ਆ ਕਵੀ ਹੈ ਮਾਰੇ ਗਿਆ ਤਤ ਗਿਆ ਨਹੀਂ ਹੈ ਤਤ ਗਿਆ ਤੇ ਥੱਲੇ ਦੀ ਕਪਤਾਲੇ ਸਾਰੇ ਮਾਰੇ ਜਾਂਦੇ ਨੇ ਕਾਬਰੂ ਕਪਤਾ ਰਖਣ ਵਾਲੇ ਵੇ ਕਾਬਰੂ ਕਵੀ ਕਾਬਰੂ ਜਿਹੜੇ ਕਬਤਾ ਤੇ ਆ ਕੇ ਰੁਕ ਗਏ ਬਸ ਕਬਤਾਰੂ ਮੰਨ ਲਿਆ ਵੀ ਅਸੀਂ ਪਤਾ ਨਹੀਂ ਪਹੁੰਚ ਗਏ ਸਾਨੂੰ ਫੁਰਦੀ ਹੈ ਕਬਤਾਰੂ ਬਾਣੀ ਸਮਝ ਲਿਆ ਉਹਦੀ ਫੁਰਦੀ ਹੈ ਨਾ ਦਿਮਾਗ ਚੋਂ ਉਹ ਉਹ ਦੂਈ ਸਮਝ ਲਿਆ ਤੁਰਕੀ ਬਾਣੀ ਉਹਨਾਂ ਸਾਡੇ ਮੁਕਾਬਲੇ ਤਾਂ ਉਹਨ ਕੋਈ ਨਹੀਂ ਕਬਤਾ ਵੀ ਫੁਰਦੀ ਹੈ ਕਈ ਗੱਲਾਂ ਹੈ ਜੀਆਂ ਫੁਰਦੀਆਂ ਨੇ ਰਲਦੀ ਆਪਣੀ ਦੀ ਗੁਰਬਾਨੀ ਪਰ ਵੇ ਬੁੱਲਾ ਉਸकी नियत की गल्ला करता है सारेयां दीया ओ काबरू का, काव, काव, के ने रुक गए उठे काव्य कविता ते आगे रुक गए बस कविता तो गहरा ही गए तू ये ਬ੍ਰਗਿਆ ਨਹੀਂ ਹੈ ਟੀਚਾ ਕਪਤਾ ਹੀ ਟੀਚਾ ਸੀ ਮਾਰੇ ਗਏ ਮਾਰੇ ਅਦਮ ਉਧਾਰੇ ਇਹ ਵੀ ਅਦਮ ਸੀ ਨਾ اٹਕੇ ਹੋਏ ਸੀ ਇੱਥੇ ਉਧਾਰੇ ਇਹ ਵੀ ਉਧਾਰੇ ਨੇ ਮਾਰੇ ਦਾ ਜਿਹੜਾ ਮਾਰਿਆ ਉਹ ਉਧਾਰੇ ਅਸਲ ਚ ਕਿਉਂਕਿ ਉੱਥੇ اٹਕੇ ਹੋਏ ਨੂੰ ਗਾਹ ਗਾਹ ਦਾ ਮਾਰ ਕੇ ਤੋੜੂ ਦੂਜਾ ਜਲੂ ਦੇ ਕੇ ਉਧਾਰੇ ਕਰਨ ਵਾਸਤੇ ਘਰੇ ਨਹੀਂ ਹੈ ਅਧ부ਹਦੇ ਚਟਕੇ ਸੀ ਇਹ ਵੀ ਇਹ ਵੀ ਇਦਵੇਂ ਸੀ ਰਾਜੇ ਖੜੇ ਸੀ ਕਿਤੇ ਉਧਾਰੇ ਨਰਕ ਨਵਾਰੇ ਆਹਦਾ ਨਰਕ ਨਵਾਰੇ ਥੱਲੇ ਉਹ ਨਹੀਂ ਜਾਣ ਦਿੱਤੇ ਜੇ ਕਾਫੀ ਦੇਰ ਹੋਰ ਜਿਉਂਦੇ ਰਹਿ ਜਾਂਦੇ ਨਾ ਫਿਰ ਹੋ ਜਾਂਦਾ ਨਰਕ ਚਲੇ ਜਾਂਦੇ ਫਿਰ ਹੋਣ ਤੋਂ ਪਹਿਲਾਂ ਹੀ ਮਾਨ ਲੈ ਇਹ ਹੰਕਾਰ ਹੋ ਰਿਹਾ ਜੀ ਰਾਜ ਮਾਨ ਲੈ ਉਹ ਤਾਂ ਹੰਕਾਰ ਨਾ ਹੋ ਜਵੇ ਜਿੰਨਾ ਜ਼ਿਆਦਾ ਹੰਕਾਰ ਹੋਵੇ ਨਾ ਨਰਕ ਚਲੇ ਜਾਂਦਾ ਨਰਕ ਦਾ ਮਤਲਬ ਕਿੰਨਾ ਜ਼ਿਆਦਾ ਹੰਕਾਰ ਹੋ ਗਿਆ ਉਹਨੇ ਥੱਲੇ ਡੁੱਬ ਜਾਊਗਾ ਉਹਨੇ ਕਮਜ਼ੋਰ ਡਰਪੋਕ ਬਣ ਉਹਦਾ ਹੋਊਗਾ ਕੱਕਰ ਡਰਪੋਕ ਜਿੰਨਾ ਬਣਾਉਣਗੇ ਉਹਨੇ ਹੰਕਾਰ ਘਟੂਗਾ ਫਿਰ ਉਹਦਾ ਹੌਲੇ ਕਮੇ ਹਰੇ ਕੀ ਤੋਂ ਡਰੂ ਜਿਹੜਾ ਹਰੇ ਕੀ ਤੋਂ ਡਰੂ ਜ਼ਿਆਦਾ ਖਤਰੇ ਹੋਣਗੇ ਤੇ ਗਰੀ ਰਸਦਾਰੀ ਹੁੰਦਾ ਕਿਹਾ ਸੀ ਉਹਨੂੰ ਢੜ ਪੈਦਾ ਕਰ ਲਾਉਂਦੇ ਅੰਦਰ ਬਹੁਤ ਸਾਰੀਆਂ ਜੁਨੀਆ ਐਸੀਆਂ ਤੇ ਤੇਜ ਜੁਨੀਆ ਜਿੱਥੇ ਡਰਪੋਕ ਰਹੂ ਡਰਦਾ ਰਹੂ ਪੈਸੇ ਬਿਨਾ ਭਗਤੀ ਨਹੀਂ ਨਾ ਹੁੰਦੀ ਉਹਨੂੰ ਪੈਸੇ ਦੇ ਕੇ ਭਗਤੀ ਲਿਆਉਂਦੇ ਨੇ ਉਹਦੇ ਪੈਸੇ ਦੇ ਭਗਤ ਨਾ ਹੋਏ ਤੇਰੀ ਪਰ ਦੇ ਵਿੱਚ ਰਹਿਣਾ ਹੀ ਭਗਤੀ ਹੈ ਹੋਰ ਭਗਤੀ ਕੋਈ ਨਹੀਂ ਹੈ ਉਹਨਾਂ ਦੀ ਆਦਮੀ ਦੇ ਵਿੱਚ ਪੈਸੇ ਰਹਿਣਾ ਹੀ ਭਗਤੀ ਹੈ ਹੁਕਮ ਦੇ ਵਿੱਚ ਰਹਿਣਾ ਭਗਤੀ ਹੈ ਉਹ ਕਮਤੀ ਪੈ ਵਿੱਚ ਰਹਿਣਾ ਭਗਤੀ ਹੈ ਉਹ ਕੂ ਭਗਤੀ ਹੈ ਹਜੀ ਮਾਰੇ ਅਦਮੋਂ ਧਾਰੇ ਦਰਗਨ ਵਾਰੇ ਆਦ ਕਥੇ ਆਦ ਕਥੇ ਇਹ ਤੋਂ ਲੈ ਕੇ ਤੂੰ ਜਦੋਂ ਜਦੋਂ ਤੋਂ ਸਿੱਖੀ ਪੈਦਾ ਹੋਈ ਹੈ ਇਹੀ ਕਥਾ ਤੇਰੀ ਹੈ ਇਹੀ ਕੰਮ ਕਰ ਰਹੀ ਹੈ ਤੂੰ ਥੱਲੇ ਨਰਕ ਜੋ ਕੱਢ ਕੇ ਉੱਪਰ ਨੂੰ ਲਿਆ ਰਹੀ ਹੈ ਜੀਵਾਂ ਨੂੰ ਸਾਰੇ ਆਲੂ ਜਿਹੜਾ ਕਵਤਾ ਤੇ ਆ ਕੇ ਅੜ ਜਾਂਦਾ ਉਹਨੂੰ ਵੀ ਮਾਰ ਕੇ ਫੇਰ ਘਰ ਲੈ ਕੇ ਜਾਂਦੀ ਥੱਲੇ ਨੂੰ ਨਹੀਂ ਆਣ ਦਿੰਦੀ ਥੱਲੇ ਨੂੰ ਜਾਣ ਤੇ ਰੋਕ ਰਹੀ ਦ ਸਭ ਨੂੰ ਇਹ ਹੈ ਗੁਰਮਤਿ ਦੀ ਡਿਊਟੀ ਇਹ ਹੈ ਗੁਰਮਤਿ ਦਾ ਕਰਮ ਹੁਕਮ ਦਾ ਹੁਕਮ ਦਾ ਕੰਮ ਕੀ ਹੈ ਇਹ ਕੰਮ ਹੁਕਮ ਦਾ ਕੰਮ ਹੈ ਹੈ ਪਰਮੇਸ਼ਰ ਦਾ ਸੁਰ ਆਪਣੇ ਘਰ ਨੂੰ ਲੈ ਕੇ ਜਾਣਾ ਜਗਾ ਕੇ ਸਾਰਿਆਂ ਨੂੰ ਆਪਣੇ ਨਾਲ ਬੁਲਾਉਣਾ ਸਾਰਿਆਂ ਨੂੰ ਇਹ ਕੰਮ ਕਿੰਕਣੀ ਪਰਸੋਹਣੀ ਸੁਰਨਰ ਮੋਹਣੀ ਸਿੰਘਾ ਰੋਹਣੀ ਬਤਲ ਤਲੇ ਕੀਕੜੀ ਹੁੰਦਾ ਇੱਕ ਲੱਕ ਦੇ ਉੱਤੇ ਚਾਰ ਗੋਗਲ ਦੀ ਕਿਵੜੀ ਪੱਟੀ ਵੱਡੀ ਹੁੰਦੀ ਹੈ ਸਾੜੀ ਦੇ ਉੱਤੇ ਦੀ ਔਰਤਾਂ ਦੇ ਉਹਨੂੰ ਤੜਾਕੀ ਕਹਿੰਦੇ ਨੇ ਬੱਚਿਆਂ ਦੀ ਵੀ ਤੜਾਕੀ ਹੁੰਦੀ ਹੈ ਯੂਪੀ ਦੇ ਵਿੱਚ ਹੁੰਦੀ ਹੈ ਜਾਲਾ ਯੂਪੀ ਦੇ ਵਿੱਚ ਉਹਦੇ ਥੱਲੇ ਕੋ ਗੁਰੂ ਬੰਨੇ ਹੁੰਦੇ ਨੇ ਚਾਂਦੀ ਦੀ ਹੁੰਦੀ ਹੈ ਸੋਹਰਿਆਂ ਦੀ ਵੀ ਹੁੰਦੀ ਹੈ ਜਿਹੜੇ ਅਮੀਰ ਰਾਜਾਂ ਦੇ ਸੋਹਰਿਆਂ ਦੀ ਹੋ ਸਕਦੀ ਹੈ ਅਮੀਰਾਂ ਆਪਦੇ ਤੇ ਚਾਂਦੀ ਦੀ ਹੁੰਦੀ ਹੈ ਬਹੁਤੇ ਜਿਹੜੇ ਉਹਨਾਂ ਦੇ ਦੂਜੇ ਇੱਕ ਚਿੱਟੀਆਂ ਦਾਤਾ ਹੋਰ ਸਲਵਾਰੀਆਂ ਗਰੀਬਾ ਉਹ ਨਹੀਂ ਹੁੰਦੀ ਆ ਗਰੀਬ ਜਹਾਜਾ ਕੋ ਗੁਰੂ ਜਰੂਰ ਉਹਦੇ ਛੋਟੇ ਛੋਟੇ ਲੱਗੇ ਹੁੰਦੇ ਨੇ ਕਈ ਜਿਹੜਿਆਂ ਦੇ ਸਗਲੇ ਪਾਏ ਹੁੰਦੇ ਨੇ ਲੱਗਦਾ ਮਤਲਬ ਹੈ ਸੰਤੋਖ ਤੱਕ ਦੀ ਜਿਹੜੀ ਆਵਾਜ਼ ਹੈ ਨਾ ਤੇਰੀ ਟਲਾਗੀ ਦਾ ਉਹ ਅੰਤ ਚੁੰਦੀ ਹੈ ਨਾ ਲੱਗ ਤੇ ਜਿਹੜੀ ਸੰਤੋਖ ਤੱਕ ਦਾ ਵੀ ਇਹ ਜਿਹੜਾ ਤੇਰਾ ਹੈ ਨਾ ਅੱਧ ਤੱਕ ਅੱਧ ਤੱਕ ਹੁੰਦਾ ਜਦੋਂ ਇਹ ਘਾਰੇ ਜੋ ਬਾਹਰ ਨਿਕਲਿਆ ਹੈ ਨਾ ਦਲਦਲ ਚ ਬਨ ਮਾਇਆ ਮ ਫਦਰ ਮਾਇਆ ਤੋਂ ਬਾਹਰ ਆ ਗਿਆ ਸੰਤੋਖੀ ਹੈ ਫੇਰੇ ਤੁਰਿਆ ਉਹ ਤੋਂ ਬਾਹਰ ਤਾਂ ਤੁਹਾਨੂੰ ਲੱਗਦਾ ਜੋ ਜੇ ਪੱਕਾ ਸੰਤੋਖ ਹੋ ਜਾਏ ਨਾ ਪੱਕੇ ਸੰਤੋਖੀ ਹੋ ਜਾ ਤਾਂ ਵੀ ਇਹ ਰਾਜ ਜੋ ਤੁਰਿਆ ਪੈਰ ਪਟੜ ਜੋਗਾ ਹੋਇਆ ਕੋਨ ਨੂੰ ਮਲਣ ਜਾਊਗਾ ਹੀ ਹੋਇਆ ਜੀ ਇਹ ਤਾਂ ਸੰਤੋਖੀ ਹੋ ਕੇ ਕਹਿੰਦੇ ਨੇ ਅਸੀਂ ਪਤਾ ਨਹੀਂ ਪਹੁੰਚ ਗਏ ਕੀ ਮਿਲ ਗਿਆ ਲੋਕਾਂ ਨੂੰ ਸੰਤੋਖੀ ਕੋਈ ਬਹੁਤੀ ਵੱਡੀ ਗੱਲ ਨਹੀਂ ਹੈ ਸੰਤੋਖੀ ਹੋਏ ਤਾਂ ਭੱਜੇ ਫਿਰਦੇ ਤੇ ਫਿਰ ਵੀ ਮਿਲੇ ਹੁਣ ਕੁਝ ਕਬੀਰ ਸੰਤੋਖੀ ਹੋ ਕੇ ਬਿਆਖਲ ਹੋਏ ਸੰਤੋਖੀ ਹੋਏ ਨੂੰ ਤਾਂ ਲੱਗਦਾ ਵੀ ਮਿਲੇ ਨਹੀਂ ਸਤੋ ਸਤੋ ਪਹਿਲਾਂ ਪਹਿਲਾਂ ਤਾਂ ਸਭ ਮਾਇਆ ਲਈ ਬੈਠਾ ਹੈ ਬਹੁਤ ਕੁਝ ਮਿਲਿਆ ਹੋਇਆ ਹੈ ਉੱਥੇ ਤਾਂ ਮੈਂ ਮੇਰਾ ਬਹੁਤ ਕੁਝ ਹੈ ਜਦ ਪਤਾ ਲੱਗਦਾ ਨਾ ਪ੍ਰਾਣੀ ਕਹਿੰਦਾ ਤੇਰਾ ਕਾ ਮੇਰਾ ਫਿਰ ਬਿਆਕਲ ਹੁੰਦਾ ਤੇਰਾ ਮੇਰਾ ਕੁਝ ਹੈ ਨਹੀਂ ਇਹ ਤੇ ਵਿਰਾਏ ਕੀ ਗੱਲ ਤੇਰਾ ਮੇਰਾ ਨਹੀਂ ਕੁਝ ਫਿਰ ਬਿਆਕਲ ਹੁੰਦਾ ਇਹ ਕੋਲ ਰਹਿੰਦਾ ਨਹੀਂ ਵਿਲੇ ਚ ਪੈਸੇ ਮੁੱਕ ਜਾਂਦੇ ਬਿਆਕਲ ਹੋ ਜਾਂਦਾ ਜਿੱਥੇ ਕੋਈ ਜਾਣਦਾਰਾ ਹੋਵੇ ਇਹ ਚਾਰਜ ਕੋ ਜਾਣਦਾ ਨਹੀਂ ਤੁਹਾਨੂੰ ਬਟਵਾ ਨਕਲ ਜਿਵੇਂ ਆ ਪੈਸੇ ਮੁੱਕ ਜਾਣ ਬਿਆਕਲਤਾ ਬੈਦਾ ਹੋ ਜਾਂਦੀ ਹੈ ਇੱਥੇ ਤਾਂ ਕਿਸ ਨੇ ਅਧਾਰ ਬਣੇ ਦੇਣਾ ਕੋਈ ਜਾਣਦਾ ਵੀ ਹੈ ਨਹੀਂ ਕੀ ਕਰਾਂਗੇ ਇਹ ਜੇ ਬੈਗਲਦਾ ਬੈਦਾ ਹੋ ਜਾਂਦੀ ਸਮਝ ਲਓ ਗੱਢੀ ਚੋਰੀ ਹੋ ਗਈ ਪਰਦੇਸ ਹੈਗਾ ਪਰਦੇਸ ਦੇ ਵਿੱਚ ਗੱਠੜੀ ਚੋਰੀ ਹੋ ਗਈ ਬੰਗਣਾ ਉਹ ਔਖਾ ਜਰਾ ਗੁਰ ਵਰਤਣਾ ਫੇ ਤਾਂ ਬੰਗਤਾ ਹੀ ਬਣੂ ਇਹ ਔਖਾ ਬਗਤਾ ਗਿਆ ਤਾਂ ਹੰਕਾਰ ਗਿਆ ਫਿਰ ਪਤਾ ਲੱਗਦਾ ਫੇ ਥੰਮੀ ਨਿਕਲ ਜਾਂਦੀ ਏ ਸਾਰੀ ਹੰਕਾਰ ਵਾਲੀ ਪਹਿਲਾ ਹੀਰਿਆਂ ਦੀਆਂ ਗੋਠੀਆਂ ਉਹ ਸਾਰੀ ਘੜੀ ਚਲੀ ਜਾਵੇ ਪਹਿਲਾਂ ਤਾਂ ਬਹੁਤ ਗੁੱਸੇ ਸੀ ਗਿਆ ਲਾਹਣ ਪਿੱਛੋਂ ਘੜੀ ਚੋਰੀ ਹੋ ਗਈ ਬਹੁਤ ਸੀ ਜ਼ਮਾਨਤ ਕੋਲ ਪਰਿਆ ਹੀ ਕੱਖ ਨਹੀਂ ਤਾਂ ਜੋ ਸਭ ਕੁਝ ਕੀਤਾ ਤੇ ਜਬਤਾ ਪੋਤਾ ਕੁਝ ਵੀ ਨਹੀਂ ਸੀਗਾ ਤੇ ਦੇਖਿਆ ਵੀ ਉਹ ਤਾਂ ਸਾਰਾ ਹੀ ਕੁਝ ਕੁਝ ਵੀ ਨਹੀਂ ਸੀ ਉਹ ਤਾਂ ਘੜੀ ਹੀ ਸੀ ਹੁਣ ਤਾਂ 1 ਰੁਪਈਆ ਲੈ ਹੂੰ ਕਬੀਰ ਕੀ ਕਹਦਾ ਮੈਨੂੰ 1 ਰੁਪਈਆ ਚਾਹੀਦਾ ਉਹ ਹੈ ਨਹੀਂ ਆਨ ਦੇਵ ਬਦਲਾਵੰਦਾ ਉਹ ਸਾਰੇ ਦੇਵੀ ਦੇਵਤੇ ਜਿੰਨੇ ਪਹਿਲਾਂ ਪੂਜੇ ਨੇ ਬਦਲੇ ਚ ਲੈ ਲੋ ਸਾਰੀ ਗਠੜੀ ਦੇਤੀ ਰਾਮਈਆ ਫਿਰ ਬਲੀਪੜ ਦਾ ਜੋਤੀ ਚਾਹੀਦਿਓ ਫਿਰ ਬਲੀਪੜ ਦੀ ਸਾਰੀ ਗਠੜੀ ਬਦਲੇ ਨਹੀਂ ਮਿਲਦਾ ਤਨਮਨ ਤਨ ਸਭ ਸੋਪ ਗੁਰ ਕੋ ਤਨਮਨ ਤਨ ਸਭ ਕੋ ਹੁਣ ਦੇ ਦੋ ਕਾਇ ਨਹੀਂ ਬਿੰਦਾ ਜੀ ਅਜੇ ਨਹੀਂ ਮਿਲਦਾ ਹਕੀਮਤ ਥੋੜੀ ਹੈ ਉਦੋਂ ਕਹਿੰਦੇ ਧਰਮਤ ਤਾਲਬ ਨੂੰ ਮਿਲ ਜਾਂਦਾ ਹੈ ਉਦੋਂ ਕਹਿੰਦੇ ਗੁਰਮਤ ਕਾ ਨਹੀਂ ਮਿਲਦਾ ਅਸਲ ਜਿਹੜੇ ਤਾਲਬ ਤੁਹਾਨੂੰ ਲੈ ਕੇ ਦਿੱਦੇ ਨੇ ਕੋਈ ਦਿੱਦਾ ਹੀ ਕੱਖ ਨਹੀਂ ਉਹਨਾਂ ਕੋਲ ਦੇਣ ਨੂੰ ਜੋ ਲੈਵੇ ਜਿਹੜੇ ਲੈਂਦੇ ਨੇ ਉਹ ਦੇਣ ਜੋਗਾ ਹੀ ਨਹੀਂ ਲੈਂਦੇ ਨਹੀਂ ਉਹ ਸਾਹਮਣੇ ਗੁਰੂ ਤਾਂ ਜਿਵੇਂ ਅਸੀਂ ਗੱਠੜੀ ਸੰਭਾਲਦੇ ਗੁਰਦੁਆਰੇ ਲਈ ਧੋੜੀਆ ਨਾ ਸੰਭਾਲੀ ਹੈ ਜਮਰਜੀ ਕਰ ਲਿਓ ਸਭਾਣੀ ਹੋਈ ਉਹਨਾਂ ਨੇ ਨਾ ਉਹ ਸਵਾਲਿਆ ਤਨਮ ਸੋਪ ਗੁਰ ਕੋ ਆਇਆ ਲਫਜ਼ ਦੇ ਗੁਰ ਕੋ ਨਹੀਂ ਆਇਆ ਸਭੇ ਆयो ਨਾ ਜਿਵੇਂ ਗੱਠੜੀ ਸਭાળੀ ਗਏ ਤੇ ਤੇ ਚੋਰੀ ਹੋ ਤੇ ਇੱਥੇ ਰੱਖ ਜਾ ਆਰਾਮ ਨਾਲ ਬੈਲਾ ਦੇਖ ਕੀਰਤਨ ਸੁਣ ਜਾ ਕੇ ਕਿਤੇ ਗੱਠੜੀ ਧਿਆਨ ਰੱਖੇ ਬਾਹਰ ਕੋਈ ਲੈ ਨਾ ਜਾਵੇ ਤੇ ਕੀਰਤਨ ਸੁਣੇ ਨਾ ਸਕੇ ਤਾਂ ਗੱਠੜੀ ਘਰ ਬਣਾਇਆ ਜੋੜਾ ਘਰ ਪਿਤਾ ਜੁੱਤੀ ਜੇ ਧਿਆਨ ਰਹੂਗਾ ਇਹ ਤਾਂ ਗੱਠੜੀ ਤੇ ਆ ਰਹੂਗਾ ਲੰਗਰ ਬਣਾਤਾ ਲੰਗਰ ਦਾ ਫਿਕਰ ਨਹੀਂ ਹੈ ਜਦ ਵਰਦੀ ਚਾ ਪੀ ਲੋ ਲੰਗਰ ਛਕ ਲੋ ਗੱਠੜੀ ਦਾ ਫਿਕਰ ਨਹੀਂ ਹੈ ਜਦ ਵਰਦੀ ਜਾ ਕੇ ਜੋ ਚੀਜ਼ ਮਰਜੀ ਕੱਢ ਲੋ ਕਿਉਂ ਬਣਾਇਆ ਤੁਸੀਂ ਕੱਬ ਕੱਬ ਉੱਥੇ ਸੁਣ ਸਕੋ ਬੈਠ ਕੇ ਕੁਝ ਕੌਣ ਸੁਣਦਾ ਸੁਣਦੇ ਫੇਰ ਵੀ ਇਹਨੂੰ ਸਮਝਿਆ ਨਹੀਂ ਕਿ ਬਣਾਇਆ ਉਨਾ ਸਮਝਾਉਣ ਵਾਲਾ ਕੋਈ ਨਾ ਸਮਝਣ ਵਾਲਾ ਸਭ ਨੂੰ ਕੋਈ ਜਾਂਦਾ ਉੱਥੇ ਤਾਂ ਜ਼ਾਹਰ ਕਰ ਜੀਓ ਤੇਰੇ ਸੋਨਾ ਕੇ ਹੱਜ ਲੱਗਿਆ ਸੁਣਿਆ ਹੋਇਆ ਉਥਾ ਦੇਖਣ ਜਾਂਦੇ ਤੇਰੇ ਬੇਰੀ ਕਿਤੇ ਬਾਬਾ ਦੀਪ ਸਿੰਘ ਦੀ ਫੋਟੋ ਕਿੱਥੇ ਐ ਕਿਦਣਾ ਸੀ ਸਟਿਆ ਸੀ ਉਹ ਜਿਹੜੇ ਕਹਾਣੀਆਂ ਨੇ ਸੁਣ ਜਾਈਓ ਉਹ ਦੇਖਣ ਜਾਂਦੇ ਨੇ ਟੈਲੀ ਕਰਨ ਕੋਈ ਕੀਰਤਨ ਸੁਣ ਜਾਂਦਾ ਉਥੇ ਨਾ ਉਥੇ ਕੋਈ ਸੁਣਾਉਣ ਵਾਲਾ ਹੀ ਐ ਦੱਸਣ ਵਾਲਾ ਵੀ ਦੋਏ ਤਰ੍ਹਾਂ ਇੱਕੋ ਜਿਹੇ ਇਹਨਾਂ ਨੂੰ ਜੋ ਚਾਹੀਦਾ ਉਹ ਲੈਣ ਜਾਂਦੇ ਨੇ ਉਹਨਾਂ ਨੂੰ ਜੋ ਚਾਹੀਦਾ ਦੇਣ ਜਾਂਦੇ ਨੇ ਉਹਨਾਂ ਨੂੰ ਕੀ ਚਾਹੀਦਾ ਉਹਨੂੰ ਚਾਹੀਦੀ ਹੈ ਵਾਇ ਨੇ ਉਹਨਾਂ ਨੂੰ ਜੋ ਇਹਨਾਂ ਨੂੰ ਚਾਹੀਦਾ ਉਹ ਲੈ ਆਉਂਦੇ ਨੇ بس ਲੋਇ ਰਾਜੇ ਨੇ ਲੋਇ ਤੇ ਰਾਜੇ ਨੇ ਰੌਲਾ ਕੋਈ ਨਹੀਂ ਫਿਰ ਰੌਲਾ ਦਾ ਉਹ ਰਾਜੇ ਨੂੰ ਹੋਰ ਚਾਹੀਦਾ ਰੌਲਾ ਉਹਦਾ ਜਿਹਨੂੰ ਕੁਝ ਚਾਹੀਦਾ ਹੋਰ ਉਹਦਾ ਰੌਲਾ ਹੈ ਵੀ ਤੁਸੀਂ ਕਾਸ ਨੂੰ ਬੈਠੇ ਹੋ ਉੱਥੇ ਤੁਹਾਨੂੰ ਕੋ ਦੇ ਹੀ ਨਹੀਂ ਰਹੇ ਕੀਤਾ ਹੋਇਆ ਦੇ ਹੀ ਨਹੀਂ ਰਹੇ ਤੇਨ ਕੁਝ ਅੱਗੇ ਤੋਰੇ ਨਹੀਂ ਰਹੇ ਜੋ ਤੁਸੀਂ ਫਸਿਆ ਨੂੰ ਆਹ ਕੀ ਸੀ ਆ ਕਮਾ ਗੁਰ ਮਤ ਦਾ ਜਿਹੜਾ ਇੱਥੇ ਲਿਖਿਆ ਹੋਇਆ ਹੈ ਇਹ ਤਾਂ ਆਤ ਨੂੰ ਲੈ ਗਈ ਤੂੰ ਨਰਕਨ ਵਰਡ ਕਰਨੀ ਜੇ ਤੁਸੀਂ ਕੀ ਦਾ ਨਰਕਨ ਕਰ ਰਹੇ ਹੋ ਜੇ ਨਰਕਨ ਘੜ ਨਹੀਂ ਹੋ ਰਹਾ ਇਹਦਾ ਮਤਲਬ ਹੈ ਫੇਰ ਗੁਰਮਤ ਦਾ ਪ੍ਰਚਾਰੇ ਨਹੀਂ ਹੋ ਰਿਹਾ। ਉਹ ਤਾਂ ਗੁਰਮਤ ਦੀ ਹਾਜ਼ਰੀ ਹੋ ਹੈ ਦੀ। ਜੇ ਗੁਰਮਤ ਹਾਜ਼ਰ ਹੈ ਤਾਂ ਨਰਕ ਕਟਵਾਰਣ ਹੋ ਰਿਹਾ ਹੈ। ਨਰਕ ਕਟਵਾਰਣ ਨਹੀਂ ਹੋ ਰਿਹਾ ਗੁਰਮਤ ਦਾ ਉੱਤੇ ਜਿਕਰੇ ਨਹੀਂ ਹੈ। ਗੁਰਵਤ ਨਾਉਂ ਦੀ ਚੀਜ਼ੇ ਕੋਈ ਨਹੀਂ ਹੈ। ਜੇ ਗੁਰਮਤ ਹੈ ਤਾਂ ਨਰਕ ਕਟਵਾਰਣ ਹੈ। ਜੇ ਗੁਰਮਤ ਨਹੀਂ ਤਾਂ ਨਰਕ ਕਟਵਾਰਣ ਨਹੀਂ। ਫੇਰ ਕੀ ਵੈਦ ਹੈ? ਇਨੇ ਡੰਬਾ ਨੂੰ ਫਿਰ ਕੀ ਫਾਇਦਾ ਹੋਇਆ ਕਿ ਇਹ ਸੇ ਗਾਲੂ ਬਣਾਇਆ ਦਾ ਕਿ ਇਹੀ ਬੰਤਪਤਾ 1758 ਦੇ ਆਲਾ ਹੀ ਗੁਰੂ ਹੁੰਦਾ ਗੱਲ ਵਿਚਾਰਨ ਵਾਲੀ ਹੈ ਜਵਾਬ ਸਾਨੂੰ ਦੇਣਾ ਪਊ ਜਿਹਨੇ ਜ਼ਿੰਮੇਵਾਰੀ ਹੈ ਡਿਊਟੀ ਸਾਡੀ ਹੈ ਚੰਡਾ ਵਰਦਾਰ ਅਸੀਂ ਬਣਾਏ ਚੌਕੀਦਾਰ ਅਸੀਂ ਬਣਾਏ ਹਾਂ ਹੁਣ ਪੰਜ ਪਹਿਰੇ ਗਾਸ ਨੂੰ ਬਣਾਏ ਸੀ ਚੌਕੀਦਾਰ ਸੀ ਉਹ ਜਦ ਨਗਰਦਾਸੀ ਬਾਦ ਦੇ ਵਿੱਚ ਵਿਚਰਨਾ ਗਾਂ ਲੱਗੇ ਜਾਣਾ ਸੀ ਅਖਵਾਈ ਦੇਣੀ ਸੀ ਉਹ ਤਾਂ ਕਰਨੀ ਛੱਡ ਦਿੱਤਾ ਸੀ ਪੰਜ ਸੀ ਉਹੀ ਜਿਹੇ ਜਹਾਜ਼ਦਾਰ ਲੋਬੀ ਸਾਡਾ ਸਿੰਘ ਸਾਹਿਬਾਨ ਕੰਮ ਫਿਰ ਕਮ ਕੰਮ ਕੀ ਹੈ ਬਸ ਕੰਮ ਨੂੰ ਪਛਾਣੋ আর ਆਪਣੀ ਡਿਊਟੀ ਆਉਂ ਲੋ ਜੇ ਮੈਂ ਦਿੰਦਾ ਸੀ ਬੈਠਾ ਸੀ ਨਾ ਛਾਪੜਾ ਦੁੱਧ ਪੀ ਕੇ ਉਹ ਮਨੇ ਕਹਨੇ ਚ ਕਿਹਾ ਨਾ ਫਿਰ ਸਾਧਣਾ ਵੀ ਭਰੇਗਾ ਕਿੱਥੇ ਖਾ ਕੇ ਤੋਂ ਮੱਧ ਤੁਨ ਕਾਲੀ ਜਿ ਦੱਸਤਾ ਹੁਣ ਤੁਸੀਂ ਮੰਨੋ ਚਾਹੇ ਨਾ ਮੰਨੋ ਉਹ ਬੜੇ ਹੀ ਹਾਲ ਹੋਊਗਾ ਫਿਰ ਕਿੰਕਣੀ ਪਰਸੋਹਣੀ ਕਿੱਕੜੀ ਪਰਸੋਹਣੀ ਸਭ ਲੋਕ ਤੱਕਦਾ ਵੀ ਜਿਹੜਾ ਸੀਰਲ ਗਿਆਨ ਉੱਥੇ ਤਾਂ ਉਹ ਵੀ ਹੈ ਦੀ ਉਹ ਵੀ ਪਹਿਲਾਂ ਜਿਹੜਾ ਸੀਰਾ ਪਹਿਲਾਂ ਪਹਿਲਾਂ ਚੰਗੇ ਵਸੇ ਜਾਂ ਤੁਰਦਾ ਕੀ ਹੁੰਦਾ ਜਿਹਨ ਮਾਨਸ ਤੇ ਦੇਵਤੇ ਕੀਏ ਬਲੇਹਾਰੀ ਗੁਰ ਆਪਣੇ ਦਿਹਾੜੀ ਸਦ ਬਾਤ ਜਿਹਨ ਤੇ ਦੇਵਤੇ ਕੀਏ ਮਰਜ਼ ਤੋਂ ਦੇਵਤਾ ਬਣਾਤਾ ਸੋਣਾ ਬਣਾਤਾ ਨਾ ਪਰ ਜਦ ਸੰਤੋਖ ਹੋ ਗਿਆ ਸੋਣਾ ਤਾਂ ਹੋਰ ਸੋਪਣਕ ਹੋ ਗਿਆ ਪਰ ਸੋਣਾ ਹੁੰਦਾ ਸੋੜੇ ਤਾਂ ਹੋਰ ਸੋਣਾ ਬਣਾ ਦਿੰਦਾ ਪਿੰਕਣੀ ਪਰਸੋਹਣੀ ਪਰਸੋੜੀ ਸੁਰਨਾਰ ਮੋਹਣੀ ਸੁਰਨਾਰ ਮੋਹਕਲੀ ਜਿਹੜੇ ਸੁਰਨਾਰ ਨੇ ਸੁਰਨਾਰਾਂ ਕੋਲ ਸੰਤੋਖ ਨਹੀਂ ਹੁੰਦਾ ਉਹ ਵੀ ਮੋਹੇ ਜਾਂਦੇ ਨੇ ਉਹ ਵੀ ਜਿਹੜੇ ਹੁੰਦੇ ਨੇ ਨਾ ਉਹਦੀਆਂ ਗੱਲਾਂ ਨਾਲ ਉਹ ਵੀ ਹੱਥ ਜੋੜਦੇ ਨੇ ਵਿਵਸਥਾ ਦੀ ਉੱਪਰ ਚਲੀ ਗਈ ਚੰਗਾ ਸਮਝਦੇ ਨੇ ਉਹ ਉਹ ਪੈਦਾ ਦੇਖੋ ਸਾਨੂੰ ਗੁਰੂਆਂ ਨੇ ਉਹ ਹੈ ਸਿੱਖ ਹੁਕਮਾ ਦੇ ਭਈ ਕਾਦੇ ਕਿਹੜੀ ਗੱਲ ਦਾ ਉਹ ਐਸੇ ਗੱਲ ਤੋਂ ਨਾ ਇਹ ਗੱਲ ਸੀਗੀ ਵੋੜੀ ਸੋੜ ਨੋੜੀ ਉਹ ਸਾਹਿਬ ਜਦਾਂ ਨਾ ਉਹ ਕਹਿੰਦੇ ਸਾਰਿਆਂ ਦਾ ਹੀ ਉਹ ਕੰਬੁਰੇ ਲੱਗਦੇ ਨੇ ਉਸ ਚੰਨ ਬੋ ਤਾਂ ਬੁਰਾ ਲੱਗਦਾ ਕਿਹੜੀ ਗੱਲਾਂ ਉਹ ਐਸੀ ਗੱਲਾਂ ਉਹ ਹੈ ਕਿੰਕਣੀ ਪਰਸਾਉਣੀ ਕਿੰਕਣੀ ਪਰਸਾਉਣੀ ਸੀ ਉਹ ਲੋਜ ਸਭ ਕੁਝ ਛੱਡਦਾ ਪਰਵਾਹ ਨਹੀਂ ਕੀਤੀ ਸੱਚ ਕਹਤਾ ਤਰ ਬਾਅਦ ਤਾਂ ਸਭ ਕੁਝ ਛੱਡਦਾ ਸਾਰਿਆਂ ਉੱਪਰਾਂ ਠੋਕਰਾਤੀ ਸੁਤੋ ਦਿਖਾਤਾ ਨੂੰ ਵੀ ਸੁਤੋ ਕੀ ਹੁੰਦਾ ਉਹ ਗੱਲ ਹੈ ਸੁਣਨਾਰ ਬੋਲੀ ਬੋ ਰਹਾ ਹੈ ਜੇ ਸੁਣ ਲੈ ਅੰਦਰ ਨੂੰ ਜਿਹੜੇ ਇਹ ਨਹੀਂ ਹਨ ਉਹਨਾਂ ਦਾ ਬੋਲ ਨਹੀਂ ਜਿਹੜੇ ਸੋਲ ਨੇ ਦੇਵਤੇ ਨੇ ਧਰਵੀ ਚ ਅੱਗੇ ਹੁੰਦੇ ਨੇ ਧਰਵੀ ਆਦਮੀ ਭਲੇ ਆਦਮੀ ਨੂੰ ਕਹਿੰਦੇ ਨਾਰਾ ਆਦਮੀ ਸੱਚੇ-ਸੁੱਚੇ ਨੂੰ ਕਹਿੰਦੇ ਕਹਿੰਦਾ ਉਹ ਸੀ ਬੋਲ ਤੇ ਪੂਰਾ ਉਤਰਨਾ ਜ਼ਬਾਨ ਦਾ ਪੂਰਾ ਹੋਣਾ ਕਿਸੇ ਨਾਲ ਧੋਖਾ ਨਹੀਂ ਕਰਨੇ ਨਾਰਾ ਆਦਮੀ ਇਹ ਵੀ ਠਗੀਰੀ ਕਰਨੀ ਗਰੀਬ ਦੇ ਪੱਖ ਤੇ ਖੜ ਜਾਣਾ ਕਰੀਬ ਘਤਰ ਖੜ ਜਾਣਾ ਜੇ ੱਤਕਾ ਹੁੰਦਾ ਵੀ ਮੈਂ ਖੜਾ ਵੀ ਆਓ ਕਿਹੜਾ ਹੁੰਦਾ ਇਹ ਦਾੜਾ ਵੀ ਦਾ ਕਪੂੜਾ ਨਰ ਤੇ ਬਾਅਦ ਵਿੱਚ ਸ਼ੋਰ ਹੁੰਦਾ ਸ਼ੋਰ ਕਦ ਬਣਦਾ ਜਦੋਂ ਹੁਕਮ ਦੇ ਵਿੱਚ ਚੱਲਣ ਲੱਗਦਾ ਹੁਕਮਨ ਸ਼ੋਰ ਆਪਣੇ ਬਲਾਉਣੀ ਸ਼ੁਰੂ ਕਰਦਾ ਨਾ ਫਿਰ ਨਰ ਤੇ ਸ਼ੋਰ ਵੜ ਜਾਂਦਾ ਨਰ ਫਿਰ ਵੀ ਰਹਿੰਦਾ ਨਰ ਫਿਰ ਵੀ ਰਹਿੰਦਾ ਫਿਰ ਉਹਨੂੰ ਫੁੱਲ ਆਉਣੇ ਦੀ ਤਿਆਰੀ ਹੋ ਜਾਂਦੀ ਹੈ ਪੱਤੇ ਨੰਮੇ ਫੁੱਟਣ ਲੱਗ ਜਾਂਦੇ ਨੇ ਹਾਂ ਚੱਲ ਪੈਦ ਨਾ ਪੌਦਾ ਜਾਂ ਪੱਤੇ ਫੁੱਟਣ ਲੱਗੇ ਫਿਰ ਫੁੱਲ ਵੀ ਆਊਗਾ ਜਦ ਫੁੱਲ ਲਾਉਂਦੇ ਨੇ ਫਿਰ ਸੋਪਣ ਹੁੰਦਾ ਪੌਦੇ ਨੂੰ ਆ ਫੁੱਲ ਵਾਲੀ ਗੱਲ ਹੈ ਪੌਦਾ ਤਾਂ ਹਰਾ ਭਰਾ ਵੀ ਸੋਹਣਾ ਲੱਗਦਾ ਹਰਾ ਹੋਵੇ ਨਾ ਪੌਦਾ ਸੋਹਣਾ ਲੱਗਦਾ ਸੁੱਕਾ ਹੋਵੇ ਅ ਸੁੱਕਾ ਜਬਰਾ ਲੱਗਦਾ ਪਰ ਜਦ ਫੁੱਲ ਆ ਜਾਂਦੇ ਨੇ ਫਿਰ ਪਰਸੋ ਹੋ ਜਾਂਦਾ ਪਰਸੋ ਹਣੀ ਆਉਂਦਾ ਹਰ ਪੇਰ ਹੁੰਦਾ ਐ ਜੋ ਫਾੜ ਹੁੰਦਾ ਫਾੜਾ ਕੇ ਜੇ ਫੁੱਲ ਆ ਗਈ ਝੜ ਜਾ ਫੇਰ ਵੀ ਕੁਛ ਨਹੀਂ ਗੱਲ ਫੁੱਲ ਆਉਂਦਾ ਤਾਂ ਉਹਦੀ ਸੋਪੜ ਨੂੰ ਪਰਸੋ ਹੁੜੀ ਕਹਿੰਦੇ ਨੇ ਫੇਰ ਸੁਰ ਨਾਰਾ ਮੋਹਣੀ ਬੋੜੀ ਸਿੰਘਾ ਰੋਣੀ ਬਿੱਤਲ ਤਲੇ ਸਿੰਘ ਅਰ ਹੋਣੀ ਫੇਰ ਫਾੜ ਲੱਗਦਾ ਸੇ ਬੋੜ ਹੁੜੀ ਹੁੰਦੀ ਆ ਨਾ ਗਿਆਨ ਫਾੜ ਲੱਗਦਾ ਸੇ ਤੇ ਦਾ ਨੌਰ ਬਿੱਤਲ ਤਲੇ ਫੇਰ ਗਿਆਨ ਫੜ ਲੱਗਦਾ ਜਾ ਕੇ ਕਿਤੇ ਕੋਈ ਨਾ ਤਤ ਗਿਆਨ ਆ ਨਾ ਉਹ ਸਿੱਧਾ ਫੇਰ ਉੱਥੇ ਲੱਗਦਾ ਪੌਦੇ ਨੂੰ ਸਿੰਘ ਅਰਹੋੜੀ ਹਾਂ ਵਿਤਲ ਤਲੇ ਵਿਤਲ ਤਲੇ ਥਲੇ ਨੂੰ ਜਾ ਸਕਦੀ ਫੇਰ ਉਹ ਉੱਤੇ ਜਾਉ ਉੱਤੇ ਹੀ ਉੱਤੇ ਵਿਤਲ ਤਲੇ ਤੋਂ ਉੱਤੇ ਨੂੰ ਉੱਠੇ ਪਾਸੇ ਨੂੰ ਫੇਰ ਗੰਗਾ ਜਮਨਾ ਗੰਗਾ ਚ ਮਿਲ ਜੂ ਗੰਗਾ ਉਲਟੀ ਹੈ ਪਹਾੜਾ ਤੈਨੂੰ ਛੜਦੀ ਹੈ ਫੇ ਜਬ ਜੀ ਵੀ ਥੱਲੇ ਰਹਿ ਜਾਂਦਾ ਰਾਮਚੰਦਰ ਵੀ ਥੱਲੇ ਰਹਿ ਜਾਂਦਾ ਸਾਰੀਆਂ ਬੱਤਾਂ ਨੂੰ ਫੇ ਐਸੀ ਪਹਾੜ ਤੇ ਨੂੰ ਚੜਦੀ ਇਹ ਸਭ ਤੋਂ ਉੱਚੀ ਗਉ ਉੱਚੀ ਜਾ ਛੜਦੀ ਹੈ ਜੈ ਜੈ ਜੈ ਹੋਸੀ ਸਭ ਠੌਰ ਨਿਵਾਸਣ ਜੈ ਜੈ ਹੋਸੀ ਸਭ ਠੌਰ ਨਿਵਾਸਣ ਸਭ ਥਾਂ ਨਿਵਾਸਣ ਸਾਰੇ ਹਿਰਦਿਆਂ ਚਾਦਰੂ ਪ੍ਰਗਟ ਕਿਹੜੇ ਰੂਪ ਚ ਕਿਹੜੇ ਰੂਪ ਚ ਪ੍ਰਗਟ ਹੈ ਅੰਤਰਾ ਤੋਂ ਹੀ ਆਵਾਜ਼ ਦੇ ਰੂਪ ਚ ਅੰਤਰਾ ਹਵਾ ਦੀ ਆਵਾਜ਼ ਬੀਜ ਰੂਪ ਹੈ ਨਾ ਬੀਜ ਕੀ ਹੁੰਦਾ ਇਹਦੀ ਅਸਲ ਚ ਬੀਜ ਨਹੀਂ ਹੁੰਦਾ ਜੜ ਹੁੰਦੀ ਹੈ ਪਦੀਨਾ ਦੀਆਂ ਜੜਾ ਲਾਉਂਦੇ ਬੀਜ ਹੁੰਦਾ ਪਦੀਨਾ ਦਾ ਜੜੇ ਉਹਦੀ ਬੀਜ ਹੁੰਦਾ ਉਹ ਜੜੀਆਂ ਜੀਜਾਂ ਨੇ ਕਾਏ ਹੁਣ ਕਾ ਦਾ ਕਾਦੀ ਜਾਲੂ ਬੀਜ ਉੱਤੇ ਕਾ ਜੜ ਹੁੰਦੀ ਹੈ ਬਸੇ ਦੀ ਜੜੇ ਇਹਦਾ ਬੀਜ ਉਹ ਜੜ ਹੈ ਇਹਦੀ ਆਤਮਾ ਦੀ ਆਵਾਜ਼ ਜੜ ਹੈ ਬਸ ਇਹਨੇ ਬਰਨਾ ਕਾ ਜੜ ਤੋਂ ਹੀ ਫੁੱਟਣਾ ਪਰ ਫੁੱਟੂ ਤਾਂ ਜਿਹਨੂੰ ਨਾਮ ਦੂਦਰਾ ਮਰਦ ਬਿੜੂਗਾ ਜੇ ਪਤੀ ਇਹਨਾਂ ਨੂੰ ਪਾਲੀਓ ਸੁੱਕੀ ਹੋਵੇ ਜੜਦਾ ਰਹਿ ਜਾਂਦੀ ਹੈ ਫੇਰ ਵੀ ਖੁਸ਼ਕੀ ਵੀ ਉਹਦੀ ਕਈ ਪੌਦਿਆਂ ਦੀ ਕਿੰਨੀ ਖੁਸ਼ਕੀ ਹੋਵੇ ਕੋਟੂਬੇ ਦੀ ਫੇਲ ਫੇਰ ਵੀ ਰਹਿ ਜਾਂਦੀ ਹੈ ਸਭੋ ਜਦ ਗਰਮੀ ਜ਼ਿਆਦਾ ਹੁੰਦੀ ਹੈ ਨਾ ਜ਼ਿਆਦਾ ਗਰਮੀ ਹੁੰਦੀ ਹੈ ਖੁਸ਼ਕੀ ਜ਼ਿਆਦਾ ਪੈਂਦੀ ਹੈ ਫੇਰ ਫੁੱਟਦੀ ਹੈ ਉਹ ਕੋਈ ਪੁੱਛੂ ਬਈ ਖੁਸ਼ਕੀ ਜੀ ਫੁੱਟਦੀ ਹੈ ਜਮੀਨ ਤੇ ਸੁੱਕੀ ਜਮੀਨ ਸੁੱਕੂਗੀ ਕੋਟੂਬੇ ਦੀ ਫਲ ਫੁੱਟੂਗੀ ਵਗਾਰ ਮਾਰਸ ਤੇ بارش ਵੀ ਤੇ ਵਰ੍ਹ ਜਾਂਦੀ ਹੈ ਸਭ ਨੂੰ ਥੱਲੇ ਹੈ ਜਮੀਨ ਤੋਂ ਜਿਹੜੀ ਥੱਲਿਓਂ ਪਾਣੀ ਸੁੱਕਦਾ ਨਾ ਉੱਤੇ ਰੋਂਦਾ ਜਮੀਨ ਦੇ ਥੱਲਿਓਂ ਪਾਣੀ ਉੱਤੇ ਰੋਂਦਾ ਰਹੇਦਾ ਪਾਫ ਜਿਵੇਂ ਆਪਣੇ ਪਸੀਨਾ ਬਾਹਰੋਂ ਆਉਂਦਾ ਇਧਰੋਂ ਮਾਟੀ ਕੋ ਜਾਲ ਦਾਇਦਰਸ ਤੇ ਆਗਾ ਬਟ ਸੂਰਜ ਦੀ ਧੋਪ ਪੈਂਦੀ ਹੈ ਥੱਲਿਓਂ ਪਾਣੀ ਵੀ ਆਉਂਦਾ ਇਹਦੀ ਗਰਮੀ ਬੁਝਾਉਣ ਵਾਸਤੇ ਆਹਨੇ ਸੁਗਦੀਆ ਥੱਲੇ ਸੇ ਮਿੱਟੀ ਪਾਣੀ ਉੱਤੇ ਰੂਹ ਦਾ ਭਾ ਬਣ ਕੇ ਉੱਡਦਾ ਰਹਦਾ। ਉਹ ਜਿਹੜੀ ਭਾਫ ਲੱਗਦੀ ਹੈ ਜੜ੍ਹਾਂ ਨੂੰ ਉਹਦੇ ਨਾਲ ਉਹ ਤੋਂ ਉਹ ਲੈ ਲੈਂਦਾ। ਘੜਦੂਪੇ। ਉਹਦੇ ਨਾਲ ਜੜ੍ਹ ਹਰੀ ਹੋ ਜਾਂਦੀ ਹੈ। ਬਦਲ ਥਲੇ ਥੱਲੇ ਨੂੰ ਨਹੀਂ ਜਾ ਸਕਦੇ। ਜਾਇ ਸਭ ਠੌਰ ਨਿਵਾਸਨ ਸਭ ਠੌਰ ਨਿਵਾਸਨ ਜੜ ਦੇ ਰੂਪ ਚ ਨਿਵਾਸ ਕਰਦੀ ਹੈ। ਸਾਡੇ ਅੰਦਰ ਸਾਰੇ ਅੰਦਰ ਬਾਏ ਪਤਾਲ ਆਕਾਸ਼ ਅਨਲੇ ਬਾਏ ਹਵਾ ਪ੍ਰਕਾਸ਼ ਪਤਾਲ ਅਨ ਬਾਏ ਕੀ ਕਹਿੰਦੇ ਨੇ ਸਾਡੇ ਬੋਲ ਵਿੱਚ ਆਵਾਜ਼ ਵਿੱਚ ਨਿਵਾਸ ਕਰਦੀ ਹੈ ਫਿਰ ਉਹ ਅੰਦਰ ਆਤਮਾ ਦੀ ਹੈ ਪਹਿਲਾਂ ਤਾਂ ਉਹ ਲੋ ਬੋਲ ਵੀ ਦੱਸ ਸਕਦਾ ਆਦਮੀ ਉਹ ਕਹਿੰਦਾ ਵੀ ਅਸਲੀ ਗੱਲ ਦੱਸ ਕੀ ਹੈ ਮਾਨਦਾਰੀ ਨਾਲ ਚਾਹੇ ਇਮਾਨਦਾਰੀ ਦੀ ਗੱਲ ਕਰਦਾ ਫਿਰ ਬਾਏ ਦੇ ਵਿੱਚ ਨਿਵਾਸ ਕਰ ਜਾਂਦੀ ਹੈ ਆ ਬਾਣੀ ਕੀ ਹੈ ਬਾਦਰ ਬਚਿਆ ਨੂੰ ਉਹ ਕਹਿਆ ਬਾਉਰੀ ਹੈ ਇਹਦੇ ਵਿੱਚ ਵੀ ਨਿਵਾਸ ਕਰਦੀ ਹੈ ਆਕਾਰ ਫਿਰਦੇ ਚ ਨਿਵਾਸ ਕਰਦੀ ਹੈ ਪਤਾਲ ਪਤਾਲ ਤਾਂ ਹੈ ਫਿਰ ਉਹ ਪਤਾਲ ਕਹਿੰਦੇ ਨੇ ਆਨਲੇ ਆਨਲੇ ਅਨਲ ਕਹਿੰਦੇ ਨੇ ਪ੍ਰਚੰਡਤਾ ਅੱਗ ਦੇ ਵਿੱਚ ਉਹ ਪ੍ਰਚੰਡਤਾ ਵੀ ਜਿਹੜੇ ਸਰੀਰ ਦੇ ਵਿੱਚ ਅੱਗ ਆ ਨਾ ਹਰ ਗਰਮੀ ਇਹ ਵੀ ਉਹਦੀ وجہ ਨਾਲ ਹੈ ਫਿਰ ਤੇ ਗਰਮੀ ਕਾਦੀ ਵਜਨ ਨਾਲ ਆਤਮਾ ਜੇ ਹੈ ਸਰੀਰ ਤੇ ਤਾਂ ਗਰਮਾ ਆਤਮਾ ਰਿਕੜੀ ਠੱਡੀ ਹੋ ਜਾਂਦਾ ਹੈ ਸਰੀਰ ਚਾਹੇ ਗਰਮੀ ਜੇ ਜਿੰਨੀ ਮਰਜੀ ਗਰਮੀ ਪੈਂਦੀ ਹੋਵੇ ਆਦਮੀ ਭਰ ਜਾਂਦਾ ਸਰੀਰ ਠੱਡਾ ਹੋ ਜਾਂਦਾ ਗਰਮੀ ਕਾਦੀ ਸੀ ਕਾਦੀ ਗਰਮੀ ਸੀ ਆ ਸਰੀਰ ਦੀ ਅਗਜ ਤੇਰਾ ਨਿਵਾਸ ਹੈ ਸਰੀਰ ਗਰਭ ਤੇਰੇ ਕਰਕੇ ਆ ਕਿਉਂ ਬਬੀਹਾ ਜਲ ਮੇ ਤੇਰਾ ਬਾਸ ਹੈ ਉਹਦਾ ਬਬੀਹਾ ਨਾ ਮਾਨੋ ਉਹਦਾ ਜਿਹੜਾ ਪਾਣੀ ਹੈ ਨਾ ਸਰੀਰ ਦਾ ਉਹਦੇ ਵਿੱਚ ਨਿਵਾਸ ਕਰਦਾ ਹੈ ਤਾਂ ਕਹਿ ਜੇ ਜਲ ਤੇਰੇ ਵਿੱਚ ਪਲਸਾ ਜੇ ਦਾ ਜਲ ਵਿੱਚ ਬਾਸ ਹੈ ਜਦਨ ਖੂਲਦਾ ਦੌਰਾ ਘਟ ਜਾਂਦਾ ਉਦੋਂੇ ਕੰਮ ਬਾਹ ਹੱਥ ਪੈਰ ਲੜ ਜਾਂਦੇ ਨੇ ਫਿਰ ਫਿਰ ਨਹੀਂ ਕੰਮ ਕਰਦੇ ਜਦਨ ਖੂਲਦਾ ਦੌਰਾ ਹੈ ਉਦੋਂ ਬਵਿਹੇ ਦੀ ਸ਼ਕਤੀ ਕੰਮ ਕਰਦੀ ਹੈ ਹੱਥ ਪੈਰ ਹਿਲਦਾ ਜਦਨ ਖੂਲਦਾ ਦੌਰਾਂ ਨਹੀਂ ਰਹਿੰਦਾ ਤੇ ਫਿਰ ਤਬ ਬਵਿਹ ਹੈ ਜਾਂ ਜਿਉਂਦਾ ਵੀ ਹੈ ਸਰੀਰ ਹੈਗਾ ਵੀ ਹੈ ਉਹ ਫਿਰ ਬਾਹ ਬਰੀ ਚੱਕ ਹੁੰਦੀ ਬਵਿਹ ਤੇ ਸ਼ਕਤੀ ਨਹੀਂ ਹੈ ਉਦੋਂ ਉਹਦਾ ਨਵਾਸ ਉਦੋਂ ਬੰਦ ਹੋ ਗਿਆ ਹਾਂਜੀ ਸੰਕਟ ਨਿਵਾਰਨੀ ਅਦਮ ਉਧਾਰਨੀ ਸੰਕਟ ਨਿਵਾਰਨੀ ਸੰਕਟ ਕੀ ਹੈ ਸੰਕਟ ਨਿਵਾਰਨੀ ਧਰਮ ਸੰਕਟ ਫਸੇ ਨੇ ਨੇ ਸਭ ਤੋਂ بڑا ਸੰਕਟ ਧਰਮ ਪਰਮ ਜਿਹੜਾ ਇਹ ਫਸ ਗਿਆ ਕੋਬੜ ਘੇਰੀ ਚ ਸੰਕਟ ਜੇ ਫਸ ਗਿਆ ਆਪਣੀ ਜਾਣੇ ਧਰਮਕ ਹੈ ਤਾਰਮ ਹੈਰੀ ਕੋਲ ਸੰਕਟਨ ਵਾਲੀ ਪਰਬ ਨੂੰ ਡਵਾਨ ਕਰਨ ਵਾਲੀ ਆਦਮ ਉਧਾਰਨੀ ਇਹ ਵੀ ਆਦਮ ਹੈ ਦੇਖੋ ਆ ਤਾਂ ਸੰਕਟ ਵਾਲੇ ਦਾ ਇਹ ਵੀ ਰੁਕਿਆ ਆਇਆ ਹੈ ਜਲ ਪਰ ਮੈਂ ਪਰਮ ਵੀ ਰੋਕ ਲੈਂਦਾ ਆਦਮ ਉਧਾਰਨੀ ਆਦਿ ਚੋ ਖੜਾ ਹੈ ਸੰਕਟਾਲਾ ਪਰਬ ਸੰਕਟਾਲਾ ਇਹਾਰੇ ਪਰਬ ਸੰਕਟਾਲਾ ਹੀ ਰਹੇ ਜਿਹਨਾਂ ਨੂੰ ਕੁਝ ਹੋਰੇ ਲੱਗਦੀ ਹੈ ਸਿੱਖੀ ਕੀ ਕਰਦੇ ਨੇ ਪਰ ਤਾਰੂ ਪਰਮ ਦੀ ਫਸੇ ਜੇ ਤੇ ਪਰਮ ਉਹਦੇ ਤਰੂ ਸੰਕਟ ਵੀ ਹੈ ਤਰੂ ਸੰਕਟ ਬਣ ਜਾਂਦਾ ਅੱਜ ਸਿੱਖਾਂ ਦਾ ਧਰਮ ਸੰਕਟ ਬਣਿਆ ਹੋਇਆ ਝਗੜਾ ਝਗੜਾ ਸੱਕੜਿਆ ਹੁੰਦਾ ਸੱਕੜ ਕੀ ਹੁੰਦਾ ਝਗੜਾ ਕਲੇਸ਼ ਉਹ ਕਲੇਸ਼ ਜਿਹੜਾ ਪਿਆ ਹੋਇਆ ਹੈ ਕਰਕੇ ਪਿਆ ਆਇਆ ਗਿਆਨ ਨਹੀਂ ਹੈਗਾ ਤਰਪਦਾ ਨਹੀਂ ਪਤਾ ਕੀ ਹੈ ਸਿੱਖੀ ਦਾ ਗਿਆਨ ਨਹੀਂ ਹੈ ਜਦੋਂ ਸਿੱਖੀ ਦਾ ਗਿਆਨ ਹੋ ਗਿਆ ਸੰਕਟ ਦੂਰ ਹੋ ਜਾਂਦਾ ਜਿਹੜੇ ਸੰਕਟ ਖੜਾ ਕਰਦੇ ਨੇ ਅਨ ਅਸੈਸਰੀ ਸਭ ਨੂੰ ਪਤਾ ਲੱਗ ਜੂਏ ਇਹ ਤਾਂ ਸਿੱਖੇ ਨਹੀਂ ਹਨ ਹੁਣ ਪਤਾ ਹੀ ਨਹੀਂ ਸੱਚਾ ਕੌਣ ਹੈ ਝੂਠਾ ਕੌਣ ਹੈ ਆ ਪਬਲਿਕ ਨੂੰ ਸਾਰੇ ਕਹਿੰਦੇ ਨੇ ਉਹ ਕਹਿੰਦਾ ਮੈਂ ਸੱਚਾ ਕਹਿੰਦਾ ਮੈਂ ਸੱਚਾ ਕਹਿੰਦਾ ਮੈਂ ਸੱਚਾ ਕਹਿੰਦਾ ਮੈਂ ਸੱਚਾ ਆਪਾਂ ਵਿਰੋਧੀ ਨੇ ਸਾਰੇ ਹੁਣ ਸਾਰੇ ਸੱਚੇ ਕਿਵੇਂ ਹੋਗੇ ਸਾਰੇ ਸੱਚੇ ਕਿਵੇਂ ਹੋਗੇ ਉਹ ਤਾਂ ਇੱਕ ਦੂਏ ਦੇ ਵਿਰੁੱਧ ਖੜੇ ਨੇ ਸਾਰੇ ਸਿਕਬੇ ਹੋ ਗਏ ਹੁਣ ਸਿੱਖ ਸਿੱਖੇ ਦਾ ਪਤਾ ਲੱਗੇ ਤਾਂ ਫੈਸਲਾ ਹੋਊ ਵੀ ਸਿੱਖ ਕਿਹੜਾ ਕਿੰਨਾ ਗਲਤ ਹੈ ਕਿਹੜਾ ਕਿੰਨਾ ਠੀਕ ਹੈ ਕਿਹੜਾ ਬਿਲਕੁਲ ਗਲਤ ਹੈ ਜਿਹੜਾ ਜ਼ਿਆਦਾ ਗਲਤ ਹੈ ਕੌਣ ਹੈ ਘੱਟ ਗਲਤ ਕੌਣ ਘੱਟ ਗਲਤ ਵਾਲੇ ਦੀ ਇੱਜ਼ਤ ਹੋਊ ਜ਼ਿਆਦਾ ਗਲਤ ਵਾਲੇ ਦੀ ਇੱਜ਼ਤ ਨਹੀਂ ਹੋਊ ਹੁਣ ਜ਼ਿਆਦਾ ਜਿਹੜਾ ਜ਼ਿਆਦਾ ਦੂਰ ਹੈ ਧਰਮ ਤੋਂ ਉਹ ਚੌਧਰੀ ਬਣ ਬੈਠਾ ਫੇ ਲਾਈਨ ਚ ਆ ਜਾਣਗੇ ਜਿੰਨਾ ਕੋਈ ਨੇੜੇ ਹੋ ਸਿੱਖੀ ਦੇ ਉਨੀ ਹੁੰਦੀ ਉਹਨਾਂ ਉਹ ਮੂਰੇ ਆ ਜਾਊਗਾ ਲਾਈਨ ਚ ਆ ਜਾਊਗਾ ਜੇ ਲਾਈਨ ਟੁੱਟ ਜਾਂਦੀ ਏ ਝਗੜਾ ਹੋਣਾ ਹੀ ਹੈ ਜੇ ਘਟਕਲ ਵਾਲੇ ਨੂੰ ਜੂਨੀਅਰ ਨੂੰ ਸੀਨੀਅਰ ਬਣਾ ਦਿੰਦੇ ਨੇ ਬੈਕਮੈਲ ਦੇ ਵਿੱਚ ਉਹ ਕਹਿੰਦਾ ਵੇ ਤੋ ਚਾਰ ਦਰਜੇ ਥਲੇ ਸੀ ਚਾਕੇ ਮੇਰਾ ਅਫਸਰ ਬਣਾਤਾ ਬੇਕੁਲਤਾ ਫਾਇਦਾ ਨਹੀਂ ਹੁੰਦੀ ਉੱਥੇ ਉਹਨਾਂ ਦੇ ਬੇਕੁਲਤਾ ਫਾਇਦਾ ਨਹੀਂ ਹੁੰਦੀ ਉਹਨਾਂ ਦੇ ਪਈ ਜਿਹੜਾ ਕਾਬਲ ਆਦਮੀ ਹੈ ਉਹ ਨੂੰ ਅੱਗੇ ਤੋ ਪਿੱਛੇ ਕਰ ਦਵੇ ਕੋਈ ਉਹਦੇ ਅੰਦਰ ਵੀ ਬਿਆਕਲਤਾ ਉਹ ਜਿਹੜਾ ਥੱਲੇ ਉੱਤੇ ਲਾਤਾ ਉਹਨੇ ਬਰਬਦੀ ਕਰ ਲਈ ਕੱਲ ਮੇਰਾ ਬਾਸ ਦੀ ਐ ਕਰ ਲੈਂਦਾ ਮੈਂ ਹੁਣ ਇਹਨੂੰ ਤੰਕਰ ਉਹਨੇ ਤਾਂ ਵਿਸ਼ੂ ਕਰਨਾ ਥੱਲੇ ਵਾਲੇ ਨੇ ਉੱਪਰ ਜਾ ਕੇ ਇਹ ਜਿਆਦਾ ਰੌਲਾ ਜਿਹੜਾ ਸਾਡਾ ਉੱਤੇ ਹੈ ਨਾ ਇਹ ਜਿਹੜਾ ਇਹਨਾਂ ਨੇ ਉਥਲ ਪੁਥਲ ਕਰਤੀ ਨਾ ਰਿਆਥਾਂ ਦੇਣ ਦੀ ਇਹ ਵੀ ਕਾਰਨ ਹੈ ਇੱਕ ਪੱਟਕ ਲਾਣੇ ਨੂੰ ਰੇ ਦੇ ਕੇ ਅਗਨਾਂ ਦੇ ਉੱਤੇ ਥੋਪ ਦੇ ਲੋ ਇਹ ਗੈਰ ਕੁਦਰਤੀ ਗੱਲ ਹੈ ਜਿੱਥੇ ਗੈਰ ਕੁਦਰਤੀ ਗੱਲ ਹੋਊਗੀ ਉੱਥੇ ਉਥਲ ਪੁਥਲ ਹੋਊਗੀ ਉੱਥੇ ਸ਼ਾਂਤੀ ਰਹੂਗੀ ਗੈਰ ਕੁਦਰਤੀ ਗੱਲ ਗੈਰ ਕੁਦਰਤੀ ਤਰੀਕੇ ਨਾਲ ਤਰਕੀ ਨਹੀਂ ਹੋ ਸਕਦੀ ਕਦੇ ਵੀ ਕਿਤੇ ਉਹਦੇ ਤੋਂ ਤੁਸੀਂ ਉਹਨਾਂ ਨੂੰ ਪੈਸੇ ਦੇ ਕੇ ਬਰਾਬਰ ਕਰ ਦਿਓ ਜ਼ਮੀਨਾਂ ਦੇ ਕੇ ਬਰਾਬਰ ਕਰ ਦਿਓ ਪਰ ਬੇਅਕਲਾਂ ਨੂੰ ਅਕਲ ਆਣ ਤੇ ਦੀ ਥੋਪੀ ਦਉਂਦਾ ਫੇਰ ਹੀ ਚੱਲਦਾ ਹੁੰਦਾ ਕੰਮ ਉਦੋਂ ਸ਼ਾਂਤੀ ਪੈਦਾ ਹੋ ਜਾਂਦੀ ਹੈ ਸ਼ਾਂਤੀ ਦਾ ਕਾਰਨ ਇਹ ਬੇਅਕਲਾਂ ਨੂੰ ਰਿਸ਼ਵਤ ਨਾਲ ਸਵਾਰੀ ਹਰ ਲੋਕ ਤੇ ਲੈ ਜਾਂਦਾ ਅਕਲ ਵਾਲਿਆਂ ਨੇ ਅਤਵਾਦ ਸ਼ੁਰੂ ਕਰ ਲਿਆ ਉਹ ਇਟਾਲੀ ਬਹੁਤ ਉਹਨਾਂ ਚ ਬੰਦੇ ਉਹਨਾਂ ਨੂੰ ਉਹਨਾਂ ਦੀ ਹੱਕ ਦੀ ਸੀਟ ਨਹੀਂ ਮਿਲੀ ਤਾਂ ਉਧਰ ਚਲੇ ਗਏ ਦੱਸੇ ਕੋਲ ਲੈਣਾ ਨੂੰ ਉਹ ਇੱਕ ਸਰਕਾਰ ਨਾਲ ਲੜ ਬਜਾਖ ਦੀ ਗੱਲ ਐ ਸਪਲਾਈ ਲਾਈਨ ਕੋਈ ਰੀਟੇਲਿੰਗ ਸੈਕਟਰ ਹੁੰਦਾ ਕੋਈ ਨਹੀਂ ਸਰਕਾਰ ਦੇ ਭੋਜਨ ਨਹੀਂ ਭਲਾ ਦੇਣੀ ਇਟਾਲੀਅਨ ਨਹੀਂ ਹਲੋ ਹੋਰ ਆਦੀ ਨੇ ਪਰਖਿਆ ਨਹੀਂ ਉਹਨਾਂ ਦੀ ਅਕਲ ਦੀ ਦਾਤ ਦਿੱਤੀ ਨਹੀਂ ਵਦੂਖ ਦੇ ਜੋਰ ਨਾਲ ਪਾਵਰ ਦੇ ਜੋਰ ਨਾਲ ਪਾਵਰ ਕੋਲ ਉਹ ਦਵਾਰ ਹੈ ਇਹ ਤਰੀਕਾ ਹੀ ਹੈਗਾ। ਛਾਣੇ ਬੰਦੇ ਹੋਰ ਵੀ ਕਹਿੰਦੇ ਨੇ ਵੀਰ ਨਾਲ ਬੈਠ ਕੇ ਗੱਲ ਕਰੋ। ਜੜ ਲੱਭੋ ਕਹਿ ਰਹੇ ਨੇ ਲੋਕ, ਜੜ ਲੱਭੋ। ਠੀਕ ਕਹਿ ਰਹੇ ਸਿਓ। ਛਾਣੇ ਨੇ। ਪਰ ਜਿਹਦੇ ਕੋ ਪਾਵਰ ਹੈ ਛੱਡਣੀ ਨਹੀਂ ਚਾਹੁੰਦਾ। ਉਹ ਕਹਿੰਦਾ ਡਾਂਗ ਦੇ ਜੋਰ ਨਾਲ ਗੱਲ ਲਈ ਠੀਕ। ਬੇਅਕਲ ਕੋ ਪਾਵਰ ਹੈ। ਉਹਨੂੰ ਪਤਾ ਮੈਰੀ ਪਾਵਰ ਚੱਲੀ ਜਾਣੀ। ਸਵਾਰਥ ਹੈ ਉਹਦੇ ਕੋਲ ਸਵਾਰਥ। ਸਵਾਰਥੀ ਆਦਮੀ ਹੁੰਦੇ ਜਦੋਂ ਸਵਾਰਥ ਹੋਊ ਉੱਥੇ ਉੱਥੇ ਉਥਲ ਪੁਥਲ ਰਹੂਗੀ। ਸੰਸਾਰ ਉਤਲ ਪੁਤਲ ਦਾ ਕਾਰਨ ਹੈ ਸਵਾਰਥ ਜੇ ਪਰ ਇਸ ਗੁਰਬਾਣੀ ਕੀ ਹੈ ਗੁਰਮਤਾ ਪਰਮਾਰਥ ਜਿੱਦਾਂ ਪਰਮਾਰਥ ਦਾ ਰਾਜ ਆ ਗਿਆ ਉਦੋਂ RAM ਰਾਜ ਹੋਊਗਾ ਐਦਾਂ ਨਹੀਂ ਉਦਾਂ RAM ਰਾਜ ਵੀ ਬਾਦਲ ਕਹਿੰਦਾ ਮੇਰਾ ਰਾਜ ਤਾਂ RAM ਰਾਜ ਹੈ ਕਰਨਾਂ ਤੇ ਸੇਵਾ ਹੋਊਗੀ ਰਾਜ ਨਹੀਂ ਹੁਣ ਕਰਕੇ ਦਿਖਾ ਕਰਕੇ ਦਿਖਾ ਫਿਰ ਸਵਾਰਥ ਦੀ ਜਿਹੜਾ ਕਦ ਕਹੇ ਕਰਕੇ ਦਿਖਾਵੇਂਗਾ ਇਹ ਗੱਲਾਂ ਨੇ ਸਿਰਫ ਇਹਾਂ ਦੀ ਹੁੰਦੀਆਂ ਇਹ ਗੱਲਾਂ ਨੇ ਇਹਾਂ ਦੀ ਹੁੰਦੀਆਂ ਕੋਈ ਆਪਣਾ ਰਾਜ ਕਰਨਾ ਹਾਂ ਆਪਣੇ ਰਾਜ ਨੂੰ ਬਾੜਾ ਦਾ ਕੋਈ ਕਹਿੰਦਾ ਨਹੀਂ ਹੁੰਦਾ ਆਪਣਾ ਮੈਂ ਬਾੜਾ ਦਾ ਕੋਈ ਕਹਿੰਦਾ ਨਹੀਂ ਹੁੰਦਾ ਜੇ ਸਾਰਿਆਂ ਨੂੰ ਬਾੜਾ ਬਣ ਉਹ ਇਹ ਆਦਮੀ ਦੀ ਨੇਚਰ ਹੈ ਲੋਕ ਤਾਂ ਗੱਲੀਆਂ ਸੀ ਚੰਗੀਆਂ ਆਚਾਰੀ ਬੁਰੀਆਂ ਚੰਗੀਆਂ ਆਚਾਰੀ ਬੁਰੀਆਂ ਇਹ ਤਾਂ ਇਹ ਤਾਂ ਸੰਸਾਰ ਦੇ ਘਾਰ ਹੈ ਪਰ ਜੇ ਸੰਸਾਰ ਚਾਹੁੰਦਾ ਇਹ ਇਮਾਨਦਾਰ ਨੇ ਫਿਰ ਤਰਸਦਾ ਇਹੀ ਹੈ ਜਿਹਦਾ ਜਿੱਤੇ ਹੱਕ ਵੰਦਿਆ ਉਹਨੂੰ ਦੇ ਦਿਓ ਪਰ ਦਵੇ ਕੌਣ ਆਪਣੇ ਮੁੰਡਿਆਂ ਨੂੰ ਪਿੱਛੇ ਕੌਣ ਕਰੇ ਆਪਣੇ ਰਿਸ਼ਤੇਦਾਰ ਨੂੰ ਪਿੱਛੇ ਕੌਣ ਕਰੇ ਵੇਗਲਾ ਨੂੰ ਉੱਤੇ ਰੱਖਿਆ ਕੁਰਸੀਆਂ ਦੇ ਪਿੱਛੇ ਕੌਣ ਘਟਾਵੇ ਮੇਰੇ ਆਦਮੀ ਦੇ ਬੇਰੀ ਫੇਵਰ ਜਨਮਾਂ ਨੂੰ ਕਿਸੇ ਨਾ ਕਿਸੇ ਤੇ ਕਿ ਨਾ ਉਹ ਉੱਤੇ ਰੱਖਣਾ ਬੈਲਿਫੈਟੀ ਰੱਖਣਾ ਪਾਵਰ ਚ ਰੱਖਣਾ ਉਹ ਮੇਰੇ ਆਦਮੀ ਤੇ ਇਹ ਤਾਂ ਤ੍ਰਿੰਕਾਰ ਨਹੀਂ ਹੈ ਕੋਈ ਸ਼ਾਂਤੀ ਦਾ ਤਰੱਕੀ ਦਾ ਤਰੀਕਾ ਥੋੜੀ ਹੈ ਇਹ ਵਿਨਾਸ਼ ਦਾ ਤਰੀਕਾ ਹੌਲੀ ਹੌਲੀ ਹੋ ਜਾਂਦਾ ਤੇ ਵਿਨਾਸ਼ ਦਾ ਤਰੀਕਾ ਹੈ ਇਹ ਪੜਾਈ ਜਿਹੜੀ ਇਹਨਾਂ ਨੇ ਪੜਾਈ ਪੜੀ ਇਹਨਾਂ ਕੁੱਟਲਤਾ ਦੀ ਕੁੱਟਲ ਦਿੱਤੀ ਇਹ ਤਾਂ ਕੁਰਬਾਨੀ ਦਿਆ ਕਰ ਦਿਆ ਕੋਟਲ ਗਾਠ ਜਦ ਖੁੱਲੇ ਦੇਵ ਜਦ ਗੱਠ ਖੁੱਲ ਗਈ ਨਾ ਮਹੌਦਲੇ ਦੇਵ ਹੈ ਦੇਵਤਾ ਹੀ ਆਪੇ ਕੋਟਲ ਗਾਠ ਜਦ ਖੁੱਲੇ ਦੇਵ ਮਫਿਰਤੇ ਦੇਵਤਾ ਇਹ ਕੋਟਲ ਦਾ ਦੀ ਗਾਠ ਹੈ ਜਿਹੜੀ ਅੰਦਰ ਹੈ ਨਾ ਗੱਠ ਇਹ ਇਹਨੂੰ ਬੁੱਧੀ ਹੀਰ ਬਣਾਈ ਬੈਠੀ ਹੈ ਬੁੱਧੀ ਜਿਹੜਾ ਹੁੰਦਾ ਮੁਸੀਬਤਾਂ ਪੈਦਾ ਕਰਦਾ ਹੁੰਦੇ ਜਿਹੜੀ ਬੁੱਧੀ ਜਾਂ ਕਬੁੱਧ ਬਣ ਜਾਂਦੀ ਹੈ ਨਾ ਫਿਰ ਉਹ ਮੁਸੀਬਤਾਂ ਖੜੀਆਂ ਕਰਦੀ ਹੈ ਆਪਣੇ ਵਾਸਤੇ ਵੀ ਆਪਣੇ ਪਰਿਵਾਰ ਵਾਸਤੇ ਵੀ ਆਪਣੇ ਭੱਲੇ ਵਾਸਤੇ ਵੀ ਆਪਣੇ ਪਿੰਡ ਵਾਸਤੇ ਵੀ ਆਪਣੇ ਦੇਸ਼ ਵਾਸਤੇ ਵੀ ਸਾਰੀ ਦੁਨੀਆ ਵਾਸਤੇ ਵੀ ਅਸੀਂ ਦੁਨੀਆ ਨਾਲ ਜੁੜ ਜਾਂਦੇ ਹੌਲੀ ਹੌਲੀ ਜਾ ਕੇ ਹੌਲੀ ਹੌਲੀ ਜਾ ਕੇ ਆਦਮੀ ਸਾਰੀ ਦੁਨੀਆ ਨੂੰ ਛੱਡ ਜਾਂਦਾ ਅਸੀਂ ਹੌਲੀ ਹੌਲੀ ਜੁੜਦੇ ਗੁਰਬਾਣੀ ਦੇ ਇੱਕ ਦਾ ਬਿਜੋੜਦਾ ਇਹ ਹੌਲੀ ਹੌਲੀ ਜੁੜਦਾ ਆਪਣੇ ਪ੍ਰਾਇ ਦੇ ਨਾਲ ਤੇ ਰੇੜ ਗੁਰਬਾਣੀ ਕੋ ਦਾ ਬਿਜੋੜ ਦਿੰਦੀ ਉਹ ਕਹਿੰਦਾ ਸਾਰੇ ਹੀ ਤੇਰੇ ਨੇ ਤੂੰ ਸਾਰਿਆਂ ਦਾ ਤਰੋੜਾ ਉਹ ਇਹ ਵਿਚਾਰ ਲਿਆ ਜਿਹੜੀਆਂ ਸਟੈਪ ਨੇ ਨਾ ਕਰ ਅੱਜ ਮੇਰੀ ਤਹਿਸੀਲ ਦਾ ਅੱਜ ਜੀ ਮੇਰੇ ਬਾਲੇ ਦਾ ਜੀ ਮੇਰੀ ਵਾਰਡ ਦਾ ਅੱਜ ਸਾਡਾ ਆਪਣਾ ਘਰ ਦਾ ਜੀ ਰਿਸ਼ਤੇਦਾਰ ਹੈ ਅਜੇ ਸਗਾ ਭਾਈ ਆ ਜੀ ਚਾਚੇ ਦਾ ਬੁੱਢਾ ਇਹ ਚ ਫਰਕ ਹੈ ਇਹ ਤਾਂ ਝਗੜੇ ਪਾਉਣ ਵਾਲੀ ਗੱਲ ਹੈ ਨਾ ਇਹ ਬੌੜੀਆਂ ਨਹੀਂ ਹਨ ਇਹਦੇ ਵਿੱਚ ਗੁਰਬਾਣੀ ਚ ਨਹੀਂ ਬੌੜੀਆਂ ਇਹ ਆਦਮੀ ਦੀਆਂ ਬਣੀਆਂ ਜੁੱਤੀਆਂ ਨੇ ਇਹ ਕੁਟਲਤਾ ਦੀਆਂ ਬੌੜੀਆਂ ਬਣਾਈ ਜਾਂਦੀਆਂ ਨੇ ਕੁਟਲ ਲੀਤੀਆਂ ਬੌੜੀਆਂ ਆਪਣੇ ਪ੍ਰਾਇਆ ਦੀ ਇਹ ਤਾਂ ਗੁਰਬਾਣੀ ਖਿਲਾਫ ਹੈ ਇਸੇ ਦਾ ਖਿਲਾਫ ਬਸ ਫਿਰ ਜਦ ਸਾਰੇ ਇੱਕ ਨੇ ਆਪਣਾ ਪ੍ਰਾਇਆ ਕੋਈ ਹੈ ਨਹੀਂ ਫੇਰ ਅਪੇ ਕਾਬਲ ਨੂੰ ਉਹਨੇ ਲਿਆ ਉਹ ਵੀ ਮੇਰਾ ਉਹ ਵੀ ਮੇਰਾ ਉਹ ਵੀ ਮੇਰਾ ਉਹ ਵੀ ਮੇਰਾ ਕਾਬਲ ਜਿਹੜਾ ਹੋ ਗਿਆ ਉਹ ਬੇ ਕਾਫਲੀਅਤ ਦਾ ਕੰਮ ਕਰੋ ਫੇਰੇ ਬਦਲ ਸਕਦਾ ਸਭ ਕੁਝ ਬਦਲ ਨਹੀਂ ਬਦਲ ਸਕਦਾ ਕੁਰਬਾਨੀ ਜੇ ਲਾਗੂ ਹੋ ਜਵੇ ਕੋਰਮਤ ਇੱਥੇ ਇੱਥੇ ਸੱਚਾਣ ਬਣ ਜਵੇ ਜੇ ਸੱਚਾਣ ਕੀਆ ਗੁਰਮਤੇ ਲਾਗੂ ਹੈ ਹੋਰ ਉੱਥੇ ਕੀ ਹੈ ਇਹ ਸੰਧਾਨ ਲਾਗੂ ਹੋ ਤੇ ਐ ਤੇ ਲਾ ਗੂ ਹੈ ਨਹੀਂ ਇੱਥੇ ਹੀ ਸੁਰਗ ਵੱਲ ਜਵੇ ਐਵੇਂ ਬੜੂਆ ਵਰਨ ਕੋਈ ਤਰੀਕਾ ਨਹੀਂ ਸੁਰਗ ਵੱਲ ਕੁਡਲਾਂ ਛੱਡ ਲਈ ਪਊਗੀ ਉਹ ਕੁਡਲ ਨੇ ਪੜ੍ਹ ਕੇ ਕਹਿੰਦੇ ਅਸੀਂ ਜੀ ਕਿਤਾਬਾਂ ਪੜ੍ਹ ਲਈ ਉਹ ਤੁਸੀਂ ਵਿਗੜ ਗਏ ਕਿ ਪੜ੍ਹ ਲਈਆਂ ਛੜੀਆਂ ਮਾਰ ਨਹੀਂ ਬੜੀਆਂ ਤੁਸੀਂ ਧੋਖੇ ਦੇਣੇ ਪੜ੍ਹ ਲੈ ਕਿ ਪੜ੍ਹਾਈਆ ਫੜਕੜੀ ਵਾਗੇ ਦੁੱਧ ਵਗਾੜਦਾ ਇਹ ਸੁਗਬਿਆ ਨਹੀਂ ਦੁੱਧ ਵਗਾੜਦਾ ਕਹਿੰਦੇ ਜੀ ਅਸੀਂ ਬਹੁਤ ਉਸਤਾਦ ਹੋ ਗਏ ਤੂੰ ਤਾਂ ਵਗਾੜਦਾ ਸਭ ਕੁਝ ਐ ਇਹ ਰਹਿਤਾ ਦੇ ਦੋ ਇਹੋ ਦੇ ਦੋ ਉਹਨਾਂ ਨੂੰ ਫਲਾਣਾ ਦੇ ਦੋ ਕੀ ਝਗੜਿਆਂ ਦੇ ਵਿੱਚ ਇਹਨੂੰ ਜ ਰੱਖਿਆ ਕੀ ਧੜੇ ਬਣ ਗਈਆਂ ਤੇ ਜਿਹੜੇ ਦੇਸ਼ ਦੇ ਵਿੱਚ ਧੜੇ ਹੋਵੇ ਉਹਨੂੰ ਦੁਸ਼ਮਣ ਦੀ ਕੀ ਲੋੜ ਐ ਬਾਹਰ ਦੀ ਇਹਨਾਂ ਘਰ ਦੇ ਧਲੇ ਬੰਦੀ ਹੋਵੇ ਉਹਨੂੰ ਬਾਹਲੇ ਦੁਸ਼ਮਣ ਦੀ ਕੀ ਲੋੜ ਹੁੰਦੀ ਹੈ ਜਿਹੜੇ ਦੇਸ਼ ਵਿੱਚ ਰਾਲਾ ਏਕਤਾ ਦਾ ਬੰਦਨਾ ਏਕਤਾ ਹੈ ਕਿੱਥੇ ਸੱਚ ਤਾਂ ਇਹ ਹੀ ਹੈ ਝੂਠ ਜਿਹਾ ਜਿਉਂ ਮਰਜੀ ਕਹੀ ਜਾਏ ਬਾਹਰ ਦਿਖਾਉਣ ਵਾਸਤੇ ਜੋ ਮਰਜੀ ਝੂਠ ਬੋਲੀ ਜਾਈਏ ਸਾਰਿਆਂ ਨੂੰ ਪਤਾ ਆਪਾਂ ਨੂੰ ਵੀ ਪਤਾ ਸਾਨੂੰ ਵੀ ਪਤਾ ਫਿਰ ਇਹ ਵੀ ਕਹੀ ਜਾਂਦੇ ਬੈਡ ਐਂਸਰ ਦੇ ਬੈਡ ਐਂਸਰ ਕਿੱਥੋਂ ਪੈਦਾ ਹੋ ਗਏ ਇਹ ਕਿ ਦਵਾ ਗਏ ਬੈਡ ਅਨਸਰ ਹੈਗੇ ਨੇ ਕਿਉਂ ਆ ਗਏ ਉਹ ਦੇਖਦੇ ਆ ਕਿੱਥੇ ਆ ਗਏ ਉਹ ਸਾਡੇ ਪੈਦਾ ਕੀਤੇ ਹਨ ਇਹ ਨਹੀਂ ਪਤਾ ਵੀ ਅਸੀਂ ਵੀ ਬੈਡ ਅਨਸਰ ਹਾਂ ਬੈਡ ਅਨਸਰ ਦਾ ਜਿਹੜੇ ਬੈਠੇ ਹਕੂਮਤ ਵਾਲੇ ਨੇ ਉਹ ਵੀ ਹੈਗੇ ਨੇ ਉਹਨਾਂ 'ਚ ਵੀ ਹੈਗਾ ਅਸਲ ਤਾਂ ਉਹੀ ਬੈਡ ਅਨਸਰ ਨੇ ਪਹਿਲਾਂ ਉਹ ਤੋਂ ਥੱਲੇ ਆ ਜਾਂਦੇ ਜਿਸਾ ਰਾਜਾ ਤਸਾ ਪਰ ਸਾਰੇ ਬੈਡ ਅਨਸਰ ਨੇ ਬੋਤੇ ਕੋਈ ਬੱਲਾ ਬੱਲਾ ਹੀ ਐ ਸੱਚਾ ਸੋਚਾ ਬੱਕੀ ਸਭ ਵੈਲ ਬੈਂਸਰ ਨੇ ਭਰਿਆ ਹੋਇਆ ਕਿ ਜੇ ਜ਼ਿਆਦਾ ਕੁਝ ਜਿ ਘਟਾ ਹੈ ਹੋਰ ਇੱਕੋ ਜਿਹਾ ਹੀ ਸਾਰਿਆਂ 'ਚ ਇੱਕੋ ਪਾਣੀ ਪੀਂਦੇ ਨੇ ਕੋਈ ਹਵਾ ਇੱਕੋ ਬਹੌਲ ਹੈ ਇੱਕੋ ਜਿਹਾ ਲੋਗ ਹੈ ਸਾਰਿਆਂ 'ਚ ਇੱਕੋ ਜਿਹੀ ਹੰਕਾਰ ਹੈ ਇੱਕੋ ਜਿਹੀ ਭਰਮ ਹੈ ਇੱਕੋ ਜਿਹੀ ਬੋਹ ਹੈ ਸਾਰਿਆਂ 'ਚ ਤੇ ਇਹ ਚਾਰੇ ਪੰਜੇ ਚੀਜ਼ਾਂ ਵੈਲ ਬੈਂਸਰ ਨੇ ਆਪ ਗਰੋ ਰੋਬੋ ਕਾਰੇ ਦਾ ਬੈਡਰ ਦਾ ਸਾਰਾ ਜਿਹੜਾ ਇਹਦੇ ਨਾਲ ਲਿਆ ਹੋਇਆ ਸਾਰਾ ਬੈਡਰ ਸਿਰ ਬਗਾ ਲਿਆ ਹੋਇਆ ਇਹ ਬੈਡਰ ਸਰ ਬਣਾਉਂਦੀ ਦਵਾਈ ਹੈ ਇਹ ਬੈਡਰ ਸਰ ਬਣਾਉਂਦੀ ਉਹ ਪਹਿਲਾਂ ਕਰਦੀ ਉਹ ਇਹ ਅਸੀਂ ਛੱਡਦੇ ਨਹੀਂ ਸਾਰਾ ਵਿਗੜਿਆ ਹੋਇਆ ਹੀ ਹੈ ਸਾਰਾ ਕੋੜ ਬੋਤ ਤਾਂ ਹੀ ਸੱਚ ਕੰਡਣ ਵਾਲੇ ਨੇ ਇੱਥੇ ਕੰਡਦੇ ਵੀ ਤੁਸੀਂ ਉੱਥੇ ਰਹੋ ਜੀ ਪਰ ਆਪਣੇ ਫੈਸਲੇ ਕਰਦੇ ਰਹੋ ਆਪੇ ਉਹ ਟਪਾਟਾ ਪਾਰ ਹੋ ਜਾ ਲੜਾਈ ਕਰਕੇ ਕਰ ਲੋ ਜੇ ਮਰਜ਼ੀ ਕਰ ਲੋ ਸਿਆਣਾ ਫਨਾ ਕਰ ਲੋ ਜਾਂ ਬੁਰਾ ਤਨ ਕਰ ਲੋ ਫੇਜ਼ਲੇ ਸਿਆਣਾ ਫਨਾ ਵੀ ਹੋ ਜਾਂਦੇ ਨੇ ਬੁਰਾ ਤਨ ਵੀ ਹੋ ਜਾਂਦੇ ਨੇ ਅਰੇ ਜਿਆ ਟੁੱਟ ਗਿਆ ਇੱਕ ਵੀ ਆਦਮੀ ਨਹੀਂ ਮਰਿਆ ਬੰਗਲਾਦੇਸ਼ ਛੱਡ ਹੋਇਆ ਲੱਖਾਂ ਆਦਮੀ ਮਰ ਗਏ ਅਟਾ ਫੇਰ ਵੀ ਹੋਏਗਾ ਨਾ ਐਨੇ ਆਦਮੀ ਮਾਰੇ ਕਿਉ ਮਾਰੇ ਇੰਦੋਸਤਾਨ ਡਿਵਾਈਡ ਹੋਇਆ ਲੱਖਾਂ ਆਦਮੀ ਮਾਰੇ ਉਹ ਸਿਆਣਾ ਸੀ ਅੱਡ ਹੋ ਕੇ ਇੱਕ ਵੀ ਬੰਦਾ ਨਹੀਂ ਮਰਿਆ ਅਟਾ ਹੋਊਗਾ ਨਾ ਅਗਲਾ ਵਾਲੇ ਕਾਹਨ ਹੋਏ ਫਿਰ ਜਿਹੜੇ ਨਸ਼ਾਨ ਕਰਕੇ ਅੱਗਾਂ ਲਾ ਕੇ ਫੂਕ ਕੇ ਬੰਦੇ ਮਾਰ ਗਏ ਹੋਏ ਉਹ ਚੰਗੇ ਹੋਏ ਹੁਣ ਕਾਹਨ ਨੂੰ ਦੁਸ਼ਮਣਾਂ ਵਾਲੇ ਬੈਠੇ ਨੇ ਉਹ ਚੰਗੇ ਹੋਏ ਕਿ ਜਿਹੜੇ ਕਹਿੰਦੇ ਹੱਸਦੇ ਸੱਜਣ ਛੋੜੀਏ ਫੇਰ ਉਹ ਲੜਕੀ ਆਸ ਸਿਆਣੇ ਹੋਣੇ ਕਿ ਹੱਸਦੇ ਸੱਜਣ ਛੋੜੀਏ ਸੱਜਣਾ ਨੂੰ ਹੱਸਦੇ ਨੂੰ ਛੱਡਦੀਏ ਵੀ ਹੁਣ ਭਾਈ ਆਪਣੀ ਰੇਵਣੀ ਨਹੀਂ ਹੋਣਾ ਪਾਸਾ ਡੋਜੀਏ ਇਤੋਂ ਜ਼ਿਆਦਾ ਨਾ ਖਰਾਬਾ ਹੋ ਜਾਏਗਾ ਤਾਂ ਦੁਬਾਰਾ ਮਿਲਣ ਦੀ ਆਸ ਵੀ ਹੁੰਦੀ ਹੈ ਯਾਦ ਰੱਖਦੀ ਹੈ ਐਸੀ ਸਿਆਣਪ ਇਹਨਾਂ ਨੂੰ ਕੋਣ ਸਮਝਾਵੇ ਇਹ ਤਾਂ ਆਪੇ ਬਹੁਤ بڑے ਹਨ ਸੰਕਟ ਹੀ ਨਵਾਰ ਨਹੀਂ ਉਦਮ ਉਧਾਰ ਨਹੀਂ ਇਹ ਸੰਕਟ ਨਾ ਦੀ ਗੱਲ ਚੱਲਦੀ ਸੀ ਹੁਣ ਸੰਕਟ ਸਾਰੇ ਹੀ ਰਹਿ ਸੰਕਟ ਲਾਏ ਤੁਰਤੇ ਤੁਰਤੇ ਆਪਾਂ ਡਿਸਕਸ ਕਰ ਲਿਆ ਘਰਾਂ 'ਚ ਵੀ ਸੰਕਟ ਨਾ ਕਾਰ ਵਾਲੀ ਦਾ ਕਾਰ ਵਾਲੇ ਦਾ ਸੰਤੜ ਖੜਾ ਹੋ ਗਿਆ ਇੰਨਾ ਸਿਆਣਾ ਹੈ ਇਹ ਦੀ ਨਹੀਂ ਬਣਦੀ ਬਸ ਇਹ ਹੱਦ ਹੈ ਕਲੇਵਰਟੀ ਇਹਦੀ ਇਹ ਦੋ ਕਾਮ ਹਉਤੇ ਹੋਰ ਕੁਝ ਨਹੀਂ ਜਦੋਂ ਆਦਮੀ ਔਰਤ ਦੀ ਖੜਪੜ ਹੋ ਜਾਏ ਦੋਗੇ ਬਹੁਤ ਹੈ ਹੋਰ ਕੁਝ ਨਹੀਂ ਹੁੰਦਾ ਇਹ ਦੋਕਰ ਸਮਾਪਤੀ ਹੈ ਇਹ ਦੋ ਚੀਜ਼ਾਂ ਐਸੀਆਂ ਨੇ ਜੀਣਾ ਦਾ ਬਾਰ-ਬਾਰ ਗੱਲ ਗੁਰਬਤ ਵਿੱਚ ਜ਼ਿਕਰ ਹੈ ਇਹ ਰਿਸ਼ਤਾ ਗੁਰਮਖਦਾ ਪਰਮੇਸ਼ਰ ਨਾਲ ਹੈ ਇਹ ਗੁਰਮਖਦਾ ਪਰਮੇਸ਼ਰ ਨਾਲ ਰਿਸ਼ਤਾ ਹੈ ਖਾਦਮ ਛੋੜ ਦੂਜੇ ਲੱਗੇ ਡੁੱਬੇ ਸੇ ਪੰਜਾਰਿਆ ਖਾਦਮ ਨੂੰ ਕਿਹਾ ਹੈ ਜੇ ਖਾਦਮ ਵਾਲਾ ਰਿਸ਼ਤੇ ਵਿੱਚ ਖਟਾਸ ਪੈਦਾ ਹੋ ਗਈ ਨਾ ਦੁੱਖ ਪੈਦਾ ਹੋ ਗਈ ਫੇਰ ਮੋਤੇ ਮੋਤੇ ਫੇਰ ਕੁਛ ਵੀ ਨਹੀਂ ਇਹ ਕਹਿੰਦੇ ਨੇ ਬੜ ਲੇ ਕੇ ਮੈਂ ਕਹਿੰਦਾ ਇਹ ਬੇਗਲ ਹੋ ਗਏ ਬੇ ਦੀ ਅਕੀਮ ਤੇ ਪਹੁੰਚ ਗਿਆ ਇਸ ਵਕਤ ਸੰਸਾਰ ਐਦੋ ਵੱਡੀ ਬੇਅਕਲੀ ਕਿਤੇ ਨਹੀਂ ਗੁੜੀ ਇਹ ਅਕਲ ਵਾਲੇ ਨਹੀਂ ਓਏ ਬੇਕਲ ਹੋ ਗਏ ਸਾਰੇ ਅਕਲ ਖਾਨਾ ਚਲੀ ਗਈ ਸਭ ਦੀ ਅਕਲ ਵਾਲਾ ਘਰੇ ਇਹਨਾਂ ਨੂੰ ਅਕਲ ਦਾ ਪਤਾ ਹੀ ਨਹੀਂ ਅਕਲ ਕੀ ਹੁੰਦੀ ਹੈ ਇਹਤੇ ਬਾਦ ਵਿਵਾਦ ਹੈ ਉਤੇ ਅਕਲ ਹੁੰਦੀ ਹੋਈ ਨਹੀਂ ਅਕਲ ਗਵਾਈਏ ਬਾਦ ਅਕਲੀਏ ਨਾ ਕੀਏ ਤੇ ਸਾਰੇ ਜਿਹੜੇ ਘਰ ਚ ਬਾਦੋ ਬਾਦ ਹੈ ਨਹੀਂ ਔਰਤਾ ਆਦਮੀ ਨਾਲ ਵਿਵਾਦ ਕਰਦੀ ਹੈ ਕਹਨੇ ਕਿ ਖਸਮਾ ਨਾ ਜਿਹੜਾ ਖਸਮਾ ਕਰਿਆ ਬਰਾਬਰੀ ਫਿਰ ਗੈਰ ਤੋਂ ਉੱਧਰ ਪਾਏ ਇਹ ਕਹਿੰਦੇ ਆ ਆਦਮੀ ਔਰਤ ਬਰਾਬਰ ਨੇ ਗੁਰਬਾਨੀ ਉਹ ਗੁਰਬਾਨੀ ਕੁਝ ਹੋਰ ਕਹਿੰਦੀ ਹੈ ਇਹਨਾਂ ਦੀ ਬੁੱਧੀ ਭ੍ਰਸ਼ਟ ਹੋਈ ਹੋਈ ਹੈ ਵਿਦਵਾਨ ਨੇ ਨਾ ਬੁੱਧੀ ਦਾ ਇਹਨਾਂ ਦੀ ਭਰਸ਼ਟ ਗੁਰਬਾਣੀ ਦੇ ਆਪਣੇ ਮਦਦ ਕਰ ਅਰਥ ਨੇ ਹਾਂ ਵੀ ਗੁਰਬਾਣੀ ਵੀ ਇਹ ਕਹਿੰਦੀ ਹੈ ਜੋ ਅਸੀਂ ਕਰਦੇ ਹਾਂ ਗੁਰਬਾਣੀ ਕੋਈ ਨਹੀਂ ਕਹਦੀ ਇਹ ਗੱਲ ਗੁਰਬਾਣੀ ਕਦੇ ਖਸਮੇ ਕਰਿਆ ਬਰਾਬਰੀ ਫਿਰ ਘਰ ਤੰਦਰ ਪਾਏ ਉੱਤੇ ਸਿਰਦੂਗਾ ਜਿੱਥੇ ਦਰਕਦੇ ਵੇ ਸਿਰਦੂਗਾ ਚੱਕ ਇਹ ਕਹਿੰਦੀ ਹੈ ਕਦੋਂ ਕਹਿੰਦੀ ਹੈ ਬਰਾਬਰੀ ਬਰਾਬਰੀ ਕਦੋਂ ਕਹਿੰਦੀ ਹੈ ਉਦੋਂ ਕਹਿੰਦੇ ਇਹ ਕਰਿਆ ਬਰਾਬਰੀ ਇਹ ਸੋਚਿਆ ਖਸਮ ਦੀ ਬਰਾਬਰੀ ਕਰਨੀ ਤਾਂ ਨਰਕ ਦੇ ਵਿੱਚ ਚਲੀ ਜਾਂਦੀ ਇੱਕਦੋ ਤੇ ਇਤੋਂ ਵੱਡੀ ਤਾਂ ਕੋਈ ਸਜ਼ਾ ਹੀ ਨਹੀਂ ਹੈ ਫਿਰ ਇਤੋਂ ਵੱਡੀ ਤਾਂ ਕੋਈ ਸਜ਼ਾ ਨਹੀਂ ਹੈ ਨਰਕ ਬਣ ਜੂਗਾ ਸੰਸਾਰ ਨਰਕ ਬਣਿਆ ਹੋਇਆ ਤਾਂ ਹੀ ਹੈ ਸੋ ਜਨਨ ਦੀ ਨਰਕ ਆ ਲਈ ਹੈ ਸਾਰਿਆਂ ਦੀ ਸੰਸਾਰ ਆ ਸਭ ਨਰਕ ਹੈ ਇਹ ਦੁਬਾਰਾ ਨਰਕ ਹੋਰ ਕਿਉਂ ਇਤੋਂ ਬੜਾ ਨਾਕੀ ਉਦਾਂ ਆਦਮੀ ਆਦਮੀ ਦਾ ਖੁਦ ਦਾ ਪੈਸਾ ਆਤਬਾ ਮਰਦੇ ਕੌਣ ਹੈ ਗਰੀਬ ਐਵੇਂ ਬੰਬਰ ਖਤਲੋ ਮਾਰਦੇ ਨੇ ਇਤੋਂ ਬੜਾ ਅਪਰਾਧ ਕੀ ਹੋ ਵੱਡੇ ਵੱਡੇ ਅਪਰਾਧ ਕਰਨ ਲੱਗਿਆ ਆਦਮੀ ਸੋਚਦਾ ਨਹੀਂ ਵੇ ਕੀ ਕਰਨੇ ਬਟੇ ਵੱਡੇ ਅਪਰਾਧ ਸਰਕਾਰ ਵੀ ਕਰਨ ਦਿੰਦੀ ਹੈ ਉਹਨਾਂ ਦੇ ਡੋਲ ਨਾਮਲੇ ਉਧਰ ਦੂਜੇ ਮਰ ਜਾਂਦੇ ਨੇ ਵਿਚਰ ਜਾਂਦੇ ਰੋ ਵੀ ਕੀ ਕਰ ਦੂਜੇ ਮਰ ਜਾਂਦੇ ਪਰ ਇਹਦੀ ਝੜਕੀ ਹੈ ਬੱਕੂ ਕੇ ਲੜਾਈ ਹੈ ਸਵਾਲ ਤਾਂ ਇਹ ਤੁਹਾਨੂੰ ਕੋਈ ਗੱਲ ਫੇਰ ਉੱਥੇ ਜਾਂਦੀ ਬੇਅਗਲੀ ਨੂੰ ਅਕਲ ਤੇ ਲੱਤਾਂ ਅਸੀਂ ਧਰਮ ਦੀ ਹੰਢੀ ਕਰਨੀ ਚਾਹੁੰਦੇ ਹਾਂ ਅਸੀਂ ਬੇਸ਼ਰਮੀ ਨੂੰ ਉਪਰ ਲਿਆਉਣ ਚਾਹੁੰਦੇ ਹਾਂ ਅਸੀਂ ਜਿਹੜੀਆਂ ਗੱਲਾਂ ਦੇ ਧਰਮ ਖਿਲਾਫ ਹੈ ਸੱਚ ਧਰਮ ਉਹਨਾਂ ਨੂੰ ਅਸੀਂ ਉਹ ਧਰਮ ਨੂੰ ਦਬੋਵਾ ਜਾਂਦੇ ਬਨਵਰ ਜੀ ਨੂੰ ਉੱਪਰ ਲੈ ਉਲੋ ਜਾਂਦੇ ਜਦੋਂ ਧਰਮ ਤੇ ਬਨਵਰ ਜੀ ਆ ਵੀ ਹੁੰਦੀ ਹੈ ਇਹੀ ਕੁਝ ਹੋ ਜਾਂਦਾ بڑے بڑے ਬੰਦੇ ਅਸੀਂ ਪਹਿਲਾਂ ਬਣਾਏ ਹੋਏ ਨੇ ਆਪਣੇ ਬਹੁਤ ਤਿਆਰ ਪਹਿਲਾਂ ਹੀ ਕਰ ਲਈ ਇਹਨਾਂ ਅਖਲਮੰਦਾ ਨੇ ਸਾਰੇ ਸੰਸਾਰ ਦੇ ਕਈ ਵਾਰ ਮੌਤ ਹੋ ਸਕਦੀ ਹੈ ਜਿਹਨਾਂ ਕੋ ਸਾਡੇ ਕੋ ਸਮਾਨ ਹੈ ਇਹ ਅਸੀਂ ਪਹਿਲਾਂ ਪੈਦਾ ਕਰ ਲੈ ਵੱਡੀ ਅਕਲ ਦਾ ਦਿੱਜਾ ਸਾਡਾ ਇਹ ਇੱਥੇ ਪਤਾ ਲੱਗਦਾ ਅਕਲਵੰਦਾ ਨੇ ਇਹਨਾਂ ਦਾ ਕਿੰਨਾ ਵਿਸ਼ਵਾਸ ਆ ਸਾਨੂੰ ਇੱਕ ਦੂਗੇ ਤੇ ਸੰਕਟਨ ਵਾਰ ਨਹੀਂ ਅਧਮ ਉਹਧਾਰ ਨਹੀਂ ਸੰਕਟਨ ਵਾਰ ਨਹੀਂ ਕਾ ਕੀ ਹੈ ਸਾਰੇ ਸੰਗ ਨੂੰ ਕੀ ਕਰ ਸਕਦੀਆ ਗੁਰਮਤ ਕਰ ਸਕਦੀਆ ਐਵੇਂ ਨਹੀਂ ਟਾਈਮ ਲਾਇਆ ਇਹਨਾਂ ਇਹ ਸੰਕਟ ਜੇ ਕਹਿੰਦੇ ਵੀ ਨਾ ਇਹ ਯੂ ਐਨਓ ਦੀ ਡਿਮਾਂਡ ਵੀ ਹੈ ਵੀ ਇਹ ਜਿਹੜਾ ਮਤਲਬ ਹੈ ਨਾ ਗਰਨਾਨ ਸਦੀ ਜਿਹਦੀ ਸਮਝ ਆ ਜਾਏ ਸੰਕਟਨ ਵਾਰਡ ਹੋ ਸਕਦਾ ਇਹਤੇ ਬਿਨਾਂ ਇਲਾਜ ਨਹੀਂ ਤੁਸੀਂ ਤਾਂ ਖਤਮ ਦਾ ਹੈ ਉਹ ਤਾਂ ਕੋਈ ਰੌਲਾ ਹੀ ਨਹੀਂ ਹੈ ਖਤਮ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਜੇ ਜਲਦਾ ਹੈ ਮੇਰੇ ਵਰਲਡ ਵਾਰ ਹੋਊਗੀ ਐਟਮਿਕ ਜਦ ਹੋਊਗੀ ਇਹਨੂੰ ਕੋਈ ਰੋਕ ਨਹੀਂ ਸਕਦਾ ਇਹਨਾਂ ਨੇ ਕੀ ਰੋਕਣੀ ਹੈ ਇਹ ਹਨੇਗੀ ਰੋਕੜੀਆਂ ਇਹਨਾਂ ਨੂੰ ਇੰਨੀ ਅਕਲ ਨਾਲ ਰੋਕਣ ਵਾਲਿਆ ਨੂੰ ਜਦ ਤੱਕ ਖੋਲ ਗਰ ਜੀਓ ਤੇ ਅਕਲ ਲੱਗੀ ਕਬ ਜਦ ਸਵਾਰਥ ਹੋ ਤੇ ਅਕਲ ਲੱਗੀ ਕਬ ਅਕਲ ਤਾਂ ਪਰਮਾਰਥ ਦੇ ਆਕੇ ਪੈਦਾ ਹੁੰਦੀ ਹੈ ਅਕਲ ਨੂੰ ਨਵਾਂ ਪੱਤਾ ਫੁੱਟਦਾ ਜਦੋਂ ਅੰਦਰ ਪਰਮਾਰਥ ਪੈਦਾ ਹੁੰਦਾ ਸਵਾਰਥ ਛੱਡ ਕੇ ਤਾਂ ਨਵਾਂ ਪੱਤਾ ਫੁੱਟਦਾ ਪੱਤਾ ਹੀ 당 ਫੁੱਟਦਾ ਪਹਿਲਾ ਪੱਤਾ ਫੁੱਟਦਾ ਸਵਾਰਥ ਛੱਡ ਕੇ ਪਰਮਾਰਥ ਪੈਦਾ ਹੁੰਦੇ ਹੁੰਦੇ ਇਹ ਪਰਮਾਰਥ ਵਾਲਿਆਂ ਦੀ ਲਿਖੀ ਹੋਈ ਹੈ ਸਾਰੀ ਗੁਰਬਾਣੀ ਜਿਹਨਾਂ ਨੂੰ ਬੱਥੇ ਟੇਕਦੇ ਨੇ ਮਹਾਨ ਸੰਤ ਕਹਿ ਕੇ ਕਿਹੜਾ ਨਹੀਂ ਕਹਿੰਦਾ ਨਾ ਜੋ بڑے بڑے ਲੀਡਰ ਕਿਹੜਾ ਨਹੀਂ ਕਹਦਾ ਕਬੀਰ ਨੂੰ ਮਹਾਰ ਕਿਹੜਾ ਨਹੀਂ ਕਰਦਾ ਕਬੀਰ ਦੀ ਇੱਜ਼ਤ ਕਿਉਂ ਕਰਦੇ ਨੇ ਕਬੀਰ ਕੋ ਕੀ ਸੀ ਰਵਿਦਾਸ ਕੋ ਕੀ ਸੀ ਕੀ ਸੀ ਉਹਨਾਂ ਦੇ ਕੋਲ ਸਵਾਏ ਅਗਲ ਤੇ ਕੀ ਸੀ ਉਹਨਾਂ ਦੇ ਕੋਲ ਹੋਰ ਦੱਸਣ ਕੀ ਸੀ ਸਵਾਇ ਤਿਆਗ ਤੇ ਹੋਰ ਕੀ ਸੀ ਉਹਨਾਂ ਕੋਲ ਪ੍ਰਾਣੀ ਕਾਤੇ ਰੱਖਿਆ ਬੇਰਾ ਜੈਸੇ ਤਾਰੋਰ ਪੰਖ ਜੇ ਇਹੀ ਗੱਲ ਮੰਨ ਲੈਣਾ ਆਪੇ ਛੱਡ ਜਾ ਸਭ ਕੁਝ ਕਿ ਕੋਈ ਗੱਲ ਨਾ ਸਭ ਕੁਝ ਛੱਡ ਜਾ ਸਭ ਪਿੱਛੇ ਆ ਜਾਣ ਵੀ ਭਾਈ ਰਾਜ ਜੀ ਦੇ ਕੰਨਾ ਕਰੋ ਰਲ ਕੇ ਕਰੋ ਸਭ ਪਿੱਛੇ ਆੜ ਜਾਣ ਕੀ ਲੈਣਾ ਹੈ ਰਾਜ ਤੇ ਆਰਾਮ ਨਾਲ ਕਰਨ ਕਹਤਾ ਜਰੂਰ 24 ਘੰਟੇ ਦੀ ਰਖੜੀ ਰਾਤ ਨੂੰ ਦੀਦਰੀ ਉਹਦੀ ਕਿ ਕੋਈ ਗਾਲੋ ਦੇ ਵਿੱਚ ਕਿਆ ਤੇ ਰੱਖਿਆ ਮੇਰਾ ਜੈਸੇ ਦਰਬਾਰ ਪੰਖ ਵੇਤਾ ਇੱਕ ਦਰਖਤ ਤੇ ਜਿਵੇਂ ਜਾਨਵਰ ਆ ਕਿੰਨੇ ਦਿਨ ਦਾ ਉਹਦੀ ਉਮਰ ਹੈ ਬੈਠੇ ਆ ਬਿਰਖੇ ਹੀਟ ਸਭ ਜੰਤੇ ਇਕੱਠੇ ਕੁਝ ਤੱਤੇ ਕੁਝ ਬੋਲਣੇ ਬਿਠੇ ਅਸ ਤੋ ਸਭੇ ਉੱਠ ਜਾਣਾ ਜੋ ਜੋ ਉਹ ਦਬਿਆਣੀ ਸਾਰੇ ਚਲੇ ਜਾਂਦੇ ਨੇ ਤੁਸੀਂ ਚਲੇ ਜਾਂਦੇ ਕਿਹੜੇ ਪਾਸੇ ਤੁਸੀਂ ਲੱਗੇ ਹੋ ਹਮ ਆਦਮ ਉਹ ਧਾਰਨੀ ਬਾਅਦ ਵਿੱਚ ਫਸੇ ਨੇ ਸਾਰੇ ਤੇਜ پکڑ ਖਾਣੀ ਤੁੰਦ ਤਵੇ ਆਦਮ ਉਹ ਕਿਵੇਂ ਆ ਤੇਜ ਪ੍ਰਕਰ ਖਣਾ ਅਕਲ ਦੇ ਰਹੀ ਆ ਸਾਰਿਆਂ ਨੂੰ ਗਿਆਨ ਵੀ ਬਚੋ ਜੇ ਬਚੁੰਦਾ ਤੇਜ ਬਾਰੇ ਜਾਓਗੇ ਤੇਜ ਅਕਲ ਹੁੰਦੀ ਆ ਅਕਲ ਪ੍ਰਚੰਡ ਗਿਆਨ ਦੇ ਰਿਹਾ ਸਾਨੂੰ ਤਾਂ ਦੇ ਰਿਹਾ ਤੇਜ ਦੇ ਰਿਹਾ ਆਪ ਤੋਂ ਦੂਰ ਨੂੰ ਛੱਡਣਾ ਕਿਸੇ ਚੀਜ਼ ਨੂੰ ਫੇਕਣਾ ਪ੍ਰਕਰ ਪ੍ਰਹਾਰ ਕਰਨਾ ਜਿਵੇਂ ਤੀਰ ਹੈ ਸੀ ਛੱਡ ਦੂਰ ਨੂੰ ਜਾਂਦਾ ਪੜ੍ਹਾਰ ਕਰਨਾ ਪ੍ਰਕਰਖਣ ਕਰਨਾ ਆਪ ਤੋ ਦੂਰ ਨੂੰ ਸਿਧਨ ਕਿਸੇ ਚੀਜ਼ ਆਪਣੇ ਗਿਆਨ ਨੂੰ ਵਧਣਾ ਲੋਕਾਂ ਨੂੰ ਰੋਸ਼ਨ ਕਰਨਾ ਸਾਰਿਆਂ ਦੇ ਹਿਰਦਿਆਂ ਨੂੰ ਇਹ ਪ੍ਰਕਰਖਣ ਤੁੰਦ ਤਵੇ ਤੁੰਦ ਤਵੇ ਜਿਹੜਾ ਤੇਰਾ ਤੇਜ ਹੈ ਨਾ ਬਹੁਤ ਹੀ ਸ਼ਕਤੀਸ਼ਾਲੀ ਤੇਜ ਹੈ ਤੇਰਾ ਤੇਰਾ ਜਿਹੜਾ ਪ੍ਰਚੰ ਗਿਆਨ ਹੈ ਨਾ ਬਹੁਤ ਸ਼ਕਤੀਸ਼ਾਲੀ ਹੈ ਏ ਨਹੀਂ ਹੈਗਾ ਵੀ ਇਧਰ ਨੂੰ ਚੜਦਾ ਨਹੀਂ ਬਾਣੀ ਤੇਰਾ ਕੋਈ ਗਿਆਨ ਜਿਆਦਾ ਕਿਸੇ ਕੋ ਇਧਰ ਇਹਦਾ ਅਸਰ ਨਹੀਂ ਹੁੰਦਾ ਤੇਰਾ ਗਿਆਨ ਐਡਾ ਤੇਰੇ ਕੋਲ ਐਡੀ ਵੱਡੀ ਲਾਈਟ ਆ ਸਾਰਿਆਂ ਨੂੰ ਰੋਸ਼ਨ ਕਰ ਰਿਹਾ ਕੋਈ ਬੰਦ ਗਿਆਨ ਵਾਲਾ ਨਹੀਂ ਬਹਾਰ ਹੈਗਾ ਵੀ ਜੋ ਉਥੋਂ ਲਾਈਟ ਪਿੱਛੇ ਨੂੰ ਦੁੱਖ ਦੋਖ ਦਹੰਤੀ ਜਵਾਲ ਜੇ ਦੁੱਖ ਦੋਖ ਦਹੰਤੀ ਦੁਖ-ਦੋਖ ਨੇ ਜਿਹੜੇ ਲੋਕਾਂ ਨੇ ਸਾਡੇ ਸੰਸਾਰੀਆਂ ਦੇ ਦੁਖ-ਦੋਖ ਹੋਣਾ ਨੇ ਸਾਡੇ ਕੋਲ ਕੀ ਹੈ ਉਹ ਬੜੇ ਮੇਰੇ ਸਾਡੇ ਕੋਲ ਅਸੀਂ ਜਿਹਨੇ ਸੁਖ ਪੈਦਾ ਕਰਦਾ ਉਹਦੇ ਵੀ ਦੁਖ ਨੇ ਉਹ ਤੋ ਤੋ ਲੱਗਦੇ ਨੇ ਸਭ ਦੁਖ ਪੈਦਾ ਕੀਤੇ ਨੇ ਸੀ ਪੈਦਾ ਹੀ ਨਹੀਂ ਕਰ ਸਕਦਾ ਸੁਖ ਤਾਂ ਪਰਮੇਸ਼ਰ ਪੈਦਾ ਕਰਦਾ ਆਦਮੀ ਦੁਖ ਪੈਦਾ ਕਰੂਗਾ ਸੁਖ ਨਹੀਂ ਪੈਦਾ ਕਰ ਸਕਦਾ ਜਿੰਨਾ ਅੱਜ ਪੈਦਾ ਕੀਤਾ ਡਵੈਲਪਮੈਂਟ ਉਸ ਦੁਖ ਪੈਦਾ ਕੀਤਾ ਸਾਬਤ ਕਰੇ ਵੀ ਸੁਖ ਹੈ ਕੋਈ ਕੋਈ ਆਦਮੀ ਸਾਬਤ ਕਰੇ ਹਾਂ ਪਤਾ ਪਿੱਛੋਂ ਲੱਗਦਾ ਵੀ ਦੁੱਖ ਹੈ ਪਹਿਲਾਂ ਸੁਖ ਲੱਗਦਾ ਹੁੰਦਾ ਪਿੱਛੋਂ ਪਤਾ ਲੱਗਦਾ ਦੁੱਖ ਕੋ ਨੂੰ ਫੜ ਦੁੱਖ ਦਾ ਲੱਗਦਾ ਬੂਟਾ ਬਾਈਨਾ ਲੱਗਦਾ ਵੀ ਸੁਖ ਦੇਊਗਾ ਇਹ ਨਾਣੇ ਨੇ ਹੁਣ ਛੋਟੇ ਛੋਟੇ ਐ ਲੱਗਦੇ ਨੇ ਸੁਖ ਦੇਣਗੇ ਵੱਡੇ ਹੋ ਕੇ ਕੀ ਕਰਨਗੇ ਕੀ ਨਹੀਂ ਕਰਨਗੇ ਫੇਰ ਇਹਨਾਂ ਵੀ ਦੁਖੀ ਕਰਦਾ ਅਲਾਦਨ ਇਹਨਾਂ ਦੁਖੀ ਕਰਦਾ ਉਹੀ ਗੱਲ ਐ ਨਾ ਮੈਂ ਯਾਨੇ ਜੱਗੇ ਲੱਗਦੇ ਜਦੋਂ ਆਪਣੀ ਮਰਜ਼ੀ ਕਰ ਲੱਗਦੇ ਨੇ ਫੇ ਦੁਖੀ ਇਹ ਆਪਣੀ ਮਰਜ਼ੀ ਦੁਖੀ ਕਰਦੀ ਆ ਆਪ ਨੂੰ ਵੀ ਦੁਖੇ ਨੂੰ ਵੀ ਆਪ ਨੂੰ ਬਾਝ ਕਰਦੀ ਆ ਦੁਖੇ ਨੂੰ ਪਰਮੇਸ਼ਰ ਨੂੰ ਅਸੀਂ ਦੁਖੀ ਕਰ ਰਹੇ ਹਾਂ ਆਪਣੀ ਮਰਜ਼ੀ ਸਾਡੀ ਉਹਨੂੰ ਦੁਖੀ ਕਰ ਲਈ ਹੈ ਖਸਮੇ ਕਰੇ ਬਰਾਬਰੀ ਕੀ ਹੈ ਉਹ ਜੋ ਚਾਹੁੰਦਾ ਅਸੀਂ ਹੋਰ ਚਾਹੁੰਦੇ ਉਹਦੇ ਵਿਰੁੱਧ ਇਹ ਬਰਾਬਰੀ ਹੈ ਉਹ ਜਾਂਦਾ ਹੈ ਅਸੀਂ ਜਾਂਦੇ ਬਰਾਬਰੀ ਹੋਈ ਹੈ ਸਾਡੀ ਇੱਛਾ ਜੇ ਉਹਦੇ ਅਨਸਾਰ ਇੱਛਾ ਤੇ ਨਹੀਂ ਉਹਦੀ ਬਰਾਬਰੀ ਹੈ ਔਰ ਦੀ ਇੱਛਾ ਜਾਂ ਆਦਮੀ ਦੀ ਇੱਛਾ ਦੇ ਖਿਲਾਫ ਹੈ ਬਰਾਬਰੀ ਹੈ ਪਰ ਆਦਮੀ ਤੇ ਭੈਣ ਨਾਲ ਵਰਜੀ ਆਪਣੀ ਆਜ਼ਮੀ ਆਪਣੀ ਕਰ ਸਕਦਾ ਕਿ ਆਦਮੀ ਵਰਜੀ ਕਰਦਾ ਪਰਮੇਸ਼ਰ ਤੋਂ ਭੁੱਲਿਆ ਹੋਇਆ ਉਹ ਆਪਣੇ ਖਸਮ ਨਾਲ ਜੁੜਿਆ ਹੋਇਆ aadmi apne kasme de anusaar chal le aurat apne kasme de anusaar ਫਿਰ phir ikko kasme de anusaar le doye ikko kasme de anusaar le doye bhai aadmi railway line te chal reha hai aurat piche piche chal rahi hai do railway line te chal rahe ne gorbad te je aadmi chal reha hai aur do le piche chal rahi hai do gorbad te hi ਜਿਹੜੇ ਵਿਦਵਾਨ ਕਹਿੰਦੇ ਨੇ ਉਹਦੇ ਮਰਜ਼ੀ ਵੀ ਚੱਲ ਉਹਦੀ ਮਰਜ਼ੀ ਉਹਦਾ ਝਗੜਾ ਪੈਦਾ ਕਰਦਾ ਉਹਦਾ ਝਗੜਾ ਖੜਾ ਕਰਦਾ ਉਹਨਾਂ ਨੇ ਆਪਣੀ ਮਰਜ਼ੀ ਦਾ ਸਾਰਾ ਝਗੜਾ ਹੀ ਐ ਇਹ ਹੱਲ ਨਹੀਂ ਐ ਇਹਦਾ ਇਹ ਹੱਲ ਨਹੀਂ ਐ ਝਗੜੇ ਦਾ ਝਗੜੇ ਦਾ ਹੱਲ ਹੈ ਜਿਹੜਾ ਇਨਸਾਫ ਹੱਕ ਇਨਸਾਫ ਵਾਲੀ ਮਤ ਤੇ ਦੋਏ ਚੱਲਣ ਆਦਮੀ ਆਪਣੀ ਮਰਜ਼ੀ ਛੱਡੇ ਔਰਤ ਔਰਤ ਦਾ ਤਾਂ ਮਰਜ਼ੀ ਦਾ ਕੰਮ ਹੀ ਨਹੀਂ ਹੈ ਆਦਮੀ ਨੂੰ ਆਪਣੀ ਮਰਜ਼ੀ ਛੱਡਣੀ ਪਊ ਦੇਖ ਗਏ ਜੇ ਧਰਮਾਂ ਵੀ ਜਿਹੜੇ ਆਵੇ ਤੱਕਲੇ ਨੇ ਤਾਂ ਜਾਨਵਰ ਆ ਹੈ ਫਿਰ ਜਾਨਵਰ ਜਾਨਵਰ ਵੀ ਰੱਖਦੇ ਨੇ ਜਾਨਵਰ ਤੱਕੇ ਨਾਲ ਜ਼ੋਰ ਨਾਲ ਜ਼ੁਲਮ ਨਾਲ ਰੱਖਦੇ ਨੇ ਕਾਬੂ ਚ ਆਦਮੀ ਦੁਜਾਤਰੀ ਹੈ ਤੱਕੇ ਨਾਲ ਜ਼ੋਰ ਨਾਲ ਜ਼ੁਲਮ ਨਾਲ ਕਾਬੂ ਰੱਖ ਲਾ ਕੇ ਆਪਣੇ ਪਿੱਛੇ ਲਾ ਧਰਮ ਬਨੌਣਾ ਚਾਹੇ ਧਰਮੇ ਬਨੌਣਾ ਹੋਵੇ ਧਰਮ ਵੀ ਤਾਂ ਆਪਣੇ ਪਿੱਛੇ ਲਾਉਣਾ ਜੁਦਾ ਗੁਰਮਤਿ ਇਜ਼ਤ ਨਹੀਂ ਦਿੰਦੀ ਐਸੇ ਧਰਮ ਦੀ ਜਿਹੜਾ دہشتਆਂ ਨੂੰ ਫੈਲ ਲੈ ਇਹ ਤਾਂ دہشت ਦੀ ਲੋੜ ਕੋ ਸੁਭਝਾਉਣ ਲੈ ਸੁਭਝਾ ਕੇ دہشت ਨਹੀਂ دہشت ਵਾਸਤੇ ਗੁਰਮਤਿ ਚ ਕੋਈ ਜਗ੍ਹਾ ਨਹੀਂ ਸਾਡੇ ਜਿਹੜੇ ਸੀ ਨਾ ਅਤਵਾਦੀ ਤਾਂ ਹੀ ਮਾਰੇ ਗਏ ਕਿਉਂ ਬਰੇ ਗੁਰਮਤਿ ਦਾ ਤਾਂ ਗੈਰਨੀ ਸੀ ਉਹ ਤਾਂ ਕਹਿੰਦਾ ਜਿਹੜਾ ਸਾਡੀ ਗੱਲ ਨਹੀਂ ਮੰਨਦਾ ਗੋਲੀ ਮਾਰ ਦੋ ਤੁਸੀਂ ਕਿਹਦੀ ਮੰਨਦੇ ਹੋ ਸਵਾਲ ਹੈ ਤੁਸੀਂ ਕਿਹਦੀ ਬੋਲਦੇ ਹੋ ਜੇ ਤੁਸੀਂ ਗੁਰੂ ਦੀ ਮੰਨੋ ਜੇ ਸਿੱਖੀ ਗੁਰੂ ਦੀ ਮੰਨਦੇ ਨਾ ਹੋ ਕਿ ਗੁਰੂ ਦੀ ਜੇ ਮੰਨਦੇ ਫਿਰ ਤਾਂ ਉਸੇ ਗੋਲੀ ਮਾਰ ਨਹੀਂ ਸਕਦੇ ਫਿਰ ਤਾਂ ਆਪਣੀ ਬਣਾ ਹੀ ਨਹੀਂ ਸਕਦੇ ਗੁਰਮਤ ਤੋਂ ਸਖਣੇ ਤੇ ਕੋਰੇ ਤੇ ਹੁਣ ਵੀ ਜਿਹੜੇ ਰੌਲਾ ਪਾਉਂਦੇ ਨੇ ਗੁਰਮਤ ਤੋਂ ਕੋਰੇ ਨੇ ਕੱਖ ਦੀ ਉਹਨਾਂ ਦੇ ਬੱਲੇ ਹੈ আর ਉਹ ਕਾਮਯਾਬ ਨਹੀਂ ਹੋ ਸਕਣ ਉਹਨਾਂ ਦੇ ਮਗਰ ਤਾਂ ਹੀ ਨਹੀਂ ਬਬਲਕ ਲੱਗਦੀ ਤਾਂ ਹੀ ਨਹੀਂ ਉਹਨਾਂ ਨੂੰ ਕੋਈ ਬੋਰਡ ਦਿੱਤਾ ਬੋਰੋਂ ਲੋਕਾਂ ਨੂੰ ਪੂਰ ਖਰੂੜੀ ਕੋ ਫੋੜ ਦਿੰਦਾ ਹੁੰਦਾ ਅੱਗੇ ਨੁਕਸਾਨ ਕਰਾਤਾ ਹੁਣ ਕਰਾ ਦੇਣਗੇ ਉਹ ਦੇਖ ਲੈ ਨਾ ਨੁਕਸਾਨ ਕਰਾ ਦੇਣਗੇ ਅੱਗੇ ਬੁੱਢੇ ਨਹੀਂ ਭਰਾਏ ਨੇ ਜੋ ਆਖ ਦੀ ਕੇ ਪਤਾ ਮਤਲਬ ਸਾਡਾ ਹੈ ਕਿ ਸਾਰੇ ਸੰਸਾਰ ਦੇ ਜਿਹੜੇ ਲੋਕ ਨੇ ਬੱਚੇ ਨੇ ਸਾਡੇ ਨੇ ਕੋਈ ਭਾਈ ਹੈ ਕੋਈ ਸਾਰੇ ਭਾਈ ਹੋਣੇ ਜੇ ਬੱਚੇ ਨੇ ਉਹ ਵੀ ਸਾਡੇ ਚਾਹੇ ਪਰਿਵਾਰਕ ਹੈ ਫਿਰ ਥੋੜੇ ਜਿᱷ ਫਰਕ ਕਿਉਂ ਹੈ ਜੇ ਇੱਕ ਪਰਿਵਾਰ ਨਹੀਂ ਸਮਝਦੇ ਤੁਸੀਂ ਫਿਰ ਸਿੱਖੀ ਤੋਂ ਤੁਸੀਂ ਹਜ਼ਾਰਾਂ ਕੌਮ ਦੂਰ ਬੈਠੇ ਹੋ ਫਿਰ ਥੋੜੇ ਕਿਸੇ ਨਾਲ ਬਗਲ ਲਕਣ ਪ੍ਰੇਮ ਨਾਲ ਤਾਂ ਤੁਸੀਂ ਜਿੱਤ ਸਕਦੇ ਹੋ ਕਿਸੇ ਨੂੰ ਪ੍ਰੇਮ ਤੇ ਬਰੁਣ ਦੀ ਤਿਆਜ ਸਕਦਾ ਜਦ ਪ੍ਰੇਮ ਕਿਓ ਤਦ ਹੀ ਪ੍ਰਭ ਪਾਇਓ ਅੰਗਰੇਜ਼ਾਂ ਦੇ ਵਿੱਚ ਪ੍ਰੇਮ ਨੂੰ ਮਹਾਂਤ ਦਾ ਦितीय ਹੋਈ ਹੈ ਪਰ ਕੁਟਲ ਨੀਤੀ ਉਹਨਾਂ ਦੇ ਵਿੱਚ ਜੜੀ ਉਹ ਖਬਰਾਬ ਕਰਦੀ ਪ੍ਰੇਮ ਕਹਿਣ ਨੂੰ ਪ੍ਰੇਮ ਅੰਦਰ ਘੋਲਦਾ ਵਿੱਚ ਕੁਟਲਤਾ ਵਾਲਾ ਪ੍ਰੇਮ ਜਿਹੜਾ ਪ੍ਰੇਮ ਨਹੀਂ ਉਹ ਖੋਟਾ ਪ੍ਰੇਮ ਹੋ ਜਾਂਦਾ ਪ੍ਰੇਮ ਤੋਂ ਵੀ ਕਹਿੰਦੇ ਨੇ ਲਵ ਇਸ ਗੋਡ ਪਰ ਲਵ ਇਸ ਗੋਡ ਜੀ ਉੱਤੇ ਵਰ ਲਵ ਜੀ ਉੱਤੇ ਪ੍ਰੇਮ ਨਾਲ ਜਦ ਪ੍ਰੇਮ ਕੀਓ ਤੇ ਨਹੀਂ ਪ੍ਰਭ ਆਇਓ ਪ੍ਰੇਮ ਕੀਓ ਪ੍ਰਭ ਆਇਓ ਉਹ ਪ੍ਰੇਮ ਦਾ ਡੋਰੀ ਆ ਪ੍ਰਭ ਨੂੰ ਪਾਉਣ ਦੀ ਡੋਰੀ ਨੂੰ ਲਾ ਗੋਡ ਡੋਰੀ ਨੂੰ ਗੋਡ ਬਣਾਉਂਦਾ ਡੋਰੀ ਨੂੰ ਗੋਡ ਗੋਡ ਬਾਰੇ ਗਿਆਨ ਨਹੀਂ ਉਹਨਾਂ ਨੂੰ ਉਦਾ ਡੋਰੀ ਨੂੰ ਬਾੜ ਬੰਦੀ ਬੈਠੇ ਨੇ ਡੋਰੀ ਨਾਲ ਫਾ ਲੈਣਾ ਤੁਸੀਂ ਡੋਰੀ ਨਾਲ ਫਾਸੀ ਹੋ ਸਕਦੀ ਹੈ ਤੁਹਾਨੂੰ ਕਿਸੇ ਨੂੰ ਦੇ ਸਕਦੇ ਆਪ ਲੈ ਲਓ ਆ ਡੋਰੀ ਦਾ ਬੰਨਣਾ ਦਾ ਮਾਇਆ ਹੈ ਫਿਰ ਉਹ ਕਰਨਾ ਡੋਰੀ ਜੋੜਣੀ ਕਿਦੇ ਨਾਲ ਹੈ ਕਿਹਦੀ ਜੋੜੀ ਡੋਰੀ ਗੋੜਾ ਝੋੜ ਲਿਆ ਡੋਰੀ ਤਾ ਉਹ ਪਵਜਾ ਕਰਕੇ ਮਾਰ ਕੱਢੂਗਾ ਪਵਜਾ ਕਰਕੇ ਗੋੜਾ ਹੈ ਨਹੀਂ ਕੋੜ ਤਾਂ ਆਪਣੇ ਘਰ ਬੈਠਾ ਪਾਇਓ ਤਾਆਂਿਆਂ ਜੋ ਵਾਰ ਕੱਢੂ ਡੋਰੀ ਉਹਨੇ ਜੋੜੋਗੇ ਡੋਰੀ ਜੋੜਨਾ ਮਤਲਬ ਸਾਰੇ ਸਾਡੇ ਰਹਿ ਜਿਹੜੇ ਉਹਦੇ ਨੇ ਉਹ ਸਾਡੇ ਨੇ ਜਿਵੇਂ ਉਹ ਪ੍ਰੇਮ ਕਰਦਾ ਅਸੀਂ ਉਵੇਂ ਪ੍ਰੇਮ ਕਰਨ ਸਾਰੇ ਹਾਂ ਦੁਖ ਦੋਖ ਦਹੰਤੀ ਜਵਾਲ ਜੇੰਤੀ ਦੁਖ ਦੋਖ ਦਹੰਤੀ ਸਾਰੇ ਦੁਖ ਦੂਰ ਕਰਨ ਵਾਲੀ ਹੈ ਸੰਸਾਰ ਦੇ ਸੰਸਾਰ ਦੇ ਦੁਖ ਹੈ ਸਾਰੇ ਦੇ ਦੁਖ ਦੋਖ ਹੁੰਦੇ ਨੇ ਰੁਖ ਸੋ ਅਗਲ ਜਿਨ੍ਹਾਂ ਖਾ ਜਿਨ੍ਹਾਂ ਦੇ ਕਾਰਨ ਦੁਖ ਪੈਦਾ ਹੁੰਦਾ ਨੇ ਉਹਨੂੰ ਦੋਖ ਕਹਿੰਦੇ ਨੇ ਦੋਖ ਦਾ ਕਾਰਨ ਦੁਖ ਪੈਦਾ ਹੁੰਦਾ ਦੋਖ ਦੁਖ ਦਾ ਬੀਜ ਹੈ ਆਪਣਾ ਪ੍ਰਾਇਆ ਸੁਝੇ ਦਾ ਦੋਖ ਵੀ ਇਹ ਇਹ ਦੁੱਖ ਪੈਦਾ ਹੋਣਗੇ ਆਪ ਜਿਆਦਾ ਪੜਲ ਰਹਿਤ ਕਰਦੀ ਰਹਿ ਚੌੜੀ ਇਹ ਸਭ ਦੋਖ ਦਹੰਤੀ ਜਿਹਦਾ ਸਾਰਾ ਨਾਸ ਕਰਨ ਵਾਲੀਆਂ ਤੂੰ ਦੁੱਖ ਦੋਖ ਦਾ ਆ ਨਾਸ ਕਰਦੀ ਉਹ ਗੱਲ ਦਸੀ ਹੈ ਦੁੱਖ ਦੋਖ ਐ ਹੋਣਗੇ ਦੂਰ ਕਿਵੇਂ ਦਹੰਤੀ ਜੇ ਹੁਣ ਕਰਕੇ ਨਿਕਲ ਜਾਂਦੇ ਰਕਸ਼ਾਣਾ ਦਿਖਾਉਦੇ ਕਿਸੇ ਨੂੰ ਕੀ ਪਤਾ ਲੱਗਦਾ ਹੈਵਰੀ ਵੇਸ ਕੀਤਾ ਹੈ ਅਨਨੈਸੈਸਰੀ ਕੋਈ ਗੱਲ ਨਹੀਂ ਕਹੀ ਦੁਖ ਦੋਖ ਦਹੰਤੀ ਸਾਡਾ ਗੁਰੂ ਕਹਿੰਦੇ ਸੰਤਾਰ ਨੂੰ ਗਰੇ ਮੈਸੇਜ ਹੈ ਅੱਜੋਂ ਬੈਸੇਜ ਕਲੀਅਰ ਕੀਤਾ ਵੀ ਆ ਮਤਲਬ ਹੈ ਇਹਦਾ ਜਿਹੜਾ ਦੁਖ ਦੋਖ ਦਹੰਤੀ ਇੱਥੇ ਲਿਖਿਆ ਹੋਇਆ ਕਿਉਂ ਲਿਖਿਆ ਹੋਇਆ ਉਹਦਾ ਆ ਹੈਗਾ ਭਾਈ ਮੋਕੇ ਤੇ ਆ ਗੱਲ ਹੈ ਐ ਹੋਣਾ ਚਾਹੀਦਾ ਐ ਦਹੰਤੀ ਜਵਾਲ ਜੇਂਤੀ ਜਵਾਲ ਜੇਂਤੀ ਹੁਣ ਜੇ ਸਿੱਖ ਕਦੇ ਅੰਦਰ ਹੀ ਦੁੱਖ ਨੂੰ ਖੋਲ ਅਸੀਂ ਉਹਨਾਂ ਮੰਨਿਏ ਗੁਰਬਤ ਰੂਪ ਜਿਵੇਂ ਦੁੱਖ ਨੂੰ ਖੋਹੂਰ ਹੁੰਦੇ ਨੇ ਤਾਂ ਹੋਰ ਕੌਣ ਮੰਡੂਗਾ ਪਹਿਲਾਂ ਸਾਡਾ ਕੰਮ ਸਿੱਖ ਆਪਣੇ ਆਪ ਦਾ ਹਿਰਦਾ ਸਾਫ ਕਰਨ ਫੇਰ ਕਿਸੇ ਕੋਲ ਜਾਣ ਕਹਿਲ ਜਵਾਲ ਜੇਂਤੀ ਰੋਜ਼ ਨੂੰ ਬਦੂ ਜਵਾਲਾ ਹੈ ਉਹ ਜਵਾਲਾ ਜਿਹੜੀ ਉੱਥੇ ਗੈਸ ਚਲਦੀ ਏ ਧਰਤੀ ਚੋਂ ਨਿਕਲਦੀ ਏ ਗੈਸ ਉਹ ਨੂੰ ਕਹਿੰਦੇ ਜਵਾਲਾ ਜੀ ਉਹ ਜਵਾਲਾ ਜੀ ਬਾਹਰ ਬਣਾ ਲੀ ਅੱਗੇ ਜਿਹੜੀ ਹੁੰਦੀ ਏ ਇਹ ਅੱਗ ਨਾਲ ਆਦਮੀ ਤੱਕਦਾ ਹੋ ਜਾਂਦਾ ਜਵਾਲ ਹੈ ਜਵਾਲ ਜEntityType ਕਹਿੰਦੇ ਨੇ ਜੋ ਆਲ ਜੋ ਸਾਰੇ ਸੰਸਾਰ ਦੇ ਅੰਦਰ ਜੋਤ ਹੈ ਉਹ ਜਵਾਲ ਜEntityType ਹੈ ਜੀਅੰਤੀ ਹੁੰਦੀ ਹੈ ਜੀਵਨ ਦਾਤ ਦੇਣ ਵਾਲੀ ਸਦਨਾ ਜੋਤ ਜੀਅੰਤੀ ਜੀਵਨ ਦਾਤ ਦੇਣ ਵਾਲੀ ਜਿੰਨੇ ਦੇਹ ਸਰੀਰ ਨੇ ਨਾ ਮਿੱਟੀ ਦੇ ਉਹਨਾਂ ਅਜ ਜੋਤ ਜਿਹੜੀ ਹੈ ਉਹ ਜੀਵਨ ਜੋਤ ਹੈ ਜੀਅੰਤੀ ਜੀਵਨ ਦੇਣ ਵਾਲੀ ਹੈ ਜੋਤ ਜੋਤਾਂ ਰੱਖਣ ਵਾਲੀ ਜੀਅੰਤੀ ਜੜਲਾ ਨਹੀਂ ਹੈ ਦਾ ਅਰਥ ਇਹ ਤਾਂ ਵਿਦਵਾਨਾਂ ਦਾ ਅਰਥ ਕੀਤਾ ਹੋਇਆ ਜੀਅੰਤੀ ਕਈ ਤਾਂ ਗੱਲ ਹੈ ਜੀ ਅੰਤਿ ਅੰਤ ਤੱਕ ਜਦ ਨਾ ਜਨ ਸਰੀਰ ਦਾ ਅੰਤ ਨਹੀਂ ਹੁੰਦਾ ਜੀਵਨ ਇਹੀ ਰਸਦੀ ਹੈ ਜਿਉਂਦਾ ਅਜੇ ਤੱਕ ਸ੍ਰਿਸ਼ਟੀ ਇਹੀ ਜੀ ਅਨਾਦੀ ਆਗਾਦ ਤੋਂ ਲੈ ਕੇ ਸ਼ੁਰੂ ਤੋਂ ਲੈ ਕੇ ਹੀ ਹੈ ਇਹਦੇ ਨਾਲੇ ਜੀਵਨ ਸੰਸਾਰ ਦਾ ਅਨਾਦੀ ਇਹਦਾ ਆਪਣਾ ਆਦ ਕੋਈ ਨਹੀਂ ਸੰਸਾਰ ਦਾ ਜਦਾਂ ਪੈਦਾ ਹੋਇਆ ਹੋਇਆ ਇਹੀ ਜੋ ਬਤਾ ਆਪ ਕਿਸੇ ਨਾਲ ਨਹੀਂ ਕਿਸੇ ਤੋਂ ਨਹੀਂ ਪੈਦਾ ਹੋਈ ਹੋਈ ਇਹਦਾ ਜੀਵਨ ਕਿਸੇ ਹੋਰ ਦੀ ਹੋ ਜਾਂਦਾ ਰਹੇ ਆਦ ਅਨਾਦ ਅਗਾਦ ਦੀ ਅਛੇ ਅਗਾਦ ਗਾਦ ਨੂੰ ਕੀ ਫਿਰ ਵੀ ਆ ਜੀ ਨੂੰ ਪਤਾ ਨਹੀਂ ਜੇ ਫਿਰ ਵੀ ਸੰਸਾਰ ਨੂੰ ਪਤਾ ਨਹੀਂ ਹਾਲਾਂਕਿ ਗੱਲ ਸੱਚ ਹੈ ਆਤੋਂ ਲੈ ਕੇ ਤੂੰ ਦੀ ਸਾਰਿਆਂ ਦਾ ਜੀਵਨ ਦਾਨ ਤੇਰੀ ਵਜ੍ਹਾ ਨਾਲ ਜੀਵਨ ਹੈ ਫਿਰ ਵੀ ਲੋਕਾਂ ਨੂੰ ਪਤਾ ਨਹੀਂ ਅਗਾਦ ਦਾ ਮਤਲਬ ਹੈ ਅਗਾਦ ਅਗਾਦ ਕੱਲੇ ਲਫ਼ਜ਼ਾ ਮਤਲਬ ਹੈ ਸੰਸਾਰ ਨੂੰ ਨਹੀਂ ਪਤਾ ਇਸ ਗੱਲ ਦਾ ਅੱਛਾ ਕਦੇ ਵੀ ਤੇਰਾ ਨਾਸ ਨਹੀਂ ਹੁੰਦਾ ਤੂੰ ਕਦੇ ਸ਼ਾਇਦ ਹੀ ਹੁੰਦੀ ਚਾਰ ਸ਼ਬਦ ਨੇ ਚਾਰਾਂ ਦੇ ਅਰਥ ਦੇ ਇਹ ਆਦ ਤੋ ਲੈ ਕੇ ਜਦ ਅਸੰਸਾਰ ਪੈਦਾ ਹੋਇਆ ਤੂੰ ਜੇਂਤੀਆਂ ਸਾਰਿਆਂ ਨੂੰ ਜੀਵਨ ਸਾਰੇ ਸਰੀਰ ਤੇਰੀ ਵਜ੍ਹਾ ਨਾਲ ਜੀਉਂਦੇ ਨੇ ਤੇਰੀ ਜੋਤ ਦੀ ਵਜ੍ਹਾ ਨਾਲ ਜੀਉਂਦੇ ਨੇ ਜੱਤੋ ਹੀ ਜੋਤ ਹੈ ਓਏ ਅੱਪਾ ਲਾਲਾ ਨੂਰ ਪਾਇਆ ਰਾ ਕੁਦਰਤ ਕੇ ਸਾ ਬੰਦੇ ਆ ਜਿਹੜੇ ਨੇ ਜਾਂ ਨਿਕਲ ਜਾਂਦੀ ਐ ਫੇ ਕਹਿੰਦੇ ਡੈਡ ਬੌਡੀ ਐ ਜੋਤ ਜੇਲਤੀ ਆਨ ਅਨਾਦੀ ਲੈ ਕੇ ਐਂ ਨਹੀਂ ਪਹਿਲਾਂ ਕੁਝ ਹੋਰ ਸੀ ਫਿਰ ਕੁਝ ਹੋਰ ਹੋ ਗਿਆ ਦੂਏ ਜਨ ਤੀਏ ਜਨ ਵਿੱਚ ਹੋ ਗਿਆ ਜੋ ਤੇ ਕੋਈ ਆ ਚਲੀ ਆਉਂਦੀ ਇੱਕ ਕੋਈ ਜੋ ਚਲੀ ਆਉਂਦੀ ਹੈ ਜੋ ਦਾ ਜੋ ਆਪ ਜੋ ਤਨਾਤੀ ਹੈ ਪੈਦਾ ਨਹੀਂ ਹੋਏ ਹੋਗੇ ਸਤੋਂ ਵੇਛੇ ਰਦੀਏ ਅਛਾ ਅਛਾ ਵਰਦੀ ਦਿਖੋਗੇ ਵਰਦੀ ਹੈ ਹੀ ਨਹੀਂ ਉਹ ਬਰੂ ਤਾਂ ਹੀ ਪੈਦਾ ਹੋਊਗਾ ਅ ਸ਼ੈਤਾਨਿਆ ਹੋਇਆ ਸੁਧਤਾ ਸਮਰਪਣੀ ਤਰਕ ਬਿਤਰਕਣੀ ਇਹ ਹੁਣ ਪੜਨ ਤਰੂਣੀ ਅਰਥਾਂ ਦਾ ਪਤਾ ਇਹਨੂੰ ਦਾ ਇਹ ਤਾਂ ਹੋਰੇ ਕੁਛ ਗਰੀ ਜਾਂਦਾ ਹੈ ਇਹ ਵਿਚਾਰਾ ਹੁਣ ਵਿਦਵਾਨ ਹੈਗਾ ਜਿਹੇ ਅਰਥ ਵਿਦਵਾਨਾਂ ਨੇ ਅਸਲ ਦੇ ਵਿੱਚ ਸਾਰੀ ਜਿਹੜੀ ਦਿੱਕਸ਼ਤ ਲਿਖੀ ਹੈ ਨਾ ਪਹਿਲਾਂ ਕੀਤੀ ਹੈ ਸਾਰੀਓ ਵਿਦਵਾਨਾਂ ਦੇ ਲੈਵਲ ਤੇ ਤਾਂ ਹੀ ਤਾਂ ਬਾੜ ਬਰਮ ਤਾਂ ਹੀ ਲੁਭਤ ਹੋ ਗਿਆ ਸਿਰਫ ਸ਼ਾਸਤਰਾਂ ਵਾਲਾ ਗਿਆ ਨਾ ਦੇਖੋ ਜਿਹੜੇ ਬੂਲ ਅਥਰ ਸ਼ਬਦਾਂ ਦੇ ਉਹਦੇ ਕੋਈ ਹੈ ਹੀ ਨਹੀਂ ਮੂਲ ਅਰਥ ਸ਼ਬਦਾਂ ਦੇ ਬੇਦ ਵਿੱਚ ਪਏ ਨੇ ਸ਼ਬਦ ਆਪ ਦੱਸਦੇ ਮੇਰੇ ਅਰਥ ਹੈ ਲਫ਼ਜ਼ ਆਪ ਦੱਸਦੇ ਮੇਰੇ ਅਰਥ ਹੈ ਇਹ ਕਿਸੇ ਨੂੰ ਪਤਾ ਹੋਵੇ ਲਫ਼ਜ਼ ਦੇ ਵਿੱਚ ਉਤਰਦੀ ਹੈ ਇਹ ਫੌੜੀ ਲਾ ਕੇ ਜੋ ਖੂਦ ਦੇ ਵਿੱਚ ਉਤਰਾਂਗੇ ਤਾਂ ਹੀ ਪਤਾ ਲੱਗੂ ਥੱਲੇ ਕੀ ਹੈ ਕਈ ਥਾਂ ਲਪਟ ਕੇ ਦੇਖਣਾ ਪੈਂਦਾ ਉਪਰਿਆ ਹੋਇਆ ਹੈ ਰੇਤੇ ਨਾਲ ਬਾਹਣ ਹੈਗੀ ਹੈ ਥੱਲੇ ਦਾ ਖੂਲ ਕੀ ਹੈ शुद्धता समर्पित तर्क वितर्क नहीं देखो शुद्धता समर्पित संसार ਨੂੰ ਸ਼ੁੱਧ ਕਰਨ ਵਾਸਤੇ ਆਪਣਾ ਜੀਵਨ ਸਮਰਪਿਤ ਕੀਤਾ ਹੋਇਆ ਲੋ ਉਹਨੇ ਕੌਣ ਹੈ ਇਹ ਗੁਰੂ ਬੁੱਧੀ ਦਾ ਕੰਮ ਕੀ ਹੈ ਜਨਮ ਤੇ ਮਾਰੇ ਲਿਖੇ ਸਮਰਪਣੀ शुद्धता ਨੂੰ ਸਮਰਪੜੇ ਸੰਸਾਰ ਦਾ ਮਨਸ਼ੁੱਧ ਕਰਨਾ ਸੰਸਾਰ ਨੂੰ ਸ਼ੁੱਧ ਕਰਨਾ ਇਸ ਗੱਲ ਵਾਸਤੇ ਹੀ ਸਿੱਖ ਦਾ ਜੀਵਨ ਸਮਰਪਣ ਹੈ ਇਰਾਨੂ ਗੁਰੂ ਕਹਿੰਦੇ ਨੇ ਉਸ ਭਗਤ ਕਹਿੰਦੇ ਨੇ ਉਸ ਸਮਰਪਣ ਇਸ ਗੱਲ ਨੂੰ ਰਹਿਣ ਗੁਰੂ ਤਾਂ ਕਹਿਣਾ ਨਹੀਂ ਚਾਹੀਦਾ ਚਲੋ ਜੇ ਆਪਾਂ ਕਹਿਣ ਵੀ ਲੱਗ ਗਏ ਆਪਣੀ ਬੋਲੀ ਚ ਆਪਾਂ ਨੂੰ ਪਤਾ ਹੋਣਾ ਚਾਹੀਦਾ ਸ਼ਬਦ ਗੁਰੂ ਅਰੇ ਗੁਰੂ ਚ ਕੀ ਫਰਕ ਹੈ ਤਰਕ ਬੇਤਰਕਣੀ ਉਹਨਾਂ ਦਾ ਹੀ ਕਮਰੇ ਸਾਇਆ ਰੂਪ ਦੇ ਦਿੱਤਾ ਉਹਦੇ ਚੌੜਾ ਲਾ ਕੋ ਸੱਜਾ ਤਰਕ ਬਰ ਤਰਕੜੀ ਜੇ ਕੋਈ ਇਹਦੇ ਤੇ ਤਰਕ ਕਰੇ ਲੋ ਉਹਦਾ ਉਹਦੇ ਵੱਲੋਂ ਵੜ ਦਿੰਦੀ ਉਹਦੇ ਜਾਵਣ ਦਾ ਸੀ ਤੇ ਹੀ ਰੋਦਾ ਹੀ ਤਰਕ ਨੂੰ ਪੁੱਠਾ ਕਵਾ ਕੇ ਉਹਦੋਂ ਨੂੰ ਵੜ ਦਿੰਦੀ ਉਹਦੇ ਵੱਲੋਂ ਬਤਰਕ ਬਤਰਕ ਪੁੱਠਾ ਤਰਕ ਉਹਦਾ ਹੀ ਤੀਰ ਉਹਦੇ ਵੱਲ ਨੂੰ ਗੋੜਨ ਲੇ। ਉਹਦਾ ਤੀਰ ਫੜਕੇ ਨਾ ਆਉਂਦਾ। ਉਹਦੇ ਹੀ ਮਾਰ ਦੇਣਾ। ਪੁੱਠਾ। ਬਤਰਕ। ਕਿਵੇਂ? ਜਿਵੇਂ ਜਦ ਉਹਨਾਂ ਨੇ ਗੱਲ ਕੀਤੀ ਨਾ ਆਖੇ ਆਪਣੇ ਤਰਖੀ ਲਦ। ਬਈ ਆਖਣ ਵਾਲਾ ਪਰਮੇਸ਼ਰ ਦੀ ਨਾਮ ਬਿ ਦਿਖਾਓ ਦਰਸ਼ਨ ਕਰਾਓ ਦਰਸ਼ਨ ਕਰਾਓ ਤੁਸੀਂ ਕਹਿੰਦੇ ਰੱਬ ਹੈਗਾ ਦਿਖਾਓ ਤਰਕ ਦੀ ਤਰ੍ਹਾਂ ਦਿਖਾਓ ਤਰਕ ਦਾ ਬਤਰਕ ਕਮੀ ਕੀਤਾ ਵੀ ਜਾਦਾ ਅਜੇ ਤੱਕ ਕਿਸੇ ਨੇ ਕਿਹਾ ਹੀ ਨਹੀਂ ਅਸੀਂ ਕਹਿੰਦੇ ਦੀਦਾ ਨਹੀਂ ਤੁਹਾਡਾ ਇਹ ਤਰਕ ਗਲਤ ਹੈ ਤੁਸੀਂ ਮੂਰਖ ਹੋ ਮਾਰਨਾ ਨਹੀਂ ਦੇ ਤੀ ਜੇ ਤਾਂ ਕੋਈ ਕਹਿੰਦਾ ਹੋਵੇ ਵੀਰ ਆਪ ਦੇਹ ਦੇ ਤਾਦਾ ਕਹੋਂ ਦਿਖਾਓ ਤੁਹਾਡਾ ਸਵਾਲ ਹੀ ਗਲਤ ਹੈ ਤੇ ਤਰਕੇ ਤੁਹਾਡਾ ਗਲਤ ਹੈ ਇਹਦਾ ਵਲੇ ਤੁਸੀਂ ਆਪ ਦੁੱਧ ਤੁਸੀਂ ਮੂਰਖ ਹੋ ਉਹਨਾਂ ਦਾ ਤਰਕ ਬਤਰ ਇਹ ਤਾਂ ਸਵਾਲ ਹੀ ਪੈਦਾ ਹੁੰਦਾ ਤੁਸੀਂ ਕਹੋ ਵੀ ਤੁਸੀਂ ਅੱਖ ਨੂੰ ਕਹਿਣਾ ਦਿਨਦਾ ਨਹੀਂ ਹੱਥਾਂ ਸਾਢੇ 11 ਦੇ ਭਰੇ ਐ ਫਿਰ ਉਹਦਾ ਦਰਸ਼ਨ ਕਿਵੇਂ ਹੁੰਦਾ ਹੈ ਜਾਂ ਦਰਸ਼ਨ ਦੀ ਗੱਲ ਕੀਤੀ ਹੋਈ ਹੈ ਇਹ ਸਵਾਲ ਬਣਦਾ ਤੁਹਾਡਾ ਤੂੰ ਤਾਂ ਸਵਾਲ ਨਹੀਂ ਕਰਨਾ ਹੁੰਦਾ ਤੂੰ ਹੀ ਬੜੇ ਫੱਡੇ ਖਾਣੇ ਬੈਠੇ ਥੋੜ ਤਾਂ ਇਹ ਹੀ ਨਹੀਂ ਪਤਾ ਸਵਾਲ ਕਿਵੇਂ ਕਰੀਦਾ ਆਪਣਾ ਜੋ ਸਵਾਲ ਆ ਤੁਹਾਨੂੰ ਸਵਾਲ ਲੈ ਰੱਖਣੇ ਨਹੀਂ ਆਇਆ ਸਾਡੇ ਰੱਬ ਤੂੰ ਜਵਾਬ ਬਾਹਰ ਦੇ ਸਵਾਲ ਮੈਂ ਆਪਣੇ ਕੋਲੋਂ ਦੱਸ ਕੇ ਫਿਰ ਉਹ ਜਵਾਬ ਦਿੱਤਾ ਤੇ ਬੇਠਣੇ ਆਣਾ ਤਾਂ ਪਤਾ ਲੱਗ ਗਿਆ ਤੁਸੀਂ ਕਿੱਥੇ ਖੜੇ ਆ ਆਪਣੇ ਆਪ ਨੂੰ ਪਤਾ ਨਹੀਂ ਕੀ ਸਮਝਦੇ ਹੋ ਅਕਲਮੰਦ ਹੋਣ ਲੇ ਪਤਾ ਅਕਲ ਵਾਲੇ ਦਾ ਰਾਵ ਨਹੀਂ ਪਿਆ ਜੋ ਤੁਸੀਂ ਅਕਲ ਵਾਲੇ ਉਹ ਜਿਹੜੇ ਲੋਕਾਂ ਨੂੰ ਤੁਸੀਂ ਬਣਿਆ ਹੋ ਅਕਲ ਵਾਲੇ ਨਹੀਂ ਸੀ ਤੁਹਾਨੂੰ ਹਾਂ ਥੋਤੋ ਅਕਲ ਵਾਲੇ ਹੁਣ ਦੇਖੋ ਨਾ ਜਿਹੜਾ ਵੀ ਪਾਣੀ ਕਹੇ ਥੋੜਾ ਹੋਵੇ ਦੂਏ ਪਾਣੀ ਤੋਂ ਉੱਚਾ ਖੜਾ ਸਮੁੰਦਰ ਸਭ ਤੋਂ ਜ਼ਿਆਦਾ ਪਾਣੀ ਕੋਈ ਛੋਟੀ ਤੋਂ ਛੋਟੀ ਨਦੀ ਵੀ ਹੁੰਦੀ ਹੈ ਪਾਣੀ ਉੱਚਾ ਦਾ ਉੱਦਤ ਪੈ ਜੁਦਤ ਤਾਂ ਆਪ ਤੇ ਉੱਚਾ ਗਿਆਨ ਆਪਣੇ ਵਾਸਤੇ ਵੱਡਾ ਲੱਗਦਾ ਹੁੰਦਾ ਕਿ ਮੇਰਾ ਗਿਆਨ ਥੱਲੇ ਦੇ ਲੈਵਲ ਦਾ ਉਸ ਪੁਆਇੰਟ ਤੇ ਇਕੱਲੇ ਤੇ ਜਿਹੜਾ ਪੁਆਇੰਟ ਉਹ ਦੱਸ ਰਿਹਾ ਕੁ ਜਿਹੜਾ ਅਪਰਮ ਗਿਆਨ ਦਾ ਹੈ ਇੱਕ ਧਾਰਾ ਹੈ ਛੋਟੀ ਜੀ ਪਰ ਉੱਚੀ ਐ ਨਹੀਂ ਦੁਨੀਆਂ ਦੇ ਜਿਹੜੇ ਗਿਆਨ ਦੇ ਸਮੁੰਦਰ ਨੇ ਉਹਨਾਂ ਨਾਲ ਉੱਚੀ ਜਗ੍ਹਾ ਖੜੀ ਐ ਇਸ ਕਰਕੇ ਗੱਗਾ ਉੱਚੀਆ ਨੂੰ ਤੇਰੂ ਜਾ ਰਹੀ ਆ ਉਹ ਥੱਲੇ ਨੂੰ ਜਾ ਰਹਿਣ ਗਿਆ ਉਹ ਗਹਿਰਾਈ ਵੱਲ ਜਾ ਰਹੇ ਨੇ ਜਮੀਨ ਨੂੰ ਜਿਹੜਾ ਖੋਦ ਰਿਹਾ ਹੋਰ ਗਹਿਰਾਈ ਵੱਲ ਖੋਦ ਰਿਹਾ ਪਤਾਲ ਜਿਹੜਾ ਖੋਦ ਰਿਹਾ ਉਹ ਥੱਲੇ ਨੂੰ ਹੋਰ ਖੋਦ ਰਿਹਾ ਤਾਂ ਪਰਪਤ ਜਪਤ ਜਿਵੇਂ ਤਪਤ ਦੇਖੋ ਜਿਹੜੇ ਦਬਤ ਨੇ ਜਿਨ੍ਹਾਂ ਕੋਲ ਗਿਆਨ ਪ੍ਰਚੰਡ ਹੈ ਪਹਿਲਾਂ ਪ੍ਰਤਾਪ ਨਹੀਂ ਉਹਨਾਂ ਨੂੰ ਹੋਰ ਪ੍ਰਚੰਡ ਕਰਨਾ ਜੇ ਪਹਿਲਾਂ ਹੀ ਕੋਈ ਘਰ ਹੈ ਪ੍ਰਚੰਡਤਾ ਕਿਸੇ ਕੋਲ ਗਿਆਨ ਦੀ ਉਹਨੂੰ ਹੋਰ ਪ੍ਰਤਾਪ ਵਧਾਉਣਾ ਜੇ ਕਿਸੇ ਦਾ ਪ੍ਰਤਾਪ ਪਹਿਲਾਂ ਹੈਗਾ ਤਾਂ ਉਹਨੂੰ ਹੋਰ ਪ੍ਰਤਾਪ ਕਰਨਾ ਤਾਪ ਤੇ ਤਾਪ ਹੋਰ ਚੜਨਾ ਤੇ ਗਿਆਨ ਤੇ ਹੋਰ ਗਿਆਨ ਚੜ੍ਹਲ ਚਪਤ ਜਿਵੇਂ ਜਪ ਤੇ ਜਿਵੇ ਜਪ ਜਿਵੇ ਜਿਹੜਾ ਤੈਨੂੰ ਜਪ ਲੈਂਦਾ ਹੈ ਨਾ ਸਮਝ ਲੈਂਦਾ ਪੂਰਾ ਉਹ ਫਿਰ ਹਮੇਸ਼ਾ ਲਿਈ ਜਾਂਦਾ ਹੋ ਜਾਂਦਾ ਹੈ ਹਮੇਸ਼ਾ ਜਿਉਂਦਾ ਜੀਵੇ ਜਿਉਂ ਜਾਂਦਾ ਜਿਉਂਦਾ ਹੀ ਰਹਿੰਦਾ ਫਿਰ ਉਹ ਮਰਦਾ ਜਪਤ ਜਪ ਲੈਂਦਾ ਜਿਹੜਾ ਜਿਹੜਾ ਸਾਰਾ ਹੀ ਸਮਝ ਲੈਂਦਾ ਤੈਨੂੰ ਜਿਹੜਾ ਗੁਰਮਤਿ ਨੂੰ ਸਾਰੀ ਨੂੰ ਸਮਝ ਲੈਂਦਾ ਜਿਹਨੂੰ ਪੂਰੀ ਸਮਝ ਆ ਜਾਂਦੀ ਹੈ ਉਹ ਨਹੀਂ ਫਿਰ ਮਰਦਾ ਇਹ ਐਦਾ ਮਤਲਬ ਜੀਵੇ ਲਫਦਾ ਹੈ ਜੀਵੇ ਲਿਖਦਾ ਸਿਆਰੀ ਪਾਤੀ ਪਿਆਰੀ ਇਥੋਂ ਕਪਤਾ ਬਣਾਉਣੀ ਦੇ ਵਿੱਚ ਜੀਵੇ ਦਾ ਮਤਲਬ ਜੀਵੇ ਬਣਾਤਾ ਚਾਹੇ ਜਾਏ ਹੋਸੀ ਸ਼ਸਤਰ ਪ੍ਰਕਰਖਣੀ ਆਦ ਅਨੀਲ ਅਗਾਦ ਅਪੇ ਸ਼ਸਤਰ ਪ੍ਰਕਰਖਣੀ ਸ਼ਸਤਰ ਦਾ ਪਰਹਾਰੇ ਕਰਦੀ ਹੈ ਸਾਰੀ ਜਗ੍ਹਾ ਪਰ ਜੀਵਨ ਦਾੰਦ ਦੇ ਕੈਸੇ ਸ਼ਸਤਰ ਨੇ ਸੁਖ ਦੇ ਰਹੀਏ ਛਾਤਰਾਣ ਚਲਾ ਰਹੀਆਂ ਹਥਿਆਰ ਦੇਰ ਬਣ ਰਹੀਏ ਸੁਖ ਇਹ ਸੁਖ ਦਾ ਹੈ ਕੰਧਾਰੇ ਨੇ ਸਾਰੇ ਦੁਖਦਾਈ ਕਰੀ ਕੋਈ ਵੀ ਦੁੱਖਾਂ ਨੂੰ ਕੱਟ ਰਹੀਆਂ ਹਥਿਆਰ ਚਲਾ ਰਹੀ ਸਾਰਿਆਂ ਦੇ ਤਰਖ ਤੀਰ ਮਾਰ ਰਹੀਆਂ ਤਲਵਾਰਾਂ ਚਲਾ ਰਹੀ ਜੇ ਦੇ ਘੋੜੇ ਚਲਾ ਰਹੀ ਜੇ ਇਹਦਾ ਕਰਕੇ ਕੀ ਬਣ ਰਹੀਆਂ ਸੁਖ ਛਾਤਰ ਪਰ ਆਦ ਅਨੀਲ ਅਗਾਦ ਆਪੇ ਆਦ ਅਗਾਦ ਆਪੇ ਆਦ ਅਗਾਦ ਆ ਤੋ ਲੈ ਕੇ ਹੀ ਇਹ ਕੰਮ ਹੈ ਤੇਰਾ ਇਸੇ ਤਰ੍ਹਾਂ ਕੱਟ-ਕੱਟ ਕੇ ਸਾਰਿਆਂ ਨੂੰ ਨਾ ਘੜ ਘੜ ਕੇ ਕੜੀਏ ਕੜੀਏ ਮਾਰੀਏ ਤੇ ਤੇ ਮਤਮਨ ਬੁੱਧ ਤੇ ਤੇ ਕੜੀਏ ਸੁਦਾਂ ਸੁਧ ਸਾਰਿਆਂ ਨੂੰ ਘਟ ਵੀ ਰਹੀਆਂ ਆ ਕੜੀਏ ਕੜੀਏ ਮਾਰੀਏ ਮਾਰ ਵੀ ਰਹੀ ਸੱਟ ਮਾਰੇ ਤੇ ਬਣਾ ਘੜਿਆ ਨੀਰੋ ਜਾਂਦਾ ਸੋਨਾ ਸੋਨਾ ਘੜਲ ਮਾਰ ਤੇ ਵੀ ਸੱਟ ਮਾਰਨੀ ਪੈਂਦੀ ਐ ਕਹਨੇ ਕੀਮਤ ਰਾਜੇ ਦੇ ਸਿਰ ਤੇ ਸ਼ਾਹ ਸ਼ਾਹ ਦੇ ਸਿਰ ਤੇ ਹੁੰਦਾ ਹੈ ਸ਼ਾਹ ਸਾਰਿਆਂ ਦੇ ਸਿਰ ਤੇ ਹੁੰਦਾ ਤਾਜ ਉਹਦੇ ਸਿਰ ਤੇ ਹੁੰਦਾ ਕਾਰਨਾ ਉਹਨੂੰ ਵੀ ਸੱਟ ਮਾਰ ਕੇ ਪੈਂਦਾ ਘੜਿਆ ਹੋਇਆ ਜਾਂਦਾ ਜੇ ਘੜਿਆ ਜਾਂਦਾ ਸੋਨਾ ਹੀਰੇ ਝੜੇ ਜਾਂਦੇ ਨੇ ਫਿਰ ਉਹਦੇ ਸਿਰ ਤੇ ਐ ਇਹ ਡੜਾ ਪਿਆ ਹੋਵੇ ਤੇ ਰਖਲੂ ਸਰਤੇ ਸੋਨੇ ਦਾ ਡੜਾ ਰਖਲੂ ਸਰਤੇ ਹੋ ਤੇ ਹੀ ਬਣਦਾ ਘੜੇ ਤੇ ਕੀਮਤ ਵੱਧਦੀ ਆ ਦੀ ਫੇਰ ਸਰਤੇ ਠਿਕਦਾ ਜਾ ਕੇ ਰਾਜੇ ਦੇ ਵੀ ਤਾਜ ਬਣ ਕੇ ਚੰਚਲਾ ਚਖੰਗੀ ਅਲਕ ਭਜੰਗੀ ਤੁੰਦ ਤਰੰਗਣੀ ਚੰਚਲਾ ਜਿਹੜੀ ਤੇਰੀ ਬੁੱਧੀ ਆ ਨਾ ਤਾਂ ਤੇਜ ਹੈ ਉਹਦੀ ਜਿਹੜੀ ਆ ਨਾ ਤੇਜੀ ਮਨੋਂ ਜ਼ਿਆਦਾ ਤੇਜ ਹੈ ਨਾ ਮਨ ਬਹੁਤ ਹੈਜਾ ਮਨੂ ਕਹਿਣ ਵਾਲੀ ਬੁੱਧੀ ਉਹਦੋਂ ਵੀ ਤੇਜ ਹੈ ਚੰਚਲਾ ਮਨ ਚੰਚਲਾ ਹੈ ਨਾ ਬਹੁਤ ਚੰਚਲਾ ਹੈ ਨਾ ਇਹ ਬੁੱਧੀ ਹੋਰ ਚੰਚਲਾ ਚਖੰਗੀ ਹੈ ਇਹਦੇ ਨਾਲ ਹੋਰ ਲੰਗੀ ਇੱਕ ਚੰਚਲਾ ਚਖੰਗੀ ਚੰਚਲਾ ਦਾ ਹੈ ਹੋਏ ਨਾਲ ਚਖੰਗੀ ਵੀ ਹੈ ਮਨ ਨੂੰ ਹੈ ਨਾ ਜੜੀ ਇਹਦੇ ਜਿਹੜੇ ਅੰਦਰ ਨੇ ਨਾ ਇਹ ਕੁਝ ਬਹੁਤ ਹੀ ਤੇਜ਼ ਨੇ ਤੇ ਤੀਰਾਂ ਵਰਗੇ ਤਲਵਾਰ ਘੋੜੇ ਚਖਗੀ ਦੇਖੋ ਅੱਗੇ ਕੀ ਹੈ ਚਖਾਂਗੀ ਅਲਕ ਪੁਜਾਂਗੀ ਅਲਕ ਪੁਜਾਂਗੀ ਔਰ ਜਿਹੜੀ ਤੇਰੀ ਸੁਰਤ ਹੈ ਉਹ ਲਾਟ ਕਹਿੰਦੇ ਨੇ ਸ਼ਿਵਜੀ ਨੂੰ ਲਾਟ ਨਹੀਂ ਹੁੰਦੀ ਸੁਰਤ ਹੁੰਦੀ ਹੈ ਲਾਟ ਆਂ શરીર ਦੀ ਹੁੰਦੀ ਐ ਅੰਦਰਲੇ ਛੇਰ ਦੀ ਜਿਹੜੀ ਲਾਟ ਐ ਸੁਰਤ ਹੁੰਦੀ ਐ ਔਰ ਸੁਰਤ ਕੇ ਮੈਂ ਅਲਕ ਅਲਕ ਕਹਿੰਦੇ ਲੱਟ ਨੂੰ ਸੁਰਤ ਨੂੰ ਕੋਈ ਅੱਗੀ ਉਹ ਜੇ ਸੁਰਤ ਬਾਹਰ ਜਾਂਦੀ ਓਸ ਨੂੰ ਕਹਿਆ ਮਨ ਬੁਲੜਿਆ ਨਹੀਂ ਹਿਰਦੇ ਚ ਜਿਹੜੀ ਸੁਰਤ ਪੈਦਾ ਹੁੰਦੀ ਓਦੀ ਗੱਲ ਐ ਜਿਹੜੀ ਦਿਮਾਗ ਚੋਂ ਸੁਰਤ ਪੈਦਾ ਹੁੰਦੀ ਓਦੀ ਗੱਲ ਹੋਰ ਐ ਇੱਕ ਦਿਮਾਗ ਚੋਂ ਪੈਦਾ ਹੁੰਦੀ ਐ ਚੀਜ਼ ਹਿਰਦੇ ਚ ਪੈਦਾ ਹੁੰਦੀ ਇੱਕ ਵਿਵੇਕ ਬੁੱਧੀ ਚੋਂ ਪੈਦਾ ਹੁੰਦੀ ਐ ਇੱਕ ਮਨੁੱਖੀ ਜੋ ਫੈਦਾਂ ਤੇ ਚੰਚਲਾ ਛਖਾਂਗੀ ਅਲਕਪਜੰਗੀ ਅਲਕਪਜੰਗੀ ਸਪ ਦੇ ਮੈਂ ਦਾ ਬੱਚਾ ਹੁੰਦਾ ਨੇ ਜਿਹੜਾ ਆਹ ਤੇਜ ਛੋਟਾ ਬੱਚਾ ਬਹੁਤ ਤੇਜ ਹੁੰਦਾ ਸਪ ਦੇ ਕੋ ਕਰਦਾ ਹੁੰਦਾ ਬਹੁਤ ਛੋਟਾ ਜਿਹਾ ਜਿਹੜਾ ਬੱਚਾ ਹੁੰਦਾ ਆ ਕਰਦਾ ਨਾ ਤੇ ਜੀ ਰਹਿੰਦਾ ਇਹੋ ਜੀ ਤੇਜੀ ਆ ਜਿਵੇਂ ਬਹੁਤ ਛੋਟੇ ਸਪ ਦੇ ਬੱਚੇ ਤੇਜੀ ਹੁੰਦੀ ਹੈ ਅਲਕਪਜੰਗੀ ਤੰਦ ਤੁੰਦ ਤਰੰਗਣੀ ਤੁੱਧ ਤਰਗੜੀ ਤਰਗੜੀ ਘੋੜੀ ਹੁੰਦੀ ਐ ਜਾਂ ਫਿਰ ਬਹੁਤ ਤੇਜ਼ ਦੌੜਨ ਵਾਲੀ ਘੋੜੀ ਵਰਗੀ ਉਹਦੀ ਚਾਲ ਐ ਜਾਂ ਤਾਂ ਆ ਫਿਰ ਇਹੋ ਜਿਹੀ ਐ ਜਿਵੇਂ ਬਹੁਤ ਤਿੱਖੇ ਤੀਰ ਚੱਲਦੇ ਨੇ ਤੀਰ ਹੁੰਦੇ ਨੇ ਜਿਵੇਂ ਤੀਰ ਜਾਂਦਾ ਇਹੋ ਜਿਹੀ ਚਾਲ ਐ ਉਹਦੀ ਤਿੰਨ ਚਾਲਾਂ ਨਾਲ ਉਹਦਾ ਪਰੇਸ਼ਾਨ ਕੀਤਾ ਹੋਇਆ ਬਬੇਕ ਬੁੱਧੀ ਜਿਹੜਾ ਧਿਆਨ ਸੁਰਤਾ ਉਹ ਚੰਚਲਾ ਚ ਉਹ ਸੁਰਤੇ ਮਾਨੂੰ ਖੇਲਦੀ ਹੈ ਫਿਰ ਉਹ ਕਰਦੀ ਕਿ ਕਰ ਕਸਾ ਕੁਠਾਰੇ ਨਰਕ ਨਵਾਰੇ ਅਦਮ ਉਧਾਰੇ ਤੂਰ ਭੁਜੇ ਕਰ ਕਸਾ ਕੁਠਾਰੇ ਹੱਥ ਵਿੱਚ ਕੀ ਰੱਖਿਆ ਹੈ ਕਰ ਕਸਾ ਕੁਠਾਰੇ ਮਜ਼ਬੂਤ ਕਰਕੇ ਕੋਹਾੜਾ ਫੜਿਆ ਹੱਥ 'ਚ ਕੁਠਾਰ ਕੁਠਾਰ ਕੋਹਾੜੇ ਨੂੰ ਫੜੇ ਬਜਰ ਕੋਠਾਰ ਬੋਏ ਹੈ ਚੀਨ ਕਰ ਮਿੱਤਰ ਲੱਗ ਬਜਰ ਬਜਰ ਬਜਰ ਨਹੀਂ ਲੱਭਦਾ ਬਜਾਰੇ ਬਜਾਰ ਦਾ ਮੰਦਾ ਜਿਹਨੂੰ ਜਾਂਦ ਨਹੀਂ ਲੱਗਦੀ ਪੁਰਾਣਾ ਨਹੀਂ ਉਹ ਕੀ ਹੈ ਉਹ ਆਈ ਸ਼ਬਦ ਉਪਦੇਸ਼ ਇਹ ਜਿਹੜਾ ਉਪਦੇਸ਼ ਹੈ ਨਾ ਆਹ ਕੋਠਾਰ ਹੈ ਕਸਾ ਕੋਠਾਰੇ ਨਰਕ ਨਵਾਰੇ ਅਰ ਕੀ ਹੈ ਵੜਦਾਰੀਆਂ ਨਾਰਕਨ ਵਾਰਨ ਕਰਦਾ ਦਰਕਦੀਆਂ ਉਹ ਜਿਹੜੀਆਂ ਨਾ ਨ ਜਾਣ ਵਾਲੀਆਂ ਜਜੀਰੋ ਵੀਡੀਓ ਨਾਰਕੇ ਦੇ ਬੰਨ ਕੇ ਜਜੀਰਾ ਰੱਖਣ ਵਾਲੀਆਂ ਉਹ ਹੜਦ ਦਾ ਜਜੀਰਾ ਉਹ ਕਟੜੀਆਂ ਦੇ ਉਹ ਬੜੀ ਉਹਨੂੰ ਛਡਾਉਣਾ ਹੈ ਛਡਾਉਣ ਵਾਸਤੇ ਘੋੜਾ ਇਹ ਔਗਣ ਕੱਟਣ ਵਾਲਿਆ ਕੋਹਣਾ ਔਗਣ ਕੱਟਦਾ ਲੋਕਾਂ ਦੇ ਹੋਰ ਨਹੀਂ ਕੁਝ ਕਰਦਾ ਨਾ ਕੋਗੜ ਜੇਤੜੇ ਤੇ ਗਲੀ ਜਜੀਰ ਇਹ ਔਗਣ ਕੱਟ ਰਿਆ ਸਾਡੇ ਕੁਰਬਾਨੀ ਕਵਾਰਨ ਸਰਦੀ ਪਾ ਰਹੀ ਸਰਪਾੜ ਨਾਲ ਕਵਾਰਨ ਲਿਆਇਆ ਹੈ ਇਹ ਉਗਣ ਕੱਟਣ ਵਾਲਾ ਛਡਾਉਣ ਵਾਲਾ ਜੰਦੇ ਆ ਗਿਆ ਆਦਮ ਉਹ ਉਧਾਰੇ ਉਹ ਫਸੇ ਨੇ ਨਾ ਜੀਰ ਵਿੱਚ ਵਜੇ ਨੇ ਉਹਨਾਂ ਨੂੰ ਛਡਾਉਣ ਵਾਸਤੇ ਉਧਾਰ ਕਰਨ ਵਾਸਤੇ ਤੂਰ ਪੁਜੇ ਤੂਰ ਪੁਜੇ ਜਿਹੜੀ ਤੇਰੀ ਪੁਜਾ ਇਹਨਾਂ ਉਹ ਐ ਸਮਝ ਲਓ ਤੁਰਾ ਹੁੰਦਾ ਆਵਾਜ਼ ਭੂਜਾ ਚ ਤੇਰੀ ਚ ਇੱਕ ਇਸਬ ਦੀ ਆਵਾਜ਼ ਜਿਹੜੀ ਆ ਗੁਰਮਤ ਜਿਹੜੀ ਤੇਰਾ ਆਵਾਜ਼ ਬੋਲੀਏ ਬੋਲ ਬੋਲੇ ਕੋਹੜਾ ਸ਼ਬਦੇ ਕੋਹੜਾ ਇਹੀ ਓਗੜ ਕਰ ਰਿਹਾ ਹੈ ਇਹੀ ਛੜਵਾ ਰਿਹਾ ਹੈ ਓਗੜ ਅਦਵਨ ਉਧਾਰ ਕਰ ਰਿਹਾ ਸ਼ਬਦੇ ਆ ਸਭ ਕੁਝ ਇਹੀ ਨਰਕ ਨੂੰ ਵਾਲੇ ਇਹੀ ਦਰਕ ਨੂੰ ਵਾਲਦ ਕਰੇ ਸ਼ਬਦ ਉਪਦੇਸ਼ ਇਹੋ ਉਪਦੇਸ਼ ਇਹ ਜਿਹੜਾ ਗਿਆਨ ਹੈ ਦੀ ਧਾਰਿਆ ਸੀ ਸਭ ਕੁਝ ਘਟ ਦਮੰਕੇ ਕੇਹਰ ਲੰਕੇ ਆਦ ਅਤੰਕੇ क्रूर ਕਥੇ ਹੈ ਕੇਹਰ ਵਰਗੇ ਲੱਕ ਵਾਲੀਏ ਧਾਮਣੀ ਦਮੰਕੇ ਧਾਮਣੀ ਜਿਹੜੀ ਹੈਗੀ ਹੈ ਨਾ ਜਿਵੇਂ ਬਿਜਲੀ ਵਹਿ ਜਾਂਦੀ ਹੈ ਇਹ ਜੇ ਤੇਰੀ ਜਮਗਾ ਕੇ ਜਿਹੜੀ ਬਿਜਲੀ ਵਰਗੀ ਹੈ ਆ ਅਸਲ ਦੇ ਵਿੱਚ ਉਹਦੇ ਵਿੱਚ ਜਿਹੜਾ ਗਿਆਨ ਬਿਜਲੀ ਸਾਰਿਆਂ ਦੇ ਆਦ ਅਤੰਕੇ क्रूर ਆਦ ਅਤੰਕੇ ਆ ਤੋ ਲੱਗਿਆ ਪੈ ਹੈ ਪੈ ਪੀਤੇ ਕਿਤੇ ਹਨ ਆ ਤਮ ਕੋ ਨਾ ਆ ਤਮ ਕਰੂਰ ਕਥੇ ਜਿਹੜੇ ਕਰੂਰ ਨੇ ਨਾ ਬਹੁਤ ਲੋਕ ਭੈੜੇ ਲੋਕ ਨੇ ਜਾਲਮ ਨੇ ਉਹਨਾਂ ਦੇ ਬਣਾਤੇ ਆ ਤੱਕ ਲੈ ਕੇ ਤੇਰਾ ਭੈ ਬਣਿਆ ਹੋਇਆ ਡਰਦੇ ਤੇ ਤੇ ਪਾਪ ਕਰਦਾ ਪਾਪੀ ਡਰਦਾ ਡਰ ਕਾ ਤੇਰਾ ਡਰੇਗਾ ਹੁਕਮ ਨਾ ਰਹਿ ਵਿਗਾ ਹਾਂ ਕੀ ਬਣੂ ਮੇਰਾ ਜਾ ਕੇ ਪਾਪ ਕਰਦਾ ਵੀ ਹੈ ਔਰ ਤੇਰਾ ਹੀ ਕਰਦਾ ਹੈ ਤੇ ਅਤੰਕੋਂ ਡਰਦਾ ਹੈ ਡਰਦਾ ਕਹਿੰਦੇ ਤੇਰੇ ਸ਼ੁਰੂ ਤੋਂ ਹੀ ਡਰਦਾ ਅਤੰਕ ਹੈ ਤੇਰਾ ਸਾਰੇ ਲੋਕ ਮੈਂ ਵੀ ਇਦਰੇ ਵੀ ਅਜ਼ਾਬ ਦੇਣਾ ਕੋ ਸਾਰੇ ਬੰਦੇ ਨੇ ਉਹ ਅਤੰਕਾ ਸ਼ੁਰੂ ਤੋਂ ਲੈ ਕੇ ਤੇਰਾ ਇਹ ਕਥਾ ਚ ਪ੍ਰਜਲਤ ਹੈ ਤੇਰੀ ਅਤੰਕ ਕਰੂਰ ਕਥੇ ਇਕ ਕਥਾ ਪ੍ਰਚਲਦਾ ਬਈ ਤੇਰਾ ਬਈ ਭਾਈ ਅੱਗੇ ਜਾ ਕੇ ਭੁਗਤਣਾ ਪਊ ਸਾਰੇ ਕਹਿੰਦੇ ਨੇ ਆ ਤੰਕਪੋੜਣ ਵਾਲੀ ਕਥਾ ਤੇਰੀ क्रूर ਆਦਮੀ ਰੂਪ ਹੈ ਭੇਤ ਕਰਨ ਵਾਲੀ ਕਥਾ ਤੇਰੀ ਵੀ ਦੇਖੋ ਰਾਵਣ ਨਾ ਹੋਇਆ ਫਲਾਣ ਹੋਇਆ ਪੈਹੀ ਕਹਿੰਦੇ ਜੈ ਜੈ ਹੋਸੀ ਰਕਤਾਸੁਰ ਖੰਡਣੀ ਸੁਭ ਚਕਰਤਣੀ ਸੁਭ ਮਥੇ ਸੁंभ ਮਥੇ ਹਾਂ ਜਾ ਜਾਏ ਰਕਤਾਸੁਰ ਵਰਤਣੀ ਜਾ ਜਾਏ ਉਸੇ ਰਕਤਾਸੁਰ ਖੰਡਣੀ ਹਾਂ ਰਕਤਾਸੁਰ ਖੰਡਣੀ ਜਿਹੜਾ ਰਕਤਾਸੁਰ ਹੈ ਲੋਭੀ ਹੈ ਉਹਦਾ ਖੰਡਨ ਕਰਨ ਕਰ ਦਿੰਦੀ ਹੈਰਾਨ ਹੁੰਦਾ ਸੁੰਭ ਤਾਂ ਸੁੰਭ ਮੱਥੇ ਜੋ ਸੁਭਾ ਜਿਹੜਾ ਸੁਭਾ ਜਿਹੜਾ ਨਾ ਜਿਹੜਾ ਤਾਂ ਸੁਭਾ ਬਣ ਤਾ ਸੁਭਾ ਜਿਹੜਾ ਉਹਦਾ ਸੁਭਾ ਨੂੰ ਤਾਂ ਬੰਦ ਕਰਦੀ ਹੈ ਮਾਰਨੀ ਹੈ ਤੂੰ ਚੀਰਨੀ ਹੈ ਸਰੀਰ ਨਾਲ ਜੁੜਿਆ ਹੈ ਮਾਇਆ ਨਾਲ ਜੁੜਿਆ ਹੈ ਉਹਨੂੰ ਤਾਂ ਘਟਦੀ ਹੈ ਤੂੰ ਕੱਢਣਾ ਪੈਂਦਾ ਹੈ ਇਹਨੂੰ ਮਾਇਆ ਤੋਂ ਬਾਹਰ ਜੋ ਕੱਢਣਾ ਉਹ ਜਿਹੜਾ ਸੁਭਾ ਜੀ ਤੋ ਮੰਨਦਾ ਨਹੀਂ ਉਹ ਪਹਿਨਾ ਬਨ ਉਹ ਹਰਾਨੇ ਹੁੰਦਾ ਵੀ ਦੇਖੋ ਇਹਨੂੰ ਬਰਬਰਾ ਤਾਂ ਇਹ ਤਾਂ ਬਨੇ ਹੀ ਰੇ ਰਿਹਾ ਕੇ ਮੇਰੇ ਨਜ਼ਰ ਅੱਲਦਾਰੇ ਊੜ ਬੁਰਾ ਪੈ ਗਿਆ ਕੇ ਉਹ ਚੱਕਰ ਤੇ ਜੈ ਜੈ ਹੋਸੀ ਰਕਤਾ ਸੁਰਖੰਡਣੀ ਸੁंभ ਚਕਰਤ ਨਸੁੰਭ ਮਥੇ ਨਸੁੰਭ ਨੂੰ ਆਇਆ ਸਭ ਐਸਾ ਉਹਨੂੰ ਉਹਦੀ ਬਰਤਮਾਰੀ ਧੋਤਾ ਜਿਵੇਂ ਪਟਕ ਦਿੰਦਾ ਨਾ ਆਪਾਂ ਕਪੜੇ ਨੂੰ ਬਸਦੇ ਨਹੀਂ ਐਸਾ ਉਹਨੂੰ ਮੱਥ-ਮੱਥ ਕੇ ਧੋ ਕੇ ਸ਼ੁੱਧ ਕੀਤਾ ਸੁੱਭ ਹੈਰਾਨ ਹੋ ਗਿਆ ਉਹਦੇ ਨਾਲ ਕਾਲਕ ਛੱਡਿਓ ਹੀ ਨਹੀਂ ਕਾਲਕ ਫਿਰ ਪੁਰੀਤੇ ਬਣਾਤਾ ਜਬ ਪੁਰੀਤ ਬਣਾਤਾ ਫੇਰ ਚੱਕਰਤ ਹੋ ਗਿਆ ਚਿੱਤ ਚੱਕਰਤ ਕਦ ਹੁੰਦਾ ਮਨਤਾ ਉਹਦਾ ਨਾ ਨਜਰਦਾ ਲੜਦਾ ਬੁਲਦਾ ਬੰਦਦਾ ਹੀ ਨਹੀਂ ਭਾਈ ਮਨ ਮੇਰੋ ਵਸ ਉਹ ਤਾਂ ਭਾਈ ਨੂੰ ਕਹਿ ਰਿਹਾ ਮੇਰਾ ਮਨ ਵਾਚਦੀ ਭਾਈ ਨੇ ਐਸਾ ਕੋਲ ਪਠਾੜ ਕੇ ਸਮਝਾਇਆ ਮਨ ਬਿਲਕੁਲ ਉਹ ਕਹਦਾ ਵੀ ਨਾ ਮੇਰਾ ਬੋਲਦਾ ਹੀ ਨਹੀਂ ਉਹ ਰਾਇਵ ਨਹੀਂ ਕਰਦਾ ਉਹ ਰਾਇਵ ਨਹੀਂ ਦਿੰਦਾ ਕੋਈ ਹੁਣਾ ਚੁੱਪੇ ਕਰਾਤਾ ਇਹ ਜਾਂ ਚੁੱਪ ਕਰਾਇਆ ਸਭ ਜੋ ਮਰ ਜਾਂਦਾ ਜਿਵੇਂ ਮਰਿਆ ਹੋਇਆ ਬੰਦਾ ਚੁੱਪ ਕਰ ਜਾਂਦਾ ਉਹਦੀ ਵੋਟੇ ਨਹੀਂ ਹੁੰਦੀ ਐਂ ਚੁੱਪ ਕਰਾਤਾ ਇਸ ਕਰਕੇ ਸਭ ਚੱਕਰ ਤੋਂ ਹੋਇਆ ਚੱਕਰ ਤੋਂ ਹੋਇਆ ਹੈਰਾਨ ਹੋਇਆ ਇਹ ਜਿਹੜਾ ਉਹ ਲਵਰਾਨੋ ਦੇ ਵਿੱਚ ਬਾਹਰ ਦੀ ਬਲੋਚਣੀ ਬਿਰਤਨ ਬਿਮੋਚਣੀ ਬਾਹਰ ਦੀ ਬਲੋਚੜੀ ਬਾਹਰ ਜਿਹੜਾ ਕਮਲ ਹੈ ਕਮਲ ਹਨ ਬਲੋਚੜੀ ਉਹਦੇ ਚ ਅੱਖ ਹੈ ਤੇਰੀ ਲੋਚਣ ਉੱਥੇ ਅੱਖ ਹੁੰਦੀ ਹੈ ਉੱਥੋਂ ਅੱਖ ਨਿਕਲਦੀ ਹੈ ਉੱਥੇ ਪ੍ਰਗਟ ਹੁੰਦੀ ਹੈ ਤੂੰ ਤੀਸਰੀ ਅੱਖ ਹੈ ਉੱਥੇ ਖੁੱਲਦੀ ਹੈ ਜਾ ਕੇ ਬਾਹਰ ਵਿੱਚ ਫਿਰਦੇ ਵਿੱਚ ਬਾਹਰ ਦੀ ਉੱਥੇ ਤੂੰ ਉੱਥੇ ਪ੍ਰਗਟ ਹੋਦੀ ਆ ਕੇ ਇਹ ਤੀਜੀ ਆਖਰ ਉੱਥੇ ਖੁੱਲਦੀ ਆ ਉੱਥੋਂ ਦੀਦਾ ਸਭ ਕੁਝ ਉੱਥੇ ਤੀਸਰਾ ਇੱਕ ਹੀ ਹਰਕਾ ਦਵਾਰ ਅੰਦਰ ਵੀ ਬਾਹਰ ਵੀ ਹਰ ਦਰਗਾਹ ਕਿਹਾਂ ਦਰਵਾਜ਼ਾ ਖੁੱਲਦਾ ਨਾ ਫਿਰ ਅਦਲੀਆ ਵਾਹਲੀਆਂ ਧੋਏ ਵਿਚਾਲੇ ਉਹ ਅਜੂ ਤਾਂ ਹਰਕੇ ਦਵਾਰ ਖੜਾ ਇਹ ਬਲ ਆ ਜਾਂਦਾ ਉੱਥੇ ਖੜ ਜਾਂਦਾ ਫਿਰ ਜਾ ਕੇ ਬਲੀ ਬਲੀ ਬਣ ਕੇ ਉੱਥੇ ਖੜਦਾ ਜਾਂ ਬਲ ਪੂਰਾ ਬਲ ਹੋਏ ਹੋ ਬੱਦਲ ਛੁੱਟੇ ਛੁੱਟੇ ਬੱਦਲ ਛੁੱਟ ਕੇ ਉਹ ਗੇਟ ਖੁੱਲਦਾ ਬ੍ਰਿਤਨ ਵਿਮੋਚਣੀ ਸੋਚ ਵਿੱਚ ਸੋਚਣੀ ਕੌਚ कसे ਬ੍ਰਿਤੀ ਵਿਮੋਚਣੀ ਬ੍ਰਿਤਨ ਵਿਮੋਚਣੀ ਬ੍ਰਿਟੀਆਂ ਨੂੰ ਇਕਾਦਰ ਕਰਨ ਵਾਲੀ है, ਬਿਰਤੀਆਂ ਨੂੰ ਇਕੱਠਾ ਕਰਨ ਵਾਲੀ ਹੈ ਬੋਰਡ ਵਾਲੀ ਹੈ ਸੋਚ ਵਿੱਚੋਂ ਬਿ ਸੋਚਣੀ ਸੋਚ ਜਿਹੜੀ ਹੈਗੀ ਉਹ ਨੂੰ ਬਿ ਸੋਚਣੀ ਸੋਚ ਨੂੰ ਬੰਦ ਕਰਨ ਵਾਲੀ ਹੈ ਆਦਮੀ ਦੀ ਸੋਚ ਹੈ है, ਉਹ ਨੂੰ ਬੰਦ ਕਰ ਦੇਣਾ ਕੌਚ ਕਸੇ ਇਹ ਤੇਰੀ ਕੌਚ ਕਸੀ ਹੋਈ ਹੈ